ਜਲੇ ਹਰੀ ਥਲੇ ਹਰੀ ਜਲੇ ਹਰੀ ਥਲੇ ਹਰੀ ਜਲ ਵਿੱਚ ਹੁਕਮ ਦਾ ਨਵਾਸ ਹੈ ਹਰੀ ਰੂਹ ਤੇ ਹੁਕਮ ਲੱਭ ਗਿਆ ਸੀ ਹਰ ਜੋਤ ਹਰੀ ਹੁਕਮ ਹੁਕਮ ਕਰਕੇ ਸਰਵ ਵਿਆਪੀ ਹੈ ਸੂਰਜ ਜੋਤ ਕਰਕੇ ਪ੍ਰਤਾਪ ਕਰਕੇ ਸਿਰਫ ਹੈ ਸਭ ਜਗ੍ਹਾ ਉਹ ਤਾਂ ਨੰਗਾ ਹਰ ਜਗ੍ਹਾ ਹੈ ਉਹਦੀ ਗਰਮੀ ਹਰ ਜਗ੍ਹਾ ਹੈ ਉਹਦੀ ਲਾਈਟ ਹਰ ਜਗ੍ਹਾ ਹੈ ਪਰ ਸੂਰਜ ਭਾਵੇਂ ਇੱਕੋ ਜਗ੍ਹਾ ਹੈ ਸੋਲਿਡ ਜਿਹਾ ਤੇ ਹੈ ਉਹ ਠੀਕ ਹੈ ਸਾਰੇ ਸਰੀਰ ਦੇ ਵਿੱਚ ਜੋਤ ਇੱਛਾ ਹੋਰ ਚੀਜ਼ ਐ ਇੱਛਾ ਸ਼ਕਤੀ ਉਹਦੀ ਹੋਰ ਚੀਜ਼ ਐ ਆਪ ਹੋਰ ਚੀਜ਼ ਗੁਰਜੇ ਪੱਥਰ ਦੇ ਵਿੱਚ ਅਸੀਂ ਹਰੀ ਮੰਨ ਲੀਏ ਪੱਥਰ ਦਾ ਜੀਵ ਹੁੰਦਾ ਨਹੀਂ ਗੁਰਬਾਲੀ ਕਹਦੀ ਐ ਇੱਥੇ ਕਹਾਂ ਹੋਊਗਾ ਥਲ ਵੀ ਥਲ ਵੀ ਜ਼ਮੀਰ ਮਿੱਟੀ ਕੀੜੇ ਮਿੱਟੀ ਦੇ ਉਰਤੇ ਬਣਾ ਲੀਏ ਉਹ ਚ ਹਰੀ ਹੋਊਗਾ मिट्टी पत्थर कोई गल है पर हुक्म है उठे जरूर हुक्म दी मिट्टी है मिट्टी रे एटम इकट्ठे ताने जणा जरूर हुक्म जे डोर खींच ली एटम कला अलग हो ज्यू शक्ति पे ओ दे काबू दरियो ते जरूर ओ सारे एटम जे साथो ना प्रेम है प्रेम दे खिचे हुए इकट्ठे ਤਰਤੇ ਜਾੜਾ ਜੜੀ ਇਹ ਪ੍ਰੇਮ ਦੀ ਇਕੱਠੀ ਆ ਰੱਖਿਆ ਹੋਇਆ ਪ੍ਰੇਮ ਆ ਤਾਂ ਇਹ ਨੂੰ ਇਕੱਠੇ ਨਿਕ ਜਾ ਜੇ ਪ੍ਰੇਮ ਟੁੱਟ ਜਾਣਾ ਦਾ ਤਾਂ ਵਿਖਰ ਇਹ ਡੋਰ ਖਿਚ ਲਾਂਦਾ ਫਿਰ ਕਿਉਂ ਸਭ ਹੋ ਜਾਂਦਾ ਪ੍ਰੇਮ ਦੀ ਡੋਰ ਖਿਚ ਲਾਂਦਾ ਉਹ ਵਿੱਚੋਂ ਪ੍ਰੇਮ ਦੀ ਡੋਰ ਹੁੰਦੀ ਹੈ ਜੜਜ ਪ੍ਰੇਮ ਕਹਾ ਜਾਂਦਾ ਹੁਕਮ ਆਇਆ ਪ੍ਰੇਮ ਰੱਖਿਆ ਉਹ ਚਾਹੁੰਦੇ ਵੀ ਇਕੱਠਾ ਰਹੇ ਇਕੱਠੇ ਇੱਛਾ ਸ਼ਕਤੀ ਸਾਰੇ ਕਮ ਕਰ ਦिए ਜੜ ਵਿੱਚ ਵੀ ਚੇਤਨ ਵਿੱਚ ਵੀ ਚੇਤਨ ਵਿੱਚ ਵੀ ਇੱਛਾ ਸ਼ਕਤੀ ਉਹਦੀ ਕਮ ਕਰ ਦिए ਉਹਦੀ ਇੱਛਾ ਜਿਹੜੀ ਹੈਗੀ ਆ ਉਹ ਤਿਰਖੁੱਡੀ ਜੋ ਜਿਹੜਾ ਸਾਡਾ ਫੁੱਲ ਉੜਦਾ ਉਹ ਸਾਡੀ ਆਪਣੀ ਇੱਛਾ ਹੁੰਦੀ ਹੈ। ਹਿਰਦੇ ਜੋ ਜਿਹੜਾ ਉੜਦਾ ਉਹ ਦੀਚਾ ਹੁੰਦਾ। ਹਰੀ ਦੀਚਾ। ਉਹ ਚਾਹੇ ਨੁਕਸਾਨ ਕਰਾਉਣ ਵਾਲੀ ਵੀ ਹੋਵੇ ਕਈ ਵਾਰ। ਚਾਹੇ ਤੇ ਸਾਨੂੰ ਮਾਰਨ ਵਾਲੀ ਵੀ ਹੋਵੇ ਕਿਸੇ ਵਾਰ। ਕਿਸੇ ਵੇਲੇ। ਪਰ ਹੁਦੀ ਹੋਦੀ ਹੈ। ਤਾਂ ਇਹਦਾ ਕੋਈ ਪਾਪ ਨਹੀਂ ਲੱਗਦਾ ਸਾਨੂੰ। ਭਲਾ ਕਰਨ ਵਾਲੀ ਹੋਵੇ ਚਾਹੇ ਬੁਰਾ ਕਰਨ ਵਾਲੀ ਹੋਵੇ। ਉਹਦੀ ਹੁੰਦੀ ਜੇ ਬਚਾਉਣਾ ਹੋਵੇ ਮਾਰਨ ਤਾਂ ਉੱਥੇ ਹੀ ਚਾਪਾ ਦਾ ਕਰ ਦਿੰਦਾ ਮੈਨੂੰ ਮਾਰ ਦੇ ਜੇ ਬਚਾਉਣਾ ਹੋਵੇ ਤਾਂ ਬਚਾ ਲੈਂਦਾ ਬੱਕੀ ਨੂੰ ਅਸੀਂ ਮਾਰ ਵੀ ਦਿੰਦੇ ਨਾ ਕਿਤੇ ਪੰਜੇ ਕੱਢ ਕੇ ਭਰ ਵੀ ਛੱਡ ਦਿੰਦੇ ਜਿਉਂਦੇ ਰਹੋ ਉਦੋਂ तो ਨਾਲ ਉਹ ਜੀ ਇਹ ਮੈਨੂੰ ਬਾਹਰ ਕੱਢਦੀ ਕਦੋਂ ਦੇ ਕਿ ਵਿਪਲ ਇਹ ਵਾਰਦਨ ਤੇ ਕੋਸਾ ਆ ਜਾਂਦਾ ਇਹਨਾਂ ਹੁਕਮੇਂ ਅੰਦਰ ਸਭ ਕੁ ਇਹ ਆਦਮੀ ਹੁਕਮ ਨੇ ਵਿੱਚ ਹੈ ਕੀ ਆ ਜੜ ਗਿਆ ਚੇਤਨ ਕਾ ਜੜ ਗਿਆ ਸੀ ਬਸ ਕਿਹਦਨ ਪ੍ਰੇਰਣਾ ਨਾਲ ਵੱਧਦਾ ਹੋਇਆ ਪ੍ਰੇਰਣਾ ਨਾਲ ਵੱਧਦਾ ਹੋਇਆ ਜੜਰ ਨੇ ਮਿੱਥ ਪ੍ਰੇਰਣਾ ਹੁ ਦਿੱਤੀ ਵੀ ਇਹੀ ਗੱਲ ਸੀ ਜੜ ਵੱਧਦਾ ਹੈ ਇਹ ਨਾਟਵੋਲਟ ਵੱਧਦੇ ਹੁੰਦੇ ਜਿਤੇ ਲਾਹ ਹੋ ਜਾ ਐਕਸਪਲੀਟ ਹੋ ਜਾਂਦਾ ਉਹ ਵੱਧਾ ਹੈ ਹੁਕਮ ਜੜ ਹੁਕਮ ਨਾਲ ਵੱਧਾ ਹੈ ਇਹ ਵਾਸਤੇ ਕੋਈ ਚੀਜ਼ ਜਮਾ ਨਹੀਂ ਕਰਖਦੇ ਆ ਨਾ ਝਾੜੂ ਬੱਧਾ ਆਇਆ ਤਾਂ ਇਕੱਠਾ ਖੋਲ ਦੀ ਜੀਲਦੀ ਲੋਜੂਗਾ ਭੌਂਕੋ ਨੇ ਬੱਧੇ ਧਰਤੀ ਆ ਜੇ ਖੋਲਦੇ ਆਟਮੈਂਟ ਹੋਜੂਗਾ ਲੋਕਰ ਉਹ ਝਾੜੂ ਦੀ ਜੀਲਦੀ ਹੋ ਜਾਂਦੀ ਹੈ ਇਹ ਗੱਲ ਜਲੇ ਹਰੀ ਥਲੇ ਹਰੀ ਜਲੇ ਹਰੀ ਥਲੇ ਹਰੀ ਜਲਦੇ ਵਿੱਚ ਵੇਰੀਏ ਜਦੋਂ ਜਲਦੇ ਵਿਚਾਰੇ ਨਹੀਂ ਹੁੰਦਾ ਭਾਬੜ ਕੇ ਸੁੱਧਰ ਉੱਡ ਜਾਂਦਾ ਸੁੱਧਰ ਸੁੱਕ ਜੂਗਾ ਕਿਤੇ ਹੋਰੇ ਚਲਾ ਜਾਊਗਾ ਜਿੱਤੇ ਪਲਾਨ ਰਾ ਦੇਖਣੇ ਪਾਣੀ ਹੈਗਾ ਸੀ ਹੁਣ ਹੈ ਨਹੀਂ ਕਿਉਂ ਨਹੀਂ ਹੈ ਉੱਥੇ ਜਨਾਜ਼ਤ ਚਾਹੁੰਦਾ ਸੀ ਉੱਥੇ ਰਹਾ ਜਾਂ ਨਹੀਂ ਜਾਇਆ ਉੱਥੇ ਨਹੀਂ ਰਹਾ ਕਹਿੰਦੇ ਰੰਗ ਬੁੱਗਲ ਕਰਾ ਦੇ ਗਏ ਸੀ ਉੱਥੇ ਹੁਣ ਲੱਗਦਾ ਵੀ ਪਹਿਲਾਂ ਪਾਣੀ ਦੇ ਦਰਿਆ ਚੱਲਦੇ ਸੀ ਹੁਣ ਕਿੱਥੇ ਚਲਾ ਗਿਆ ਕਿਉਂ ਨਹੀਂ ਹੈ ਉੱਥੇ ਕੌਣ ਲੈ ਗਿਆ ਪਹਿਲਾਂ ਕਿਉਂ ਸੀ ਹੁਣ ਕਿਉਂ ਨਹੀਂ ਹੈ ਉਸੇ ਦਾ ਕਿਉਂ ਜਵਾਬ ਉਹਦੀ ਇੱਛਾ ਚਾਹੇ ਜਰੋਰੀ ਨਹੀਂ ਚਾ ਸਾਡਾ ਸੁਭੂਤਰ ਉਹਦੀ ਇੱਛਾ ਹੈ ਤੇ ਚਾਹੇ ਸਾਰੇ ਰੋਡਾਂ ਅਗੇ ਲੈ ਜਾਏ ਆਦਮ ਤੇ ਬਚ ਗਿਆ ਕੁਛ ਵੀ ਨਹੀਂ ਆਦਮ ਤੇ ਬਚਿਆ ਜਿੰਨਾ ਚਾਹੁੰਦਾ ਜੀਵਨ ਹੈ ਜਰ ਉਹ ਨਹੀਂ ਚਾਹੂਗਾ ਜੀਵਨ ਨਹੀਂ ਰਹਿਗਾ ਥਲੇ ਹਰੀ ਥਲੇ ਹਰੀ ਤੇ ਤੀਏ ਤੇ ਸੁੱਕਾ ਹੈ ਉੱਥੇ ਵੀ ਉਹਦਾ ਉਹਦੀ ਸ਼ਕਤੀ ਕੰਮ ਕਰਦੀ ਹੈ ਜਿੱਥੇ ਜਲ ਜਲ ਵਿੱਚ ਵੀ ਉਹਦੀ ਸ਼ਕਤੀ ਕੰਮ ਕਰਦੀ ਹੈ ਜਲ ਦੇ ਵਿੱਚ ਜੀਵ ਨੇ ਉਹਨਾਂ ਨੂੰ ਵੀ ਉਹ ਜਿੱਥੇ ਮਿਲਦੀ ਹੈ ਉਹਨਾਂ ਨੂੰ ਵੀ ਪ੍ਰੇਰਣਾ ਉੱਥੇ ਮਿਲਦੀ ਹੈ ਉਹਦਰ ਉਹਨਾਂ ਦੀ ਵੀ ਜਾਨ ਇਹ ਨਹੀਂ ਵੀ ਜਲ ਦੇ ਵਿੱਚ ਡੁੱਬ ਜਾਂਦਾ ਹੈ ਜਲ ਦੇ ਵਿੱਚ ਉਹ ਨੂੰ ਸਾਰੀ ਉਹਦਾ ਕੋਈ ਨਹੀਂ ਫਰਕ ਪੈਂਦਾ ਉਰੇ ਹਰੀ ਬਣੇ ਹਰੀ ਉਰੇ ਹਰੀ ਸਾਡੇ ਹਿਰਦੇ ਵਿੱਚ ਹਰੀ ਹੈ ਉਰ ਹੁੰਦਾ ਹਿਰਦਾ ਹਿਰਦੇ ਵਿੱਚ ਹਲ ਰਹਿਦਾ ਹੈ ਹੁਕਮ ਰਹਿਣਾ ਪ੍ਰੇਰਣਾ ਆ ਜਿਹੜੀ ਬ੍ਰਹਸਪਤੀ ਇਹਦੇ ਵਿੱਚ ਵੀ ਬਣੇ ਹਰੀ ਬਣਾ ਬ੍ਰਹਸਪਤੀ ਦੇ ਵਿੱਚ ਵੀ ਇਹ ਵੀ ਜੁੜੀਆਂ ਨੇ ਸਾਰੀਆਂ ਸਾਰੀ ਬ੍ਰਹਸਪਤੀ ਜੁੜੀਆਂ ਨੇ ਇਹਨਾਂ ਵਿੱਚ ਬ੍ਰਹਸਪਤੀ ਵਿਚ ਜਾਨ ਹੈ ਪੱਥਰ ਜੀ ਜਾਨ ਜੀਬ ਉਥੇ ਹੈ ਜਿੱਥੇ ਕੁਝ ਹਜ਼ਮ ਕਰਦਾ ਖਾਦਾ ਅੰਦਰੋਂ ਬਾਹਰੋਂ ਜਿੱਥੇ ਉਧਰ ਹੈ ਤਹਿ ਜਿਓ ਜੇ ਉਧਰ ਤਹਿ ਜਿਓ ਕਬੀਰ ਨੇ ਫੈਸਲਾ ਕਰਤਾ ਜਿੱਤੇ ਪੇਟ ਆਣਾ ਹਜ਼ਮ ਹੁੰਦਾ ਕੁਝ ਉਥੇ ਹੈ ਉਹ ਦੋਹੇਦਾਰੀ ਦਾ ਰੂਪ ਚ ਹੁਕਮ ਰੂਪ ਚ ਕਿਤੇ ਕਿਤੇ ਗ੍ਰਹਿ ਹਰੀ ਗੁਫੇ ਹਰੀ ਗ੍ਰਹਿ ਹਰੀ ਪਹਾੜਾਂ 'ਚ ਵੀ ਗਰ ਪਹਾੜ ਨੂੰ ਗੁਫੇ ਹਰੀ ਗੁਫਾ ਹਵੇ ਪਹਾੜ ਦੇ ਵਿੱਚ ਉੱਥੇ ਵੀ ਹੈ ਹੁਕਮ ਹੁਕਮ ਤੋਂ ਬਚਿਆ ਨਹੀਂ ਜਾ ਸਕਦਾ ਹੁਕਮ ਆਉਂਦਾ ਹੈ ਇਹ ਤਾਂ ਬਚਿਆ ਨਹੀਂ ਜਾ ਸਕਦਾ ਤਾਂ ਹੀ ਕਿਹਾ ਨਾ ਕੋਰਟ ਨਾਲ ਆਡਰਾਂ ਛੋਟਣਾ ਤੁਸੀਂ ਕਰਤਪਕਾਰ ਦੋ ਕਰ ਝਾੜੋ ਗੋਭਾ ਦੇ ਵਿੱਚ ਲੁਕ ਜਾ ਜਾ ਕੇ ਉੱਥੇ ਕਿਹੜਾ ਨਹੀਂ ਬਹੁਤ ਔੜੀ ਕਿਤੇ ਵੀ ਚਲਾ ਜਾਵੇ ਹੁਕਮ ਹਾਜੇਗਾ ਜਬੜਾ ਮੰਨੂ ਹੁਕਮੇ ਛੇਤੇ ਹਰੀ ਨਬੇ ਹਰੀ ਹਾਂ ਛੇਤੇ ਨਾ ਮਾ ਧਰਤੀ ਨੂੰ ਕਹਿੰਦੇ ਨੇ ਧਰਤੀ ਦੇ ਉੱਪਰ ਧਰਤੀਆਂ ਦੇ ਉੱਪਰ ਕਿਤੇ ਹਰੀ ਨਵੇ ਹਰੀ ਨਵੇਂ ਆਕਾਸ਼ ਦੇ ਵਿੱਚ ਵੀ ਆਕਾਸ਼ ਵੀ ਜੀਉਂਦੇ ਨੇ ਕਿਟਾ ਮਤਲਬ ਜਿਹੜੇ ਵਰ ਜਾਂਦੇ ਨੇ ਨਾ ਆਤਮਾ ਉਹਨਾਂ ਦਾ ਆਕਾਸ਼ ਨੂੰ ਸੰਗੋਧ ਰਹੇ ਆਕਾਸ਼ ਦੇ ਥਰੂ ਉਹ ਜਾ ਕੇ ਫਿਰ ਜਿਵੇਂ ਫੜਲੇ ਫੜਾ ਦੇ ਜੇ ਪ੍ਰਵੇਸ਼ ਕਰਦੇ ਹਨ ਆਣ ਦੇ ਦਾਣੇ ਸਾਰਿਆਂ ਜੀਵਾਂ ਦੀ ਉਹਨਾਂ ਨੂੰ ਆ ਜਾਂਦਾ ਨਾ ਬਹੁਤ ਫਰਦਰ ਹਵਾ ਦੇ ਵਿੱਚ ਉਹ ਆਤਮਾ ਵੀ ਨੇ ਉਹ ਕਹਿੰਦਾ ਕਿ ਤੈਨੂੰ ਕੁਝ ਨਹੀਂ ਉਹਨਾਂ ਨੇ ਕਹਿੰਦੇ ਕਿ ਕਹਿਣਾ ਉਹਨਾਂ ਨੇ ਆਪਣੀ ਜਗ੍ਹਾ ਬਾਲਾੜੀਆਂ ਜਾ ਕੇ ਜਿਦੋਂ ਦਾਣੇ ਹੋਣਗੇ ਇਹਨਾਂ ਦੇ ਫਲ ਹਰੇਕ ਦੇ ਵਿੱਚ ਜੀਵ ਉਹ ਵਰਦੇ ਵੀ ਮੇਰੇ ਨੇ ਜਾਦੇ ਵੀ ਮੇਰੇ ਨੇ ਦਵੇ ਦਾ ਨਾਮ ਆਕਾਸ਼ ਰੂ ਕਰਨ ਇਹ ਨਾਮ ਉਹ ਦੇ ਵਿੱਚ ਕਹਿੰਦੇ ਨੇ ਆਕਾਸ਼ ਰੂ ਧਰਤੀ ਧਰਤੀ ਦੇ ਉੱਤੇ ਵੀ ਤਾਂ ਜੀਵ ਮਤਲਬ ਧਰਤੀ 'ਚੋ ਵੀ ਤਾਂ ਪੈਦਾ ਹੁੰਦੇ ਨੇ ਧਰਤੀ ਦੇ ਵਿੱਚ ਵੀ ਕੀੜੇ ਹੁੰਦੇ ਨੇ ਨਾ ਇੰਹਾ ਹਰੀ ਉਹਾਂ ਹਰੀ ਇੱਥੇ ਵੀ ਹਰੀ ਐ ਕਿਤੇ ਹੋਰ ਚਲੇ ਜਾ ਉੱਥੇ ਵੀ ਕਹਿਣਾ ਸਰਬ ਵਿਆਪੀ ਆ ਹੁਕਮਾ ਸਰਬ ਵਿਆਪੀ ਹੈ ਜਿਮੀ ਹਰੀ ਜਮਾ ਹਰੀ ਕੋ ਜੋ ਹਰੀ ਜਮਾ ਹਰੀ ਦੁਹਰਾ ਕਹਤਾ ਧਰਤੀ ਆਕਾਸ਼ ਉਹ ਨਾਲੀ ਮੁਸਲਮਾਨੀ ਭਾਸ਼ਾ ਹੈ ਉਹ ਹਿੰਦੀ ਭਾਸ਼ਾ ਸੀ ਛੇ ਤਿਆਰੀ ਨਵੇ ਹਰੀ ਸਭ ਤੋਂ ਅਧੀਨ ਭਾਸ਼ਾ ਸੀ ਜਦੋਂ ਆਦੀ ਉਹ ਮੁਸਲਮਾਨਾਂ ਦੀ ਭਾਸ਼ਾ ਜਾਂ ਦੋਹਾਂ ਦਾ ਅਰਥ ਇੱਕੋ ਹਰੀ ਅਪੇਖ ਦਾ ਪੇਖ ਨਹੀਂ ਕੋਈ ਪੇਖ ਨਹੀਂ ਕੋਈ ਅਲੇਖ ਆ ਘਰੇ ਅਲੇਖ ਹੁਣ ਤੈਨੂੰ ਪਤਾ ਹੈ ਦੋ ਤਲੇ ਜਿੰਦਿੱਥੇ ਜ ਸਰਬਆਪੀ ਵੰਗੂ ਕਹਿਤਾ ਪਰ ਸਵਾਲਿਆ ਵੀ ਫਿਰ ਸਾਡੇ ਪਕੜ ਚ ਕਿਉਂ ਨਹੀਂ ਹੁੰਦਾ ਦੀਦਾ ਕਿਉਂ ਨਹੀਂ ਸਾਨੂੰ ਹੈ ਹਰ ਜਗ੍ਹਾ ਸਾਨੂੰ ਕਦੇ ਵੀ ਲੱਗਦਾ ਲੋਕ ਲੱਭਦੇ ਕਿਉਂ ਫਿਰਦੇ ਉਹ ਲਿਖਤ ਤੋਂ ਬਾਹਰ ਹੈ ਲਿਖਤ ਤੋਂ ਪਰੇ ਆ ਜਿੰਨੇ ਗ੍ਰੰਥ ਨੇ ਹਰੀਓ ਤੋਂ ਪਰੇ ਆ ਲਿਖਤਾਂ ਤੋਂ ਜਾਂ ਹਰ ਲਿਖਤਾਂ ਤੋਂ ਪਰੇ ਆ ਬਰੋਸੀ ਪੋਥੀਆਂ ਚ ਕੀ ਲੱਭਦੇ ਆ ਸਵਾਲੇ ਪੈਦਾ ਹੁੰਦਾ ਹੈ ਵੀ ਪੋਥੀਆਂ ਚ ਗੁਰੂ ਗ੍ਰੰਥ की ਚ ਕੀ ਲੱਭਦੇ ਆ ਅਸੀਂ ਲੱਭ ਜਾਂਦਾ ਆਹੀ ਤਾਂ ਦੱਸਿਆ ਹੋਇਆ ਹੈ ਵੀ ਕਿੱਥੇ ਆ ਉਹ ਉਹ ਹੀ ਦੱਸਿਆ ਉਹਦਾ ਦੱਸਿਆ ਹੋਇਆ ਚ ਉਹਦਾ ਦੱਸ ਲੱਭਦੇ ਆ ਇਹ ਤਾਂ ਉਦਣਾ ਵਲਾਪ ਕਿਵੇਂ ਹਰੀ ਨਾ ਇਹ ਤਾਂ ਉਹ ਗਿਆਨ ਦੱਸਿਆ ਵੀ ਇਹ ਤਾਂ ਕੁਝ ਹੁੰਦੇ ਹੋਏ ਦੀ ਪ੍ਰਾਪਤੀ ਕਿਸ ਤਰੀਕੇ ਨਾਲ ਕਰੀਏ ਫਿਰ ਤਾਂ ਹੀ ਗੱਲ ਦੱਸੀ ਹੋਈ ਆ ਜੋ ਹੋਰ ਕੁਝ ਨਹੀਂ ਹਰੀ ਨਹੀਂ ਹੁੰਦਾ ਇਹਦੇ ਵਿੱਚ ਗ੍ਰੰਥਾ ਜਿਨੇ ਹਰੀ ਹੁੰਦਾ ਚੇਤਨਾ ਨਹੀਂ ਹੁੰਦਾ ਗ੍ਰੰਥਾ 'ਚ ਜਿੱਤੇ ਚੇਤਨਾ ਹੁੰਦਾ ਭੁੱਖ ਲੱਗਦੀ ਆ ਜਿੱਤੇ ਚੇਤਨਾ ਹੁੰਦਾ ਗਰਮੀ ਲੱਗਦੀ ਆ ਸਰਦੀ ਲੱਗਦੀ ਆ ਪਸੀਨਾ ਆਉਂਦਾ ਗ੍ਰੰਥਾਂ 'ਚ ਨਹੀਂ ਹੁੰਦਾ ਹੈਗਾ ਜਿਹੜੇ ਇਹ ਮੰਨਦੇ ਨੇ ਗ੍ਰੰਥਾ ਜੇ ਇਸੀ ਲਾਉਂਦੇ ਨੇ ਮੂਰਖ ਨੇ ਇਹ ਪੱਖੇ ਲਾਉਂਦੇ ਨੇ ਮੂਰਖ ਨੇ ਉਹਨਾਂ ਨੂੰ ਵਧਾਈ ਨਹੀਂ ਹੈ ਵੀ ਗੱਲ ਕੀ ਹੈ ਉਹ ਗ੍ਰੰਥ ਪੜ੍ਹਦਾ ਨਹੀਂ ਇਸੀ ਲਾਉਣ ਲੱਗੇ ਉਹ ਇਹ ਮਨ ਨਹੀਂ ਪ੍ਰਗਟ ਹੋ ਦੇ ਤਾਂ ਡੈਡਵਰਟ ਵੀ ਹੋ ਸਕਦੀ ਹੈ ਗੁਰਾ ਕੀਤੇ ਡੈਡ ਬੋਡੀ ਵੀ ਹੋ ਸਕਦੀ ਹੈ ਉਰਪਿਤ ਦੇਗਾ ਨਹੀਂ ਇਹ ਅਕੇ ਅੰਤਾ ਦਾ ਇੱਕ ਹੱਦ ਐਕਸਟ੍ਰੀਮ ਹੈ ਗਿਆਨਤਾ ਦੀ ਏਸੀ ਲਾਉਣਾ ਪੱਖੇ ਲਾਉਣਾ ਇਹ ਸਮਝ ਲਓ ਵੀ ਇਹ ਤੋਂ ਕੋਹਰ ਗਿਆਨਤਾ ਤੋਂ ਪਰੇ ਗਿਆਨਤਾ ਹੀ ਹੋਸ ਉਹਨਾਂ ਨੂੰ ਸਮਝ ਆਏ ਨਹੀਂ ਸਕਦਾ ਕੀ ਉਹਨਾਂ ਨੂੰ ਸਮਝ ਉਹ ਜੜ ਬੰਦੀ ਉਹਨਾਂ ਦੀ ਪੱਥਰ ਇੱਕ ਤਾਂ ਪੱਥਰ ਪੂਜਦਾ ਕਾਫੇ ਪੱਥਰ ਹੈ ਪੱਥਰ ਪੂਜਣਾ ਕਮਦ ਕਮ ਨੂੰ ਇਹਦਾ ਵਤਨ ਵੀ ਇਹ ਪੱਥਰ ਹੈ ਜਿਹੜਾ ਆਪੇ ਪੱਥਰ ਨੂੰ ਪੱਥਰ ਦੀ ਵੀ ਪਛਾਣ ਲਈ ਵੀ ਪੱਥਰ ਹੈ ਉਹਦਾ ਪੱਥਰ ਨੂੰ ਆਪ ਤੋਂ ਵਧੀਆ ਸਮਝਦਾ ਇੱਕ ਤਾਂ ਪੱਥਰ ਨੂੰ ਪੱਥਰ ਬਣ ਕੇ ਪੂਜਦਾ ਇੱਕ ਪੱਥਰ ਨੂੰ ਆਪ ਨਾ ਚੰਗਾ ਬਣ ਕੇ ਪੂਜਦਾ ਉਹ ਜਿਹੜਾ ਤੂੰ ਚੇਤਨਾ ਤੇਰੇ ਨਾਲ ਜੁੜ ਕੇ ਹੋ ਗਿਆ ਪੱਥਰ ਚਾਹੇ ਮੂਰਤੀ ਕਿਸੇ ਦੀ ਵੀ ਹੋਵੇ ਇਹ ਤੇ ਗਿਆਨ ਹੈ ਸਾਡੇ ਕੋਲੋਂ ਗਿਆਨ ਹੈ ਜੀ ਇਸ ਕਰਕੇ ਸਾਡੇ ਨੂੰ ਸੁਪੀਰੀਅਰ ਹੈ ਅਸੀਂ ਇਹ ਨੂੰ ਮੰਨਦੇ ਹਾਂ ਸਾਡੇ ਕੋਲੋ ਚੀਜ਼ ਗਿਆਨ ਹੈ ਜਿਹੜਾ ਇਹਦੇ ਚ ਬੰਨਣਾ ਜੀ ਤੇ ਕੋਲੋ ਚੀਜ਼ ਮਿਲੇ ਸਾਡੇ ਕੋਲ ਨਾ ਹੋਵੇ ਉਹਦੀ ਕਦਰ ਫਿਰ ਕੱਡੀ ਦੀ ਹੁੰਦੀ ਹੈ ਇਸ ਗੱਲ ਦੀ ਕਦਰ ਲੇ ਇਹਦੇ ਵਿੱਚ ਤਾਂ ਹੈ ਨਹੀਂ ਹੋਰ ਜਾ ਲੇਖ ਨੇ ਵਿੱਚੇ ਨਹੀਂ ਲਿਖਤ ਵਿੱਚੇ ਨਹੀਂ ਹੈ ਉਹ ਇਹ ਅੱਖਰ ਖਰਜਾਂਗੇ ਉਹ ਅੱਖਰ ਇਹਨਾਂ ਵਿੱਚ ਨਹੀਂ ਤਕਵੀਰ ਨੇ ਕਿਹਾ ਤੁਸੀਂ ਗੱਲ ਵੀ ਜੋ ਮੈਂ ਅੱਖਰ ਲਿਖ ਦਿੱਤੇ ਇਹਦੇ ਵਿੱਚ ਨਾ ਵੜ ਲਿਓ ਕਿ ਇਹਦੇ ਵਿੱਚ ਨਾ ਬੁਲਾਗੇ ਅਸੀਂ ਜੋ ਬੋਲਿਆ ਜਾਂਦਾ ਉਹ ਜਪਨੀ ਹੁੰਦਾ ਉਹ ਚ ਵੀ ਗਿਆਨ ਹੁੰਦਾ ਉਹ ਕੀ ਆ ਫਿਰ ਉਹਦਾ ਬਣਾ ਕਰਨ ਤੇ ਜੇ ਸੁਣਦਾ ਉਹ ਹੋ ਹੁੰਦਾ ਉਹ ਜਿਹੜੀ ਬਾਣੀ ਸੁਣਦੀ ਹੈ ਨਾ ਬਿਨਾ ਕਰਨ ਤੇ ਉਹ ਹੁੰਦਾ ਬਾਕੀ ਦੋਨੇ ਬਾਰੇ ਗਿਆਨ ਐ ਦੱਸਿਆ ਹੋਇਆ ਉਹਦਾ ਬਲੂ ਦਾ ਡਾਇਰੈਕਟ ਹੈ ਕੇ ਸਰ ਨੂੰ ਬਲੂ ਦਾ ਇਹ ਦੱਸਿਆ ਹੋਇਆ ਵੀ ਐਂ ਮਿਲਦਾ ਹੁੰਦਾ ਜਿਹਨੂੰ ਮਿਲਿਆ ਉਹਨੇ ਦੱਸਿਆ ਇਹ ਤਰੀਕਾ ਜੁਗਤ ਲੋਕ ਹੋਰ ਹੋਰ ਤਰੀਕੇ ਕਰਦੇ ਤੇ ਗਲਤ ਤਰੀਕੇ ਦੱਸ ਉਹ ਦੱਸਦੇ ਵੀ ਇਹ ਤਰੀਕਾ ਗਲਤ ਅਬਦੀ ਕਾਮਯਾਬ ਹੋਈ ਐ ਕਾਮਯਾਬ ਹੋਈਆ ਗੁਰਮਤਾਲੀ ਵਿਧੀ ਇਹ ਵਿਧੀ ਸੁਣ ਕੇ ਜੜਨੋਂ ਉੱਠ ਭਗਤੀ ਲੱਗਾ ਉਹ ਵਿਧੀ ਐ ਤਾਂ ਗੁਰਬਾਣੀ ਦੇ ਵਿੱਚ ਸਾਨੂੰ ਬਿਲ ਦੀ ਪ੍ਰਾਪਤੀ ਦੀ ਵਿਧੀ ਐ ਗੁਰਬਾਣੀ ਵਿੱਚ ਨਹੀਂ ਐ ਕੁਝ ਗੁਰਬਾਣੀ ਗਿਆਨ ਐ ਵਿਧੀ ਐ ਬਸ ਜੇ ਕੁਝ ਆਇਆ ਤਾਂ ਵਿਧੀ ਐ ਵਿਧੀ ਕਰਨੀ ਪਊ ਸਾਨੂੰ ਸਭ ਪਊਗੀ ਫੇਰ ਕਰਨੀ ਪਊਗੀ ਵਿਧੀ ਨਾਲ ਉਹ ਪ੍ਰਾਪਤੀ ਵੀ ਹੋ ਉੱਚ ਕਰਨਾ ਬਹੁਤ ਸਮਝ ਕੇ ਜੋ ਸਮਝ ਲਿਆ ਉਹੀ ਕਰਨਾ ਬਹੁ ਬਰੇ ਜੇ ਕਿਸੇ ਨੇ ਪ੍ਰਾਪਤੀ ਕਰਨੀ ਹੈ ਜੇ ਇਦਾਂ ਹੀ ਦੋ ਬੱਤੀ ਜਗਾਉਣੇ ਆ ਤਾਂ ਜਗਾਉਂਦੇ ਰਹੋ ਫੇ ਤਾਂ ਪ੍ਰਾਪਤੀ ਹੈ ਨਹੀਂ ਕੁਝ ਫਿਰ ਤਾਂ ਮੁਰਤੀ ਪੂਜਾ ਵਾਲੀ ਉਹ ਗੱਲ ਹੈ ਜਿਵੇਂ ਮੁਰਤੀ ਪੂਜਾ ਵਾਲੇ ਕਰਦੇ ਤੁਸੀਂ ਕਰੀ ਹੋ ਜਾਂਦੇ ਲੱਭਦਾ ਕਿਸੇ ਨੂੰ ਕੀ ਕੁਝ ਨਹੀਂ ਹਕੀਕਤ ਹੈ ਕਿਸੇ ਨੂੰ ਕੁਝ ਨਹੀਂ ਲੱਭ ਰਿਹਾ ਔਰ ਕੋਈ ਲੱਭਣ ਵਾਸਤੇ ਕਰ ਬਿੜੇ ਰਹੇ ਲੋਕ ਬੰਗਾਂ ਵੀ ਦਰਿਆਵੀ ਨੇ ਜਿਹੜੀਆਂ ਗੁਰਬਾਣੀ ਦੇ ਵਿੱਚ ਮੱਗਾ ਰਿਜਲੈਕਟ ਕੀਤੀਆਂ ਹੋਈਆਂ ਨੇ ਵੀ ਇਹ ਬਿਲਡਿੰਗਾਂ ਦੀਆਂ ਨੇ। ਇਦਾਂ ਬਿਲਡੀਆਂ ਨਹੀਂ ਉਹ ਮੰਗਦੇ ਉੱਥੇ ਜਾ ਕੇ। ਉਹ ਤਾਂ ਇਦਾਂ ਬਿਲਡੀਆਂ ਨਹੀਂ ਉਹ ਤਾਂ ਆਪੇ ਦੇ ਹੀ ਜਾਂਦਾ। ਉਹ ਬਿਨਾਂ ਮੱਗੇ ਦੇ ਹੀ ਜਾਂਦਾ ਸਾਰਿਆਂ ਨੂੰ। ਉਹਦੇ ਵਿੱਚ ਕੋਈ ਨਹੀਂ ਫਰਕ ਪੈਣਾ। ਜਿਹੜੇ ਸੰਸਾਰੀ ਪਦਾਰਥ ਦੇ ਇਹਨਾਂ ਦਾ ਨਹੀਂ ਕੋਈ ਫਰਕ ਪੈਣਾ ਹੁੰਦਾ ਇਸ ਗੱਲ ਨੂੰ। ਇਹ ਤਾਂ ਧਾਰਮਿਕ ਬੰਦਿਆਂ ਨੂੰ ਸੁਭਾਅ ਘੱਟ ਦੱਸਦਾ ਜਿਹੜਾ ਇਹ। ਕਿ ਜਿਹੜਾ ਨਮ ਆਇਆ ਸੀ ਧਾਰਮਿਕ ਬੰਦਾ ਨੂੰ ਤਾਂ ਘੱਟ ਦਿੰਦਾ ਹੁੰਦਾ ਉਹ ਆਪਣੇ ਬੰਦੇ ਨੂੰ ਜ਼ਹਿਰ ਘੱਟ ਦਈ ਦੀ ਹੈ ਜੇ ਉਹ ਨੇ ਜ਼ਿਆਦਾ ਜ਼ਹਿਰ ਖਾਣੀਆ ਫਿਰ ਛੱਡ ਦੇਣ ਗੁਰਦਾਰੇ ਜਾਣਾ ਸਭ ਗੁਰੂ ਨੂੰ ਬੰਨਣਾ ਹੀ ਛੱਡ ਦੇਣ ਫਿਰ ਜ਼ਹਿਰ ਜ਼ਿਆਦਾ ਮਿਲ ਜੂਗੀ ਇਹ ਜ਼ਿਆਦਾ ਜ਼ਹਿਰੇ ਲੈਣੀ ਹੈ ਤੇ ਇਧਰੋਂ ਕਿਤੇ ਨਹੀਂ ਮਿਲਦੀ ਹੈ ਹੈ ਜਿਹੜੇ ਗੁਰਦਾਰੇ ਜਾਂਦੇ ਨੇ ਉਹਨਾਂ ਕੋਲ ਤਾਂ ਮਾਇਆ ਜ਼ਿਆਦਾ ਹੈ ਜੇ ਜ਼ਹਿਰੇ ਖਾਣੀਆਂ ਫਿਰ ਛੱਡ ਦਿਓ ਫਿਰ ਵਾਗੀ ਹੋ ਜਾਓ ਡਾਕਟਰ ਕੋ ਜਾਏਗਾ ਡਾਕਟਰ ਦਾ ਸਲਾਹ ਦਊਗਾ ਇਹ ਚੀਜ਼ ਲਾਖ ਡਾਕਟਰ ਤਾਂ ਹੀ ਸਲਾਹ ਦਊਗਾ ਨਹੀਂ ਤਾਂ ਇਹ ਤਾਂ ਰੁਕਸਾਨ ਹੋਊਗਾ ਇਹ ਨਹੀਂ ਗਾੜੀ ਬਾਕੀ ਸਾਰੇ ਗਰੀਬ ਹੋਏ ਨੇ ਜਿੱਦੇ ਵੀ ਸੀਗੇ ਉਹ ਕਹਿੰਦੇ ਗਰੀਬੀ ਗੱਦਾ ہماری ਇਹ ਗਰੀਬੀ ਦੀ ਗੱਲ ਆਲੇ ਪਾਰ ਹੁੰਦਾ ਇਹ ਪੁਰ ਜਿੱਤਿਆ ਜਾਂਦਾ ਉਧਰ ਨਹੀਂ ਜਿੱਤਿਆ ਜਾਂਦਾ ਅਥੀਦਾ ਉਲਟਾ ਰਸਾ ਪੜ ਲਿਆ ਉਹ ਉਦਾਸ ਨਾ ਕੀ ਕੇ ਹਰਦੇ ਉਹ ਹੀਰਾ ਛੱਡ ਕੇ ਹਰਦੇ ਉਹ ਕਲ ਚਲਦੀ ਹੈ ਨਾ ਹਰੀ ਦੀ ਹਰਦੇ ਉਹ ਹੀਰਾ ਛੱਡ ਕੇ ਕਰੇ ਆਣ ਕੀ ਆਸ ਤੇਰੇ ਨਾਲ ਦੋਸਤ ਜਾਣਗੇ ਸੱਚ ਬਾਹ ਉਤਰ ਬੁਦਾ ਸੱਚ ਗੱਲ ਕਹਾ ਸਾਰੇ ਦੋਸਤ ਜਾਣਗੇ ਜਿਹੜੇ ਹਰ ਨੂੰ ਛੱਡ ਕੇ ਹੋਰ ਕਿਸ ਜੀ ਦੀ ਆਸ ਰੱਖਣਗੇ ਜਿਹੜੇ ਗੁਰਦੁਆਰੇ ਜਾ ਕੇ ਹਰ ਨੂੰ ਛੱਡ ਗਏ ਹੋਰ ਕਿਸੇ ਚੀਜ਼ ਦੀ ਆਸ ਰੱਖਦੇ ਨੇ ਦੋਜਿਕ ਜਾਣਗੇ ਜਾਣਗੇ ਤਾਂ ਕੁਰਬਾਨੀ ਦੇ ਵਿੱਚ ਚਲੇ ਗਿਆ ਤਾਂ ਉਹਦਾ ਕਹਿੰਦਾ ਦੋਜਿਕ ਜਾਣਗੇ ਤੁਸੀਂ ਉਦੋਂ ਹੋਰੇ ਕੁਝ ਬੋਲਦੇ ਜਾ ਕੇ ਇਹਦਾ ਬਲ ਤੁਸੀਂ ਕੁਝ ਨਹੀਂ ਬੋਲਦੇ ਹੋਰ ਉਦੋਂ ਜਾ ਕੇ ਜਿਹੜੇ ਗੁਰਦੁਆਰੇ ਅਰਦਾਸਾਂ ਕਰਾਉਂਦੇ ਨੇ ਦੋਜਿਕ ਦੀ ਅਰਦਾਸ ਹੁੰਦੀ ਆ ਉਹ ਹੋਲੀ ਕਰ ਦਿੰਦੀ ਹੁੰਦੀ ਕਰਿਆਣ ਕੀ ਆਸ ਹੈ ਆਸ ਹੈ ਲਿਖਿਆ ਮਰਦਾਨੀ ਹੈ ਵਿੜਿਆ ਨਹੀਂ ਲਿਖਿਆ ਮੜਿਆ ਵਿਲਦਾ ਕੁਛ ਨਹੀਂ ਆਸ ਐ ਸਿਰਫ ਇਹ ਆਸ ਦੋਜਿਕ ਲੈ ਜਾਂਦੀ ਐ ਜਿਹੜੀ ਅਸੀਂ ਆਸ ਰੱਖ ਕੇ ਗੁਰਦੁਆਰੇ ਜਾਂਦੇ ਹਾਂ ਮੇਰੇ ਤਾਂ ਵੀ ਨਹੀਂ ਇਹ ਪਿਲੇਖ ਹੈ ਕਰੇ ਆਣ ਕੀ ਆਸ ਕਰੇ ਹਰ ਹਿ ਹਰ ਹੀਰਾ ਛਾੜ ਕੇ ਕਰੇ ਆਣ ਕੀ ਆਸ ਹੋਰ ਕਿਸੇ ਜੀਵ ਦੀ ਆਸ ਰੱਖ ਕੇ ਜੇ ਗੁਰਦੁਆਰੇ ਜਾਂਦਾ ਆਰਦਾਸ ਕਰਾਉਂਦਾ ਇਹ ਸੱਚੀ ਗੱਲ ਐ ਕਿ ਦੋਜਿਕ ਜਾਊਗਾ ਪ੍ਰਾਪਤਿਆਂ ਨੂੰ ਉਹ ਦੋਜਕ ਦੀ ਅਰਦਾਸ ਹੋ ਰਹੀ ਅਸਲ ਚ ਦੋਜਕ ਦੀ ਭੁੱਖ ਹੈ ਉਹਦੇ ਵੱਟੇ ਜੋ ਕਰਦਾ ਹੈਦਾ ਦੋਜਕ ਮਿਲ ਜਾਣ ਉਹ ਨੂੰ ਉਹ ਮਿਲੇ ਜਾਂ ਨਾ ਮਿਲੇ ਜਿਹੜੀ ਅਰਦਾਸ ਕਰਦੇ ਗਏ ਦੋਜਕ ਜੀ ਉੱਠ ਬੜੂਗਾ ਉਹ ਤਾਂ ਮਿਲ ਲੈ ਮਿਲਣਾ ਉਹ ਨਹੀਂ ਕੋਈ ਹਟਾ ਸਕਦਾ ਦੋਜਕ ਨੂੰ ਜਿਹੜੀ ਵਸਤੂ ਲੈਣ ਗਿਆ ਖਬਰਾਂ ਉਹਦੇ ਪਹਿਲਾਂ ਹੀ ਹੋਵੇ ਲਿਖੀ ਹੋਈ ਜੇ ਪਹਿਲਾਂ ਹੀ ਲਿਖੀ ਹੋਈ ਹੈ ਹੁਕਮ ਦੇ ਵਿੱਚ ਫੇਰ ਮਿਲ ਜਾਣੀ ਹੈ ਜੇ ਨਹੀਂ ਲਿਖੀ ਹੋਈ ਨਹੀਂ ਮਿਲਣੀ ਉਹ ਤਾਂ ਬਿਲਡਿੰਗ ਹਕੂਮਤ ਦੇ ਨਾਲ ਹੈ ਜੋ ਪਹਿਲਾ ਪ੍ਰੋਗਰਾਮ ਹੈ ਉਹ ਤਾਂ ਉਹਦੇ ਮਤਵਕੇ ਬਿਲਡਿੰਗ ਹੈ ਉਜਲੀ ਕੋਈ ਫਰਕ ਪੈਣਾ ਦੋਜਕ ਜੂੜ ਵਾਦੇ ਜੜ ਗਏ ਰੁਪਕ ਜੜ ਜਾਣਾ ਦੋਜਕ ਰੁਪਾ ਦੋਜਕ ਦਾ ਮਿਲ ਜਾਣਾ ਇਹ ਜਰੂਰ ਬੜ ਜਾਣਾ ਹੈ ਆਪੇਖ ਹਰੀ ਆਪੇਖ ਹਰੀ ਕੋਈ ਭੇਖ ਨਹੀਂ ਹੈ ਹਰੀ ਦਾ ਹੁੰਦਾ ਇਹ ਕੋਈ ਕਹਿਣਾ ਮੈਂ ਫਲਾਣਾ ਭੇਖ ਹੋਣਾ ਲਿਆ ਇਹ ਹਰੀ ਵਰਗਾ ਭੇਖ ਹੈ ਇਹ ਨਹੀਂ ਹੁੰਦਾ ਜੋ ਜਨਮ ਲਈ ਜਾਂਦਾ ਵੇਖਦਾ ਕੀ ਹੁਣ ਵੇਖਦੇ ਜਨਮ ਵਾਲੇ ਦਾ ਹੁੰਦੇ ਅਦੋਖ ਹਰੀ ਅਦੋਖ ਹਰੀ ਕੋਈ ਕੋਈ ਦੋਖ ਨਹੀਂ ਹੈ ਦੋਖ ਆਦਮੀ ਜਦੋਂਦਾ ਇਹਨਾਂ ਜਨਮ ਲੈਂਦਾ ਜਦ ਦੋਖ ਪੈਂਦਾ ਜਦ ਜਨਮ ਲੈਂਦਾ ਜਿੰਨਾ ਜਰ ਅਦੋਖ ਹੈ ਜਨਮ ਲਈ ਲੈਂਦਾ ਜਿੰਨਾ ਜਰ ਦੋਖ ਹੈ ਜੀਵ ਚ ਨਾ ਇਹ ਜੀਵ ਹੈ ਔਰ ਹਰੀ ਕੋਲ ਜਾਦੇ ਸਾਬ ਜਿੰਨਾ ਜਿਹੜਾ ਸੱਚਖੰਡ ਦਾ ਵਾਸੀ ਆ ਹਰੀ ਹੈ ਇਹ ਸੱਚਖੰਡ ਦਾ ਵਾਸੀ ਆ ਹਰੀ ਹੈ ਜਿੰਨੇ ਸੱਚਖੰਡ ਦੇ ਵਾਸੀ ਨੇ ਭਗਤ ਸਾਰਿਆਂ ਦਾ ਹੀ ਹੁਕਮ ਲਹੋ ਜਿਹੜਾ ਹਰੀ ਦੇ ਰੂਪ ਜਿਹੜੂ ਗਿਆ ਹੋਇਆ ਸਾਰਿਆਂ ਦੀ ਇੱਛਾ ਇੱਕੋ ਹੀ ਹੈ ਸਾਰਿਆਂ ਦੀ ਇਸੇ ਕਰਕੇ ਇੱਥੇ ਜਿਉਂਦੇ ਨੇ ਇੱਛਾ ਪਰਮੇਸ਼ਰ ਦੀ ਇੱਛਾ ਦੇ ਮੁਤਾਬਕ ਹੁਕਮ ਲਾਉਣ ਦਾ ਮਤਲਬ ਹੈ ਇੱਥੇ ਜਿਉਂਦੇ ਸੱਚ ਇੱਥੇ ਬੈਠੇ ਸੱਜਕੜ ਚੱਲਿਆ ਜਾਂਦਾ ਇੱਛਾ ਹੈ ਨਾ ਇੱਛਾ ਜੀ ਸੱਚਖੰਡ ਨਾਲ ਖੰਦੀ ਹੋ ਸੱਚਖੰਡ ਦਾ ਬਾਸ ਸੀ ਜੇ ਦੀ ਇੱਛਾ ਸੱਚਖੰਡ ਤੋਂ ਵਿਰੋਧ ਹੈ ਤ ਕੁਦਰਤ ਤੋਂ ਵਿਰੋਧ ਜੀ ਦੀ ਇੱਛਾ ਉਹ ਨਰਕ ਚ ਹੈ ਕੁਦਰਤ ਦੇ ਅਨੁਸਾਰ ਜੇ ਇੱਛਾ ਹੈ ਜਿਹਨੂੰ ਪਾਣਾ ਬਿਠਾ ਲੱਗਦਾ ਉਹ ਇੱਥੇ ਵੀ ਸੱਚਖੰਡ 'ਚ ਬੈਠਾ ਐਵੇਂ ਭਲੇਖਾ ਹੈ ਸਰੀਰ ਕਰਕੇ ਕਿਤੇ ਹੋਵੇ ਮਨ ਕਰਕੇ ਸੱਚਖੰਡ ਜਾਓ ਪਾਪਾ ਸਾਧਰ ਸੁਖ ਸੰਗਰੇ ਦੇ ਵਿੱਚੇ ਹੈ ਇਹ ਕਿਹੜਾ ਬਾਹਰ ਆ ਜਿਹੜਾ ਸੰਸਾਰ ਹੈ ਉਹਦੇ ਵਿੱਚ ਹੀ ਹੈ। ਹੂੰ। ਅਦਵਾਹਰੀ ਅਦਵਾਹਰੀ। ਦ્વੈਤ ਨਹੀਂ ਹੈ ਉਹਦੇ ਵਿੱਚ। ਐ ਨਹੀਂ ਅੱਗੇ ਸਾਨੂੰ ਮਾੜਾ ਸਮਝੇ ਕਿਸੇ ਨੂੰ ਚੰਗਾ ਸਮਝੇ। ਕਿਸੇ ਨੂੰ ਆਪਣਾ ਸਮਝੇ ਕਿਸੇ ਨੂੰ ਪਰਾਇਆ ਸਮਝੇ। ਇਹ ਜਿਹੜੇ ਜੀਵ ਜਿਵੇਂ ਸਮਝਦੇ ਨੇ ਇਹਦੇ ਹਿਸਾਬ ਨਾਲ ਇਹਨੂੰ ਰੂੜੀ ਜਾਂਦਾ। ਦੋ ਘੇਰਾ ਚੱਲੇ। ਉਹ ਦੋ ਖਾਂ ਦੇ ਉੱਤੇ ਵਿਚਾਰ ਹੁੰਦਾ। ਡਾਕਟਰ ਤਾਂ ਮਰੀਜ਼ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਮਰੀਜ਼ ਨੇ ਹਸਪਤਾਲ ਜਾਂਦੇ ਨੇ ਉਹ ਡਾਇਗਨੋਸ ਕਰਕੇ ਤਰ੍ਹਾਂ ਤਰ੍ਹਾਂ ਜਿਹੇ ਜਿਹੇ ਮਰੀਜ਼ ਹੋ ਜੀ ਦਵਾਈ ਲਿਖੀ ਜਾਂਦੇ ਨੇ ਉਹਗਾ ਜੇ ਟ੍ਰੀਟਮੈਂਟ ਕਰੀ ਜਾਂਦੇ ਨੇ ਜਿਹੇ ਜਿਹੇ ਮਰੀਜ਼ ਹੈ ਜਿਹੇ ਜੀ ਬਿਮਾਰੀ ਹੈ ਉਹ ਇਹ ਥੋੜੀ ਦੇਖਦੇ ਨੇ ਵੀ ਆ ਜਿਹੜਾ ਹੈ ਲਾ ਟੀਵੀ ਵਾਲਾ ਗਏ ਇਹਨੂੰ ਕੈਂਸਰ ਕਹਿ ਦਈਏਗਾ ਜਿਹੜੀ ਬਿਮਾਰੀ ਹੈ ਉਸੇ ਦੀ ਦਵਾਈ ਦੇਣੀ ਉਦੇ ਡਾਕਟਰ ਵਾਤੇ ਤੇ ਮਰੀਜ਼ ਆ ਮਰੀਜ਼ ਆ ਸਾਰੇ ਮਰੀਜ਼ ਆ ਆਪਣਾ தம் ਮਰੀਜ਼ ਪ੍ਰਾਇਆ தம் ਮਰੀਜ਼ ਮਰੀਜ਼ ਤਾਂ ਮਰੀਜ਼ ਹੀ ਹਨ ਓਜੀ ਅਕਾਲ ਹਰੀ ਅਕਾਲ ਹਰੀ ਕੱਲ ਤੋਂ ਪਰੇ ਆ ਸਮੇਂ ਨਾਲ ਤਾਂ ਕੋਈ ਅਸਰ ਨਹੀਂ ਪੁਰਾਣਾ ਨਹੀਂ ਹੁੰਦਾ ਹਰੀ ਹਰੀ ਪੁਰਾਣਾ ਨਹੀਂ ਹੁੰਦਾ ਪਪਾਲ ਹਰੀ ਅਪਾਲ ਹਰੀ ਉਹਦੀ ਕੋ ਪਾਲਣਾ ਨਹੀਂ ਕਰਦਾ ਇਹ ਨਹੀਂ اکاؤنٹ ਛੋਟਾ ਜਿਹਾ ਕੀ ਹੋ ਗਿਆ ਹੈ ਆਪਾ ਹਰੀ ਉਹ ਉਹ ਕ੍ਰਿਸਚੀਅਨੋਂ ਪਾਲਿਆ ਗਿਆ ਸਰ ਕ੍ਰਿਸਚੀਅਨ ਹਰੀ ਬੰਨ ਲਿਆ ਨਾ ਨਾ ਉਹ ਅਸਲ ਜੋ ਉਹਨਾਂ ਦੇ ਘਟੇ ਨੇ ਹੋਰੇ ਕੁਝ ਕਿਹਾ ਹੈ ਇੱਥੇ ਜਿਹੜੇ ਹਰੀ ਹੁਣ ਤੋਂ ਆਪਸ ਵਿੱਚ ਤਾਂ ਹਰੀ ਜਾਣਦੇ ਨਹੀਂ ਕੀ ਹੈ ਉਹ ਤਾਂ ਹਰੀ ਬੰਨਦੇ ਨੇ ਹਰੇ ਕ੍ਰਿਸਚੀਅਨ ਕਹਿੰਦੇ ਨਹੀਂ ਨਾ ਦਾ ਘੋੜਾ ਹੁੰਦਾ ਨਾ ਪ੍ਰਣਾਮ ਦਾ ਨਾ ਵਰਦਾ ਹਰੀਓ ਦਾਇਉ ਡੋੜਿਆਲਾ ਹਰੀ ਅਸਲ ਦੇ ਵਿੱਚ ਹਰੀ ਹੈ ਇਹਦੀ ਜੋ இந்து ਮਤਾ ਹਰੀ ਮੰਨਿਆ ਹਰੀ ਹੈ ਨਹੀਂ ਇਹਦਾ ਸਾਰੇ ਦਾ ਮਤਲਬ ਇਹ ਹੈ ਇਹ ਨਹੀਂ ਉਹਦਾ ਹਰੀ ਜਿਹੜਾ ਤੁਸੀਂ ਉੱਡੀ ਹੋ ਉਹ ਆ ਗੱਲ ਹੈ ਅਸਲ ਦੇ ਵਿੱਚ ਇਹਦੀ ਬੈਕਗ੍ਰਾਉਂਡ ਹੋਰ ਹੈ ਕੁਝ ਕਹੀ ਹੋਰ ਜਾਂਦੇ ਨੇ ਅਛੇਦ ਹਰੀ ਅਛੇਦ ਹਰੀ ਉਹ ਉਹ ਤਾਂ ਮਾਰਿਆ ਸੀ ਤੀਰ ਕ੍ਰਿਸ਼ਨ ਦੇ ਪੈਰ 'ਚ ਮਾਰਿਆ ਸੀ ਨਾ ਇਹ ਹਰੀ ਅਛੇਦ ਹੈ ਇਹਦੇ ਮਾਰ ਕੇ ਦਿਖਾਓ ਤੀਰ ਕਿਹੜਾ ਮਾਰੂਗਾ ਖਰੀਦ ਤੀਰ ਕ ਮਾਰੂ ਜੀ ਦਾ ਜਨਮ ਹਰੀ ਦਾ ਛੇਦ ਹੁੰਦਾ ਉਹ ਤਾਂ ਪੈਰ ਤੀਰ ਵੱਜਦਾ ਹੁੰਦਾ ਉਹ ਗੱਲ ਟਾਰਗੇਟ ਕਿਤੇ ਹੋਰ ਬਣਾਇਆ ਹੋਇਆ ਜਿਹਨੂੰ ਸਾਰੇ ਬੈਕਗਰਾਉਂਡ ਦਾ ਪਤਾ ਨਹੀਂ ਪਿੱਛੇ ਨਕਸ਼ੇ ਦਾ ਉਹਦਾ ਇੱਥੇ ਹੀ ਦੇਖ ਕਰਤ ਕਰ ਦੂਗਾ ਇਹ ਵੀ ਇਹੀ ਕਰ ਰਿਹਾ ਐ ਨਹੀਂ ਦੱਸ ਰਿਹਾ ਵੀ ਸਾਡੇ ਵਾਲੇ ਹਰੀ ਨੂੰ ਘਟ ਰਿਹਾ ਹੈ ਬੰਦਤ ਇਹ ਨਹੀਂ ਦੱਸ ਰਿਹਾ ਹੈ ਇਹ ਨਹੀਂ ਕਹਿ ਰਿਹਾ ਲੋਕ ਕਨੂਬੀ ਹਰੀ ਜਿਹੜਾ ਪਵੰਦੀ ਬੈਠਿਆ ਐ ਨਹੀਂ ਕਹਿ ਰਿਹਾ ਹੈ ਉਹ ਸਰੀ ਨੂੰ ਵਿਚਾਰ ਰਿਹਾ ਹੈ ਜੀ ਉਹ ਵੀ ਅੜੀ ਹੁੰਦਾ ਉਹ ਬਸੋ ਜਨਮ ਲੈਂਦਾ ਜਦ ਭਾਰ ਪੈ ਜਾਂਦਾ ਫਿਰ ਜਨਮ ਲੈ ਲੈਂਦਾ ਉਹ ਵੀ ਠੀਕ ਹੈ ਵੀ ਠੀਕ ਹੈ ਦੋਵੇਂ ਠੀਕ ਨੇ ਸਾਡੇ ਵਾਲਾ ਜੋੜ ਵੀ ਨਹੀਂ ਗਾ ਤੁਹਾਡੇ ਵਾਲਾ ਸੱਚ ਵੀ ਠੀਕ ਹੈ ਦੋਵੇਂ ਠੀਕ ਨੇ ਉਹ ਪੁੱਛਿਆ ਫੇਰ ਦੰਦ ਨੇ ਕਾਇ ਕੈ ਅਪੇ ਇਹ ਦਹਰੀ ਅਪੇ ਇਹ ਦਹਰੀ ਖਰੀਦਾ ਤਾਂ ਭੇਜਦੇ ਨਹੀਂ ਪਾ ਸਕਦਾ ਕੋਈ ਭੇਜਦੇ ਨਹੀਂ ਜਾ ਸਕਦਾ ਉਹਦਾ ਕਿਸੇ ਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਕਿਸੇ ਨੂੰ ਕੱਲ ਨੂੰ ਕੀ ਕਰਨਾ ਹੈ ਨੂੰ ਕੀ ਕਰ ਦੇਣਾ ਇਸ ਗੱਲ ਦਾ ਨਹੀਂ ਪਤਾ ਹੈਗਾ ਉਹਦੇ ਅੰਦਰ ਦਾ ਪਹਿਦ ਨਹੀਂ ਕਿ ਸ਼ੁਰੂ ਹੋਇਆ ਤੇ ਜਿਹੜੇ ਜੋਤਿਏ ਨੇ ਉਹ ਕੀ ਕਰਦੇ ਨੇ ਜੋਸ਼ੀ ਕੀ ਕਰਦੇ ਨੇ ਜਿਹੜੇ ਕਹਿੰਦੇ ਨੇ ਤੈਨੂੰ ਆ ਕੱਲ ਨੂੰ ਤੇਰੇ ਤੇ 673 ਆਉਣੀਆਂ ਫਲਾਣਾ ਆਉਣਾ ਢਮਕਾਉਣਾ ਉਹ ਕੀ ਕਰਦੇ ਨੇ ਉਹਦੇ ਪੇਦ 10 ਦਿਨ ਸਾਰਾ ਉਹਨਾਂ ਦਾ ਸਿਸਟਮ ਜਿਹੜਾ ਹੈ ਸਿਸਟਮ ਸਾਰਾ ਖਤਮ ਕੀਤਾ ਹੈ ਤੂੰ ਮਤਲਬ ਸਾਰੀ ਕੁਰਬਾਨੀ ਜਿਵੇਂ ਕੀਤਾ ਹੋਇਆ ਹੈ ਬੈਕਗ੍ਰਾਉਂਡ ਹੋਰ ਹੈ ਇੱਥੇ ਕੁਝ ਹੋਰ ਜਿਹੜਾ ਕਿਹਾ ਹੋਇਆ ਉਹ ਕਿਸੇ ਬੈਕਗ੍ਰਾਉਂਡ ਦੇ ਪ੍ਰਹਾਰ ਕੀਤਾ ਹੋਇਆ ਕਿਸੇ ਤੇ ਜੋ ਹੋ ਰਿਹਾ ਸੀ ਅਜੰਤਰ ਹਰੀ ਅਜੰਤਰ ਮੰਤਰ ਤੰਤਰ ਹੁੰਦੇ ਨੇ ਨਾ ਕਰਦੇ ਅਜੰਤਰ ਅਜੰਤਰ ਜਬੰਦ ਨਹੀਂ ਕਰ ਸਕਦੇ ਤੁਸੀਂ ਲੈ ਜੀ ਤੈਨੂੰ ਦੇ ਦਿੱਤਾ ਹੈ ਜੇ ਇਤੀ ਬੜੀ ਸ਼ਕਤੀ ਹੈ ਸਭ ਝੂਠ ਹੈ ਪਛੜੀ ਹੈ ਹਰੀ ਦੇ ਬਣਾ ਕੇ ਦੀ ਸ਼ਕਤੀ ਦੀ ਉਹ ਜਾਂ ਅੰਤਰ ਜਵਾਨ ਨਹੀਂ ਕਰ ਸਕਦੇ ਤੁਸੀਂ ਇਹਨੂੰ ਅਮੰਤਰ ਹਰੀ ਮੰਤਰ ਤਾਂ ਵੀ ਤੇ ਪਰੇ ਤੇ ਤੁਸੀਂ ਮੰਤਰ ਨਾਲ ਉਹਨੂੰ ਬਚਤ ਨਹੀਂ ਕਰ ਸਕਦੇ ਹਨ ਉਹਨੂੰ ਬਚਤ ਹੋ ਜਾਊਗਾ ਇਹਨਾਂ ਦਾ ਹੁੰਦਾ ਹੋ ਜਾਊਗਾ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਇਹਦੇ ਜਨ ਬਚਤ ਕਰਨ ਵਾਲੇ ਜਨ ਪਰ ਜਿਹੜੇ ਕਹਿੰਦੇ ਨੇ ਰੱਬ ਬਚਤ ਕਰ ਲਿਆ ਐਂ ਕਰ ਲਿਆ ਸਭ ਝੂਠ ਬੋਲਦੇ ਨੇ ਸੰਤ ਸਾਰੇ ਜਿਹੜੇ ਮੰਤਰ ਜਾਪ ਕਰਦੇ ਨੇ ਕਿゼ ਮੰਤਰ ਦੇ ਬਚਨੇ ਆ ਉਹਦੇ ਜੇ ਤੁਸੀਂ ਕਹੋ ਇੱਕੋ ਸ਼ਬਦ ਲੈ ਕੇ ਰੱਟੀ ਜਾਵਾਂਗੇ ਕੁਛ ਉਹ ਜੋ ਸ਼ਕਤੀ ਪ੍ਰਾਪਤ ਹੋ ਜੂਆ ਕੋਈ ਸਿੱਧੀ ਹੋ ਜੂ ਬਿਲਕੁਲ ਝੂਠ ਹੈ ਇਹ ਸਭ ਝੂਠ ਦੇ ਨਾਲ ਅਗਿਆਨਿਆਂ ਨੂੰ ਠੱਗ ਸਕਦੇ ਹਾਂ ਪਰ ਪੰਜ ਵਧੀਆ ਚੱਲੂਗਾ ਇਹਨੂੰ ਦੁਕਾਨਦਾਰੀ ਚੱਲ ਪੈਂਦੀ ਸੁ ਹਰੀ ਸੁ ਹਰੀ ਤੇਜ ਪ੍ਰਤਾਪ ਵਾਲਾ ਵੱਡੇ ਤੇਜ ਪ੍ਰਤਾਪ ਵਾਲਾ ਹਰੀ ਤਾਂ ਉਹਦੇ ਕੋਲ ਨਾ ਬੰਦ ਕਰ ਲੂਗਾ ਉਹਦੇ ਤੇ ਕੋਣ ਪ੍ਰਭਾਵ ਪਾ ਦੂਗਾ ਮੰਤਰ ਦਾ ਮੰਤਰ ਦਾ ਪ੍ਰਭਾਵ ਤਾਂ ਵਜ਼ਾਰੀ ਜਬੂਰੇ ਦੇ ਬੋਲਦਾ ਜਬੂਰਾ ਵਜ਼ਾਰੀ ਤੇ ਨਹੀਂ ਫਸ ਸਕਦਾ ਵਜ਼ਾਰੀ ਜਬੂਰੇ ਤੇ ਉਹ ਵਜ਼ਾਰੀ ਅਸੀਂ ਜਬੂਰੇ ਅਸੀਂ ਉਹਨੂੰ ਮੰਤਰ ਦਾ ਵਿਸ਼ਵਾਸ ਕਰਨਾ ਚਾਹ ਹਾਂ ਅਸੀਂ ਤਾਂ ਆਪ ਉਹਦੇ ਬਚਾਂ ਸਾਰੇ ਪਹਿਲਾਂ ਆਪਣੇ ਹੀ ਖੜਾ ਛੜਾ ਲਓ ਤੁਸੀਂ ਵਾਸਤੇ ਪਰੇ ਨਿਕਲ ਕੇ ਦਿਖਾ ਦਿਓ ਸਾਰੇ ਇਸੇ ਦਿਓ ਦੇ ਕਾਬੂ ਚ। ਤੁਸੀਂ ਵੇ ਕਾਬੂ ਕੇ ਦਿਖਾਓ। ਉਹ ਨੂੰ ਕਾਬੂ ਕਰਨੀ ਤਾਂ ਗੱਲ ਛੱਡੋ ਆਪੇ ਵੇ ਕਾਬੂ ਹੋ ਕੇ ਦਿਖਾਓ। ਆਪਣੀ ਮਰਜ਼ੀ ਨਾਲ ਕੁਝ ਕਰਕੇ ਦਿਖਾਓ। ਕੁਝ ਨਹੀਂ ਕਰ ਸਕਦਾ ਆ ਆਦਮੀ ਆਪਣੀ ਮਰਜ਼ੀ ਤੋਂ। ਪੁੱਠਾ ਹੈ ਨਾ ਦੇਰੇ ਨੇ ਪੁੱਠਾ ਹੁਕਮ ਲੂਏ। ਸਾਲਤਾ ਨਹੀਂ ਮੱਤੇ ਪੁੱਠਾ ਹੁਕਮ ਪੁੱਟੀ ਹੁੰਦੀ। ਅਤੰਤਰ ਹਰੀ ਜੰਤਰ ਮੰਤਰ ਤੰਤਰ ਤਰ ਰਹੇ। ਜੰਤਰ ਮੰਤਰ ਤੰਤਰ ਤੱਲਾ ਤੇ ਪਰੇ ਜਿਹੜੀ ਪੌੜੀ ਤਿਆਰ ਕੀਤੀ ਸੀ ਇਹ ਵੀ ਜੰਤਰ ਮੰਤਰ ਤੰਤਰ ਤੱਲੇ ਸੀ ਇਹਦੇ ਵਿੱਚ ਜੰਤਰ ਕੀ ਹੈ ਖੱਡਾ ਵਾਟਾ ਮੰਤਰ ਕੀ ਹੈ ਜੋ ਬਾਣੀ ਬਣੀ ਹੈ ਤੰਤਰ ਕੀ ਹੈ ਜੋ ਤਿਆਰ ਕਰ ਲਿਆ ਜੋ ਤਿਆਰ ਹੋ ਗਿਆ ਤੰਤਰ ਪਰ ਪਰਮੇਸ਼ਰ ਫੇਰ ਵੀ ਇਹ ਤੇ ਪਰੇ ਉਹ ਤਾਂ ਤੇ ਬਾਹਰ ਹੈ ਕੀ ਪਰਮੇਸ਼ਰ ਨੂੰ ਤੁਸੀਂ ਪੀ ਜਾਓਗੇ ਉਹ ਫਿਰ ਵੀ ਇਹਦੇ ਪਰ ਹੈ ਇਹਦੇ ਵਿੱਚ ਨਹੀਂ ਹੈ ਪਰਮੇਸ਼ਰ ਨਹੀਂ ਹੈ ਇਹਦੇ ਵਿੱਚ ਹਾਂ ਸਮਝ ਆਲੀ ਹਾਂ ਉਹ ਜਿਹੜਾ ਉਹਦਾ ਨਾਮ ਅਮਰਦਾਵ ਨਹੀਂ ਇਹਦੇ ਵਿੱਚ ਇਸ ਕਰਕੇ ਨੂੰ ਪਾਉਲ ਕਿਹਾ ਸੀ ਅਮਰਤ ਨਹੀਂ ਸੀ ਕਿਹਾ ਗੁਰੂ ਜੀ ਦੇ ਨਾਮ ਕਾਜ ਆਉਂਦੇ ਆ ਅਮਰਤ ਉਹਨਾਂ ਨੂੰ ਸਮਝ ਸੀ ਇਹ ਨੇ ਅਮਰਤ ਬਣਾਤਾ ਜੇ ਅਮਰਤ ਅਸੀਂ ਬਣਾਤਾ ਤਾਂ ਨੰਬਰ ਵੀ ਦਾ 37ਵਾਂ ਜਾ ਪਹਿਲਾਂ ਹੋਰ ਨੇ ਗੁਰਬਾਣੀ 'ਚ ਨੇ ਹੋਰ ਹੈਗੇ ਨੇ ਜੇ ਬਰਸਾਤ 36 ਅਮਰਤ ਖੋਇ ਜੇ ਅਮਰਤ ਦਾ 37ਵਾਂ ਨੰਬਰ ਹੈ 36 ਪਹਿਲਾਂ ਤੇ ਹੋਰ ਨੇ ਲੋਣ ਵੀ ਅਮਰਤ ਆ ਜਾਵੇਂ ਅਮਰਤ ਲੋਣ ਫੇ ਲੋਣ ਤੋਂ ਵੀ ਥੱਲੇ ਬਾਣਾਤਾ ਅਧਿਆਨ ਉਬਰਤ ਕਾ ਕਾ ਲੋਣ ਤੋਂ ਥੱਲੇ ਡਿਗਰੀ ਕਰਦੀ ਵੱਡੇ ਸਿਆਣਿਆਂ ਨੇ ਜਿਹੜੇ ਵੱਡੇ ਸਿਆਣੇ ਉਧਰੇ ਨੇ ਉਹ ਇਦਾਂ ਹੀ ਕਰਦੇ ਉਧਰੇ ਅਬਰਤਾ ਲੋਣ ਮੰਦੀ ਆ ਵਾਲੀ ਜਾਵੇ ਉਬਰਤ ਲੋਣ ਖੂਬ ਖਾਣਾ ਖੀਚੜੀ ਜਾਵੇ ਅਬਰਤ ਲੋਣ ਲੋਣ ਲੋੜ ਵੀ ਉਬਰਦਾ ਜੇ ਪ੍ਰਦਾ ਛੱਤੀ ਅਬਰ ਦਿਖਾਏ ਤੇ ਜਾਗਰੋਂ ਰਖਬਾਂ ਨੂੰ ਇਹ ਨੰਬਰ ਕੀ ਪੈ ਗਿਆ ਫਿਰ 37 ਮੈਂ ਗਿਆ ਜਿਹੜੀ ਦੀ ਪੌੜ ਫਿਰ ਕੋਈ ਹੈ ਆਪਣੇ ਵਰਗੀ ਦੂਜੀ ਪੌੜ ਨਹੀਂ ਕਿਤੇ ਕਿਸੇ ਗ੍ਰਾਂਥੇ ਹੀ ਹੈ ਇਹ ਸਾਡੀ ਬਹੁਤੀ ਅਕਲ ਦਾ ਰਿਜ਼ਲਟ ਹੈ ਜਿਹੜੀ ਬਹੁਤੀ ਅਕਲ ਅਸੀਂ ਵਰਤੀ ਹੈ ਨਾ ਅਸਲ ਜ ਸਾਰਾ ਕੁਝ ਨਾਸ ਹੋ ਆਪਣੀ ਅਕਲ ਨਾਲ ਕੀਤਾ गुरु तो गहन नगरी कोशिश की वो गहन नगरी कोशिश किए मारे गए नहीं। जो बच्चा मां-बाप ने पीछे जाने दी बजाय बराबर टोरने दी बजाय वे उंगली फड़के बच के बूढ़े चला गया मैं आ फेड़ च 60 के फेड़ च आ जाऊंगा फेड़ जा गए ऐसे फेड़ जाए ਰੈਗ ਅਕੜੀ ਕੋਲ ਕੁਝ ਵੀ ਨੀ ਰਹਾ ਗੁਰਬਾਣੀ ਜਾਂ ਪੜਦੇ ਆਂ ਐ ਲੱਗਦਾ ਵੀ ਅਸੀਂ ਤਾਂ ਸਾਰਾ ਕੁਝ ਗਵਾ ਬੈਠੇ ਗੁਰਬਾਣੀ ਪੜਦੇ ਆਂ ਲੱਗਦਾ ਸਾਰਾ ਕੁਝ ਗਵਾ ਬੈਠੇ ਅਸੀਂ ਅਕੜੀ ਤਰੇ ਫਿਰ ਜਾਂਦੇ ਹੁਣ ਪਹਿਲੇ ਕੋਈ ਨਹੀਂ ਪਹਿਲਾਂ ਨਹੀਂ ਕੋਈ ਆਚਾਰ ਵਿਚਾਰ ਕੋਈ ਸਿੱਖੀ ਵਾਲਾ ਨਹੀਂ ਹੈ ਕਿਸੇ ਦਾ ਅਕੜ ਹੱਥ ਕੋਈ ਨਹੀਂ ਆਕੜੇ ਆਕੜ ਬੱਲੇ ਹੋਰ ਕੁਝ ਨਹੀਂ ਐ ਇਤਾਂ ਗੱਭ ਅਸਮਾਨ ਨਾ ਮਾਵਤ ਹੰਕਾਰ ਇਹ ਨਾ ਹੋ ਗਿਆ ਅਸਮਾਨ ਦੇ ਵਿੱਚ ਹੰਕਾਰ ਨਹੀਂ ਵੱਧ ਰਿਹਾ ਸਿੱਖ ਦਾ ਅਸਮਾਨ ਛੋਟਾ ਹੰਕਾਰ ਵੱਧ ਗਿਆ ਸਿੱਖਾਂ ਨੇ ਹੰਕਾਰ ਨਹੀਂ ਚਾਹੀਦਾ ਸਿੱਖ ਨਾ ਹੋਵੇ ਤੇ ਹੰਕਾਰ ਹੋਵੇ ਸਿੱਖ ਕਰਦਾ ਰਹਿਆ ਸਰਵੇਂ ਇੱਕ ਸਾਡਾ ਧਰਮ ਹੈ ਜਿਹੜਾ ਹੰਕਾਰ ਦੇ ਖਿਲਾਫ ਸਾਡੇ ਕੋਲੇ ਹੰਕਾਰ ਜਿਆਦਾ ਇਹ ਤਾਂ ਕੀ ਕਾਰਨ ਹੈ ਉਹ ਤੇ ਕਾਰਨ ਨੂੰ ਵਿਚਾਰਨਾ ਪਊਗਾ ਵਿਚਾਰਨਾ ਕਾਰਨ ਪਤਾ ਲੱਗਦਾ ਵਿਚਾਰੇ ਤੇ ਪਤਾ ਲੱਗ ਜੂਗਾ ਕੀ ਕਾਰਨ ਪਰ ਜਿਹਨੇ ਹੰਕਾਰ ਘਟਾਉਣਾ ਉਹ ਨੂੰ ਆ ਜਿਹਨੇ ਘਟਾਉਣਾ ਹੀ ਨਹੀਂ ਉਹ ਵਿਚਾਰਨ ਦੀ ਲੋੜ ਕੀ ਹੈ ਜਿਹਦੇ ਤਾਂ ਹੰਕਾਰ ਤੋਂ ਖੜੇ ਛਡਾਉਣ ਸਿੱਖ ਬਣਨ ਉਹਨੂੰ ਤਾਂ ਵਿਚਾਰਨ ਦੀ ਲੋੜ ਹੈ ਇਹਨੇ ਸਿੱਖਾ ਨਹੀਂ ਬਣਨਾ ਉਹਨੂੰ ਕੀ ਲੋੜ ਹੈ ਉਹ ਤਾਂ ਤਲਵਾਰ ਦੇ ਜੋਰ ਨਾਲ ਕਰਨਾ ਉਹਨੂੰ ਤਾਂ ਸਭ ਕੁਝ ਦੁਨਵਾਰਾਂ ਦਾ ਹੋ ਲੋਕਾਂ ਕੋ ਬਥੇਰੀ ਆਣੇ ਲੋਕਾਂ ਕੋ ਦਾ ਬੰਬ ਨੇ ਬੜੇ ਬੜੇ ਉਹ ਨਹੀਂ ਅਸੀਂ ਮੁਕਾਬਲਾ ਕਰ ਸਕਦੇ ਮੈਂ ਭਲੇਖਾ ਨਾ ਹਾਂਜੀ ਆजात ਹਰੀ ਆजात ਹਰੀ ਜਾਤ ਹੈ ਜਿਹੜੀ ਸਰੀਰ ਹੈ ਦੇ ਹੈ ਦੇ ਤਾਂ ਪਰੇ ਹਰੀ ਦੇ ਨਹੀਂ ਦਾਨ ਕਰਦਾ ਦੇ ਤਾਂ ਸਾਨੂੰ ਦੇਤਾਰੀ ਤਾਂ ਉਹਦੇ ਵਸ ਵਿੱਚ ਨੇ ਸਾਰੇ ਇਹ ਤਾਂ ਹੁਕਮ ਜਿਨੇ ਉਹਦੇ ਚ ਹਾਂਜੀ ਅਪਾਤ ਹਰੀ ਜੇ ਦੇਹ ਨਹੀਂ ਧਾਰਨ ਕਰਦਾ ਫਿਰ ਕ੍ਰਿਸ਼ਨ ਹਰੀ ਜੀ ਹੈ ਕੋਈ ਜਿਹਨੇ ਜਿਨ੍ਹਾਂ ਨੂੰ ਹਰੇ ਬੰਦੇ ਨੇ ਦੇ ਧਾਰੀਆਂ ਨੂੰ ਉਹ ਹਰ ਨਹੀਂ ਸੀਗੇ ਗਲਤ ਹੈ ਉਹ ਤਰ ਮੈ ਗਲਤ ਹੈ ਅਪਾਤ ਹਰੀ ਅਪਾਤ ਹਰੀ ਹਰੀ ਅਪਾਤ ਉੱਪਰੇ ਪਤਤ ਪਤਤ ਹੋਣ ਤੋਂ ਪਰੇ ਹੈ ਪਤਤ ਨਹੀਂ ਹੋ ਸਕਦਾ ਉਹ ਜਿਹਦੇ ਕੋਲ ਸਰੀਰ ਆ ਪਤਤ ਹੋ ਹੈ ਉਹ ਹੈ ਹੀ ਪਤਤ ਸਾਰੇ ਉਹ ਤਾਂ پاک ਹੈ پاک ਨਹੀਂ ਹੋ پاک ਹੈ ਪਤਤ ਨਹੀਂ ਹੋ ਸਕਦਾ ਉਹ ਮੈਲਾ ਨਹੀਂ ਹੋ ਸਕਦਾ ਉਹ ਬਲੀਦਾਨੀ ਹੋ ਜਾ ਸਕਦੀ ਦੇ ਤਾਰੀ ਹਮੇਸ਼ਾ ਬਲੀਰ ਹੁੰਦੇ ਨੇ ਜੋ ਬਲੀਨ ਆਤਮਾ ਉਹ ਦੇ ਚਾਉਂਦੀ ਹੈ ਬਨਿਆ ਹੋਇਆ ਪ੍ਰੇਤ ਕਹਿਆ ਲੋਕਾਂ ਅੰਦਰ ਵੇਸ ਗੁੜੀ ਭਰਿਆ ਮੈਂ ਫਿਰਾਂ ਮੇਰੇ 'ਚ ਕੁਝ ਕਮੀਆਂ ਸੀਆਂ ਮੇਰੇ 'ਚ ਕੁਝ ਗੁਨਾਹ ਸੀ ਹੋਗਣ ਸੀ ਤਾਂ ਮੈਨੂੰ ਚੱਲਣ ਮਿਲਿਆ ਲੋਕਾਂ ਮੈਂ ਦਰਵੇਸ਼ ਕਹੀ ਜਾਂਦੇ ਦਰਵੇਸ਼ਾਂ ਦਾ ਜਨਮ ਨਹੀਂ ਹੁੰਦਾ ਹੁੰਦਾ ਜਿਹੜਾ ਦਰਵੇਸ਼ ਹੋਜੇ ਮੇਂ ਦੁਆਰਾ ਜਨਮ ਨਹੀਂ ਹੁੰਦਾ ਹੁੰਦਾ ਜਿਹੜਾ ਪਹਿਲਾਂ ਜਨਮ ਤੋਂ ਪਹਿਲਾਂ ਦਰবেশ ਆਉਦਾ ਵੀ ਨਹੀਂ ਜਨਮ ਤੋਂ ਤੋਂ ਪਰ ਅਸੀਂ ਸਾਡੀ ਬੋਲੀ ਚ ਬੋਲੀ ਜਾਂਦੇ ਗੁਰਬਾਣੀ ਨੇ ਸਾਡੀ ਬੋਲੀ ਸੁਧਾਰੀ ਹੈ ਬੋਲਣਾ ਕੀ ਹੈ ਬੋਲਣ ਕੇ ਬੇਬੇ ਹੁੰਦਾ ਪਤਾ ਲੱਗ ਜਾਂਦਾ ਗਿਆਨ ਹੈ ਆ ਗਿਆ ਬੋਲਣ ਵਾਲਾ ਜਿਹੜਾ ਦਰবেশ ਹੈ ਸੰਤ ਹੈ ਉਹਦਾ ਜਨਮ ਕਿਵੇਂ ਹੋ ਜੂਗਾ ਦਾ ਜਨਮ ਨਹੀਂ ਹੁੰਦਾ ਇਹਦਾ ਜਨਮ ਹੋ ਗਿਆ ਸੰਤ ਨਹੀਂ ਹੁੰਦਾ ਉਹਨੇ ਸੰਤ ਬਣਨਾ ਹੁੰਦਾ ਹੈ ਸ਼ਾਂਤੀ ਪ੍ਰਾਪਤ ਕਰਨੀ ਹੁੰਦੀ ਹੈ ਸ਼ਾਂਤੀ ਪ੍ਰਾਪਤ ਕਿਵੇਂ ਹੁੰਦੀ ਹੈ ਉਹ ਗੁਰਬਾਣੀ ਦੱਸਦੀ ਹੈ ਜੇ ਤਾਂ ਸਭ ਕੁਝ ਕਰ ਲੂਗਾ ਜਿਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਉਹਨਾਂ ਨੇ ਗੁਰਬਾਣੀ ਰਚੀਏ ਦੱਸੀ ਹੈ ਗੁਰਬਾਣੀ ਦਾ ਗਿਆਨ ਦੀ ਸੰਤਾਂ ਨੂੰ ਤਾਂ ਗੁਰਬਾਣੀ ਦਾ ਗਿਆਨ ਦੀ ਕੋਸ਼ਿਸ਼ ਕਰਦੇ ਨੇ ਇਹ ਇਸ ਨੇ ਸਾਖੀ ਸਾਕੀਆਂ ਸਰੀਰ ਨਾਲ ਜੁੜੀਆਂ ਹੁੰਦੀਆਂ ਨੇ ਮਾਇਆ ਨਾਲ ਜੁੜੀਆਂ ਹੁੰਦੀਆਂ ਨੇ ਸਾਕੀਆਂ ਗੁਰ ਕੀ ਕਰਨੀ ਹੁੰਦੀਆਂ ਨੇ ਜੋ ਘਟਣਾ ਮਾ ਉਹਨਾਂ ਨੇ ਵਾਪਰੀਆਂ ਨੇ ਸੰਸਾਰ ਚੱਲ ਕੇ ਉਹ ਗੁਰ ਕੀ ਕਰਨੀ ਐ ਮਰਬਾਣੇ ਕਹਿੰਦਾ ਗੁਰ ਕਰਨੀ ਕਾਹੇ ਤਾਬੋ ਗੁਰ ਕਾਹੇ ਸਹਾਰ ਕਮਾਵੋ ਤੁਸੀਂ ਉਹ ਕੰਮ ਕਰਿਓ ਜਿਹੜਾ ਤੁਹਾਨੂੰ ਕਿਹਾ ਗੁਰਬਾਣੀ ਚ ਅਸਾਕੀਆਂ ਸਾਡੀਆਂ ਮਗਰ ਨਾ ਜਾਇਓ ਜੇ ਸਾਕੀਆਂ ਮਗਰ ਚਲੇ ਗਏ ਤਾਂ ਰਹਿ ਜੋਗੇ ਸੱਖਿਆ ਮਗਰ ਜਲੇ ਗੇ ਤੋਰੇ ਸੌਖਾ ਕਾ ਮਾਨਾ ਸੱਖਿਆ ਸੁਣਾਉਣੀਓ ਸੱਖਿਆ ਰਾਦੋ ਸੰਤ ਬੜਜੋ ਵਾਜੇ ਤੇ ਉਂਗਲੀਆਂ ਬਾੜ ਦੀ ਨ ਸਿੱਖ ਲੋ ਮਸ ਆਹੀ ਗੱਲ ਹੋਰ ਤਾਂ ਕੁਛ ਨਹੀਂ ਪੰਜਾਂ ਨਾਲ ਦੂਏ ਚਿਪਟਿਆਣੇ ਰੱਖ ਲੋ ਢੋਲ ਕਾਲਾ ਰੱਖ ਲੋ ਬੁੜੀ ਸੌਖੇ ਸੰਤ ਬਣ ਗੇ ਇਹ ਸਭ ਪਰ ਪੰਜਾਂ ਸੰਤ ਬਣਾ ਨਹੀਂ ਹੈ ਸੰਤਾਂ ਨੇ ਇਹੇ ਕੰਮ ਨਹੀਂ ਹੁੰਦੇ ਕਿਹੜੇ ਭਗਤ ਨੇ ਕੰਮ ਕੀਤਾ ਜਿਹੜਾ ਇਹ ਕਰ ਰਹੇ ਨੇ ਕਿਹੜੇ ਭਗਤ ਨੇ ਕੀਤਾ ਇਹ ਕੰਮ ਕਿਸੇ ਨੇ ਨਹੀਂ ਕੀਤਾ ਕੰਮ ਸੰਤਾਂ ਦਾ ਕੰਮ ਨਹੀਂ ਹੈ ਮਿੱਤਰ ਹਰੀ ਮਿੱਤਰ ਹਰੀ ਉਹ ਮਿੱਤਰ ਨਹੀਂ ਬਣਾਉਂਦਾ ਕਿਸੇ ਨੂੰ ਜਿਹੜਾ ਮਿੱਤਰ ਬਣਾਉਂਦਾ ਤੇ ਦੁਸ਼ਮਣ ਹੋਵੇ ਜ਼ਰੂਰੀ ਨੇ ਇਹ ਨੂੰ ਮਿੱਤਰ ਬਣਾਵਾਂਗੇ ਪਹਿਲਾਂ ਨਾ ਮਿੱਤਰ ਸਾ ਹੀ ਨਾ ਪੜਾ। ਬਣਾਇਆ ਨਾ ਪਹਿਲਾਂ ਤਾਂ ਸਾਡੀਓ। ਉਹ ਨਹੀਂ ਮਿੱਤਰ ਕੇ ਸਨ ਬਣਾਉਂਦਾ ਉਹਦੇ ਸਾਰੇ ਬਿੱਤਰੇ ਬਿੱਤਰ ਜਿਹਦੇ ਸਾਰੇ ਹੀ ਨੇ ਉਹਨੇ ਬਣਾਉਣਾ ਹੁਣ ਮਿੱਤਰ ਤਾਂ ਬਣਾਵੇ ਜੇ ਪਹਿਲਾਂ ਮਿੱਤਰ ਨਾ ਹੋਵੇ। ਜੇ ਤੂੰ ਮਿੱਤਰ ਸਾਡਾ ਕੁਰਬਾਨੀ ਕੀ ਕਹਿੰਦੀ। ਜਮਨ ਸਾਰਿਆਂ ਦਾ ਮਿੱਤਰ ਹੈ ਨਾ। ਪਹਿਲਾਂ ਮਿੱਤਰ ਹਦਾ ਕਿਹਾ ਰੇਡੀਓ ਮਿੱਤਰ ਹੋਰ ਮਿੱਤਰ ਬਣਾਉਣ ਦੀ ਕੀ ਲੋੜ ਹੈ ਕਿਸ ਨੂੰ ਅਸੀਂ ਉਹਨੂੰ ਬਣਾਈਏ ਨਾ ਬਣਾਈਏ ਇਹ ਗੱਲ ਅਲੱਗ ਹੈ ਕੋਈ ਉਹਨੂੰ ਮਿੱਤਰ ਬਣੇ ਨਾ ਬਣੇ ਹਰੀ ਮਾਤ ਨਹੀਂ ਦੇ ਸਕਦਾ ਉਹਨੂੰ ਹਮਾਤ ਹਰੀ ਅਰੋਗ ਹਰੀ बात है जन्मयानी है उदा मां-बाप ओनी कोई हुंदा बात माता-पिता ओदी ओदा कोई मां नहीं हैगी कृष्ण दी दा मां है हरि ओना दे कट हो जाणा देखो हरि दी भी गल करी जांदा ने ओना आला कट भी अपने आप होई जांदे हरि आ बात उदा उदी मां नहीं उदी कोई और रोग हरि उनु को रोग नहीं हुंदा हरि ਜੋ ਸ਼ਰੀਰ ਨੂੰ ਰੋਗ ਤਾਂ ਤੇ ਕੋ ਆਤਮਾ ਦੇ ਵੀ ਰੋਗ ਹੁੰਦੇ ਨੇ ਆਤਮਾ ਕਰਕੇ ਜਿਹੜੇ ਰੋਗੀ ਨੇ ਉਹਨਾਂ ਦੇ ਜਨਮ ਹੋਇਆ ਹੈ ਜਿਹੜੇ ਰੋਗ ਹੈ ਨਾ ਬਹੁਤ ਵੱਡਾ ਆ ਰੋਗ ਰਹੇ ਹਤ ਮਨ ਸਤਗੁਰ ਜੋਗੀ ਜੋਗੀ ਸਾਰਾ ਸੰਸਾਰ ਹੋ ਗਿਆ ਇੱਥੇ ਤਾਂ ਰਾਜ ਕਰਾਉਣਾ ਹੈ ਰਸਪਤਾਲੇ ਹੈ ਉਹ ਰੋਗ ਹੈ ਪੁਰਾਣਾ ਰੋਗ ਹੈ ਉਹ ਮੈਂ ਛੱਡਾਂ ਸੀ ਦੀਰਗ ਰੋਗ ਉਹ ਮੈਂ ਵਧਾ ਲਈ ਸਖਾਂ ਨੇ ਇਹ ਬਹੁਤ ਵੱਡਾ ਰੋਗ ਵੱਧ ਗਿਆ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਸਿੱਖਾਂ ਦੇ ਘਰ ਜਨਮ ਹੋਇਆ ਰੋਗ ਘਟਾਉਣਾ ਸੀ ਰੋਗ ਅਸੀਂ ਵਧਾ ਬੈਠੇ ਸੁੱਤੇ ਪਏ ਸੁੱਤੇ ਪਏ ਨੇ ਹੋਰ ਕੀ ਕਰਦੇ ਸੀ ਰੋਗ ਦੀ ਤਾਂ ਦਵਾਈਓ ਸਾਡੇ ਕੋਲ ਸੀ ਹੋਰ ਕਿਸੇ ਕੋਲ ਹੈ ਨਹੀਂ ਹਮੇਂ ਦੀ ਤਾਂ ਦਵਾਈਓ ਸਾਡੇ ਘਰ ਸੀ ਹੋਰ ਕਿਸੇ ਕੋਲ ਹੈ ਨਹੀਂ ਉਹ ਤਾਂ ਪਾਠ ਪੜ੍ਹਿਓ ਔਰ ਬੇਦ ਵਿਚਾਰੇ ਵਾਲੇ ਤਾਂ ਸਾਰੇ ਹਮੇ ਪਰ ਅਸੀਂ ਪਾਠ ਪੜ੍ਹਿਓ ਬੇਦ ਅਸੀਂ ਸਭ ਕੁਝ ਛੱਡਤਾ ਉਹ ਮਰੀ ਕਰਦੇ ਜਿਹੜਾ ਕਰਦੇ ਸੀ ਉਹਨਾਂ ਵਾਲੇ ਛੱਡਤੇ ਆਪਣੇ ਵਾਲਾ ਕੀਤਾ ਸੀ ਗੱਲ ਆ ਉਹਨਾਂ ਨੇ ਜ਼ਰੂਰ ਛੱਡਣੇ ਸੀ ਇਹ ਗੱਲ ਠੀਕ ਸੀ ਪਰ ਆਪਣੇ ਵਾਲਾ ਕਰਨਾ ਵੀ ਸੀ ਛੱਡ ਦਿੱਤਾ ਸਭ ਕੁਝ ਕੀਤਾ ਜੋ ਕਿਹਾ ਸੀ ਉਹ ਕਰ ਲਓ ਕੀਤਾ ਜੀ ਆਦਪਾ ਹੋ ਗਿਆ ਇਤੋਂ ਖਾ ਕੇ ਮਾਰ ਸਾਰੀ ਥੋੜਾ-ਵੋੜਾ ਜਿਹੜਾ ਇਹਨੂੰ ਮਾਤਾ ਨੇ ਕਰਾਇਆ ਤਾਂ ਉਹਦਾ ਦਿੱਤਾ ਛੱਡ ਜਿਹੜਾ ਕਿਹਾ ਸੀ ਆ ਕਰਿਓ ਕਰਨ ਤੇ ਉਹ ਕਰਦੇ ਨਹੀਂ ਇਹ ਕਰਕੇ బుਧ ਪੁੱਠੀ ਹੋ ਗਈ ਉਕਾਰ ਹੰਕਾਰ ਵੱਧ ਗਿਆ ਹੰਕਾਰ ਹੰਕਾਰ ਹੋ ਗਿਆ ਜੋ ਕਰਨਾ ਸੀ ਉਹ ਕੀਤਾ ਨਹੀਂ ਕਰਨ ਨੂੰ ਕਿਹਾ ਸੀ ਉਹ ਤਾਂ ਛੱਡ ਦਿੱਤਾ ਚਲੋ ਉਹ ਤਾਂ ਛੱਡਦਾ ਚੰਗਾ ਹੋ ਗਿਆ ਪਰ ਕਰਨ ਵਾਲਾ ਕਰਨਾ ਸੀ ਤਾਂ ਛੱਡਣਾ ਸੀ ਉਹ ਨਹੀਂ ਉਹ ਹੀ ਚੰਗਾ ਸੀਗਾ ਉਹ ਉਹ ਫੁੱਲਾ ਕੱਕਤਾ ਲੈ ਜਾਂਦੀ ਹੈ ਉਹ ਭਗਤੀ ਕਬੀਰ ਉਹੀ ਕਰਦਾ ਆਇਆ ਸੀ ਸਾਰੇ ਉਹੀ ਕਰਦੇ ਆਏ ਸੀ ਇਹ ਤਾਂ ਉਹ ਵੀ ਛੱਡ ਗਏ ਅਸ਼ੋਕ ਹਰੀ ਅਸ਼ੋਕ ਹਰੀ ਉਹਨੂੰ ਕਿਸੇ ਕਰਨਾ ਕੋਈ ਕਦੇ ਗਮ ਸ਼ੌਕ ਨਹੀਂ ਹੁੰਦਾ ਉਹਦੇ ਘਰ ਚ ਕਦੇ ਵੀ ਕੋਈ ਸ਼ੌਕ ਨਹੀਂ ਹੁੰਦਾ ਨਾ ਉਹ ਮਰੇ ਨਾ ਠਾਗੇ ਜਾਏ ਜੇ ਉਥੇ ਕੋਈ ਮਰਦਾ ਹੀ ਆਤਮਾ ਵਰਦੀ ਹੋਣੀ ਹੈ ਆਤਮਾ ਨਹੀਂ ਵਰਦੀ ਉਹਦਾ ਕੋਈ ਨਹੀਂ ਮਰਦਾ ਆਤਮਾ ਬਸ ਨੇ ਨਾ ਉਹਦਾ ਮਤਲਬ ਕੋਈ ਮਰਦਾ ਹੀ ਨਹੀਂ ਹੈ ਚੋੜਾ ਬਦਲਦਾ ਨਵਾਂ ਚੋੜਾ ਦੇ ਦਿੰਦਾ ਜੇ ਗੈਰ ਦਾ ਕਪੜਾ ਫਟ ਵੀ ਗਿਆ ਗਲਤੀ ਨਾ ਵੀ ਅਖੀਂ ਟੜ ਲੋਕਾਂ ਨੇ ਚੱਲ ਕੋਈ ਨਹੀਂ ਛੱਡ ਪਰੇ ਨਹਾ ਲੈ ਲੈ ਤੂੰ ਵਰਦਾਦਾ ਹੈ ਉਹ ਨਹੀਂ ਕੋਈ ਸਾਨੂੰ ਲੱਗਦਾ ਐਸੇ ਮਰਦਾ ਸਾਡੇ ਕੋਲ ਅੱਖਾਂ ਨੇ ਨਾ ਉਹ ਅੱਖਾਂ ਨਹੀਂ ਸਾਡੇ ਕੋਲ ਦੂਜੀਆਂ ਨਹੀਂ ਹਨ ਜਿਹੜੀਆਂ ਉਹਦੇ ਵਾਲੀਆਂ ਅੱਖਾਂ ਨੇ ਸਾਡੇ ਕੋਲ ਹੈ ਨਹੀਂ ਸਾਨੂੰ ਸ਼ੌਕ ਤਾਂ ਹੁੰਦਾ ਉਹ ਅੱਖ ਸਾਡੇ ਕੋਲ ਹੋਵੇ ਫਿਰ ਸ਼ੌਕ ਸਾਨੂੰ ਬਣਾ ਹੋਵੇ ਜਿਦੇ ਕੋ ਆ ਖੁਦ ਨੂੰ ਸ਼ੌਕ ਨਹੀਂ ਦਿੱਤੋ ਆ ਪਰਮਹਾਰੀ ਸਮਝਿਆ ਨਹੀਂ ਆ ਪਰਮਹਾਰੀ ਹਰੀ ਪਰਮਤੋ ਰਹਤਾ ਖਰੀ ਪਰਮਤੋ ਰਹਤਾ ਆ ਕਰਮਹਾਰੀ ਕਰਮ ਤੋਂ ਵੀ ਰਹਤਾ ਕਰਮ ਅਕਾਨਾੜੇ ਇੰਦੀ ਦੁਨੀਆ ਰਖੀ ਉਹਦੇ ਕੰਮ ਕਰਨ ਤੇ ਉਰ ਕਮ ਕਰਨੇ ਕੀ ਲੋੜ ਕੰਮ ਨਹੀਂ ਕਰਦਾ ਉਹ ਕੋਈ ਕਰਾਉਂਦਾ ਕਰਾਉਣਾ ਹੋਰ ਗੱਲ ਆ ਕਰਨਾ ਹੋਰ ਗੱਲ ਆ ਕਰਨਾ ਦਾ ਸਰੀਰ ਦੇਹਧਾਰੀਆਂ ਦੇ ਉਹਦੀ ਇੱਛਾ ਮਤਾ ਸਭ ਕੁਝ ਹੋ ਜਾਂਦਾ ਜੋ ਚਾਹੁੰਦਾ ਹੁੰਦਾ ਉਹ ਐ ਕਰਨ ਵਾਲੇ ਹੋਰ ਕਰਾਉਣਾ ਸਭ ਜੀਵਤ ਹੋਈ ਉਹਦਾ ਇੱਛਾ ਨਾਲੇ ਸਭ ਕੁਝ ਹੋ ਹੀ ਜਾਂਦਾ ਉਹਦੀ ਨੂੰ ਸਭ ਕੁਝ ਚਾਉਣਾ ਹੀ ਕਰਨਾ ਜੋ ਚਾਹੁੰਦਾ ਉਹ ਹੋ ਹੀ ਜਾਂਦਾ ਆ ਭੈ ਹਰੀ ਪੈ ਰਹਤ ਹਰੀ ਆ ਭੈ ਹਰੀ ਆ ਆ ਭੇਦ ਹਰੀ ਆ ਭੇਦਾਰੀ ਉਹਨਾਂ ਕੇ ਸਾਨੂੰ ਭੇਦ ਨਹੀਂ ਕੋਈ ਉਹਦਾ ਭੇਦ ਨਹੀਂ ਪਾ ਸਕਦਾ ਆ ਹਰੀ ਆ ਛੇਦਾਰੀ ਕੋਈ ਉਹ ਛੇਦ ਨਹੀਂ ਕਰ ਸਕਦਾ ਉਹ ਸੁਰੱਖ ਕਰ ਸਕਦਾ ਅਖੰਡ ਹਰੀ ਖੜਨਾਰੀ ਕੋਈ ਉਹਦਾ ਟੁਕੜਾ ਨਹੀਂ ਕਰ ਸਕਦਾ ਕੱਟ ਨਹੀਂ ਸਕਦਾ ਉਹਨੂੰ ਉਹ ਪੰਡਹਰੀ ਉਹ ਪੰਡਹਰੀ ਕਦੇ ਵੀ ਜਨਮ ਨਹੀਂ ਲੈਂਦਾ ਪੰਡਹੇ ਚ ਨਹੀਂ ਪੈਂਦਾ ਪੰਡੂ ਦਾ ਕਦੇ ਵੀ ਗਰਭ ਚ ਨਹੀਂ ਪੈਂਦਾ ਗਰਭ ਚ ਕਦੇ ਨਹੀਂ ਹੁੰਦਾ ਜਿਹੜਾ ਉਹ ਲਿਖਿਆ ਨਾ ਕ੍ਰਿਸ਼ਨ ਨੇ ਵੀ ਜਦ ਇੱਥੇ ਸੰਕਰਡਾ ਨਾ ਮੈਂ ਜਨਮ ਲੈ ਉਹ ਗੱਲ ਕੱਟੀ ਐ ਕਦੇ ਨਹੀਂ ਹਰੀ ਜਨਮ ਲੈਦਾ ਝੂਠ ਰਿਹਾ ਆ ਤੇ ਵੀ ਤਾਂ ਜਿਹੜਾ ਕਹਿੰਦਾ ਨਾ ਜਦ ਜਦ ਧਰਪ ਦੀ ਲਾਸ ਹੁੰਦਾ ਫਿਰ ਮੈਨੂੰ ਜਨਮ ਲੈਣਾ ਪੈਂਦਾ ਉਹ ਗੱਲ ਤੇ ਪ੍ਰਹਾਰ ਕੀਤਾ ਕਦੇ ਵੀ ਗਰਭ ਚ ਨਹੀਂ ਆਉਂਦਾ ਉਹ ਇਹ ਗੱਲ ਝੂਠ ਹੈ ਗਰਭ ਚ ਆਮ ਜੀਵ ਆਉਂਦਾ ਠੀਕ ਹੈ ਉਹਦੇ ਆਤਮਾ ਸ਼ੁੱਧ ਹੋ ਸਕਦੀ ਹੈ ਪਿਛਲੇ ਜਨਮਾਂ ਕਰਕੇ ਪਰ ਹੁੰਦਾ ਜੀਵ ਆਤਮਾ ਇਹੋ। ਹਰੀ ਨਹੀਂ ਹੁੰਦਾ ਹਰੀ ਪੌਟ ਹਰੀ ਜਿਹੜਾ ਹੁੰਦਾ ਨਾ ਉਹ ਅੰਡੇ ਦੇ ਬਾਹਰ ਹੁੰਦਾ। ਇਹ ਅੰਡੇ ਦੇ ਵਿੱਚ ਹੁੰਦਾ। ਅੰਡੇ ਦੇ ਵਿੱਚ ਐਸਾ ਬੱਚਾ ਵੀ ਹੁੰਦਾ ਨਾ ਫੁੱਟਦੀ ਸਾਰੇ। ਫੁੱਟ ਪਰ ਬਾਹਰ ਹੋ ਗਿਆ। ਪੂਰਾ ਹੁੰਦਾ ਅੰਦਰ ਵੀ। ਪਹਿਲਾਂ ਹੀ ਪੂਰਾ ਹੁੰਦਾ। ਇਹ ਕਹੋ ਪੂਰਾ ਬਣਿਆ ਨਹੀਂ ਹੁੰਦਾ ਅੰਡੇ ਜਦੋਂ ਬਿਲਕੁਲ ਪੂਰਾ ਹੁੰਦਾ ਹੈ ਉਦਾਂ ਹੀ ਆਂਡੇ ਚ ਬਸ ਉਹਨਾਂ ਦਾ ਜਿਹੜਾ ਜਲ ਹੁੰਦਾ ਨਾ ਜਲਮੋ ਨਾ ਜਲਮੋ ਨਾਲ ਵੀ ਲੈਣਾ ਪੈਂਦਾ ਅੰਡਾ ਇੱਥੇ ਫਟੂਗਾ ਅੰਡਾ ਨਹੀਂ ਬਗਾਰ ਸਿਰ ਤੇ ਫਟ ਸਕਦਾ ਪਰਮ ਦਾ ਤੇ ਅੰਡਾ ਪੂਰਾ ਵੀ ਬੱਚਾ ਬਣ ਕੇ ਫਟਿਆ ਨਹੀਂ ਨਾ ਹੈ ਅੰਡਾ ਨਹੀਂ ਫਟ ਫਟ ਸਕਦਾ ਅੰਡਾ ਸਿਰ ਇੱਥੇ ਫਟੂਗਾ ਫਟੋ ਅੰਡਾ ਪਰਮਕਾ ਮਨ ਹੈ ਪਿਆ ਪ੍ਰਕਾਸ਼ ਪ੍ਰਕਾਸ਼ ਫੁੱਟੂ ਕਾ ਇੱਕ ਸ਼ਰੀਰ ਫੇਰ ਲੈਣਾ ਪੈਂਦਾ ਫੇਰ ਫੁੱਟ ਜਾਂਦਾ ਉਹ ਇਹ ਜੇ ਸੀਗੇ ਜਿਹੜੇ ਬਸ ਸਭ ਕੋ ਪੂਰਾ ਹੀ ਸੀ ਆਂਡਾ ਹੀ ਫੁੱਟਣਾ ਸੀ ਉਹ ਪਹਿਲਾਂ ਹੀ ਫੁੱਟ ਗਿਆ ਛੇਤੀਓ ਫੁੱਟ ਗਿਆ ਉਹ ਆ ਲੱਗਦਾ ਵੀ ਜੰਪਦੇ ਹੀ ਉਹ ਉੱਪਰ ਵੀ ਸੀ ਇਸ ਕਰਕੇ ਲੋਕਾਂ ਨੂੰ ਭਲੇਖਾ ਹੋ ਜਾਂਦਾ ਵੀ ਵਰਮ ਗਿਆ ਜਨਮ ਲੈ ਲੈਂਦੇ ਜਨਮ ਨਹੀਂ ਲੈ ਲੈਂਦੇ ਉਹ ਵੀ ਜਨਮ ਨਹੀਂ ਉਹਨਾਂ ਦੇ ਜਨਮ ਹੋ ਨਹੀਂ ਸਕਦਾ ਦੋ ਟੁਕੜਿਆਂ ਦੇ ਬਿਨਾ ਜਨਮ ਨਹੀਂ ਹੋ ਸਕਦਾ ਜਿੰਨਾ ਜਰ ਪਰਮ ਵਿੱਚ ਬੰਦ ਨਹੀਂ ਹੈ ਜਨਮ ਨਹੀਂ ਹੋ ਸਕਦਾ ਜਿੰਨਾ ਜਰ ਮਹਦੂਦ ਨਾ ਕਰੇ ਮੈਂ ਮਹਦੂਦ ਲਖਾਇਆ ਖਸਮੇ ਕੇ ਦਰ ਜਾਏ ਜਿੰਨਾ ਜਰ ਇਹਨੂੰ ਪ੍ਰੈਸ ਕਰਕੇ ਛੋਟਾ ਨਾ ਕੀਤਾ ਜਾਵੇ ਬੀਜ ਨਾ ਕੀਤਾ ਜਾਵੇ ਜਨਮ ਕਿਵੇਂ ਲਊ ਹਰੀ ਸਰਵ ਵਿਆਪੀ ਹੁੰਦਾ ਸ਼ੁਰੂ ਕਰਨਾ ਅੰਡੇ ਦੇ ਵਿੱਚ ਬੰਦ ਅੰਡੇ ਦੇ ਵਿੱਚ ਬੰਦ ਕਰੇ ਬਣਾ ਜਾਨਵਰ ਨਹੀਂ ਲੈ ਸਕਦਾ ਇਹ ਗੱਲ ਬਹੁਤ ਭੇਜਦੀ ਹੈ ਪਰ ਗੁਰਬਾਨੀ ਦੀ ਜਿਹਨਾਂ ਨੂੰ ਸਮਝ ਆ ਨਾ ਉਹਨਾਂ ਨੂੰ ਪਤਾ ਹੈ ਗੱਲ ਕੀ ਹੈ ਮੈਂ ਮਹਿਦੂਦ ਲਖਾਇਆ ਖਸਮੇ ਦਰਜਾ ਇਹ ਕਹਤਾ ਹੈ ਜਿਨਾ ਅੰਦਰ ਮੈਂ ਪੈਦਾ ਹੋ ਗਈ ਸੀ ਉਹਨਾਂ ਨੂੰ ਮਹਿਦੂਦ ਕੀਤਾ ਸੀ ਖਰੀਦ ਤਾਂ ਹੁੰਦਾ ਹੈ ਨਹੀਂ ਉਹ ਜਾਨਵਰ ਕਿਵੇਂ ਲੈ ਲੂਗਾ ਹੋਵੇ ਆਉਗੇ ਜਦ ਬੁਲਾ ਲੂਗਾ ਜਾ ਹੋਵੇ ਆਊਗਾ ਫਿਰ ਬੀਜ ਵੀ ਬਣ ਜਾਊਗਾ ਹੋਵੇ ਪੈਦਾ ਹੁੰਦੀ ਸਾਰੇ ਬੀਜ ਬਣ ਜਾਊਗਾ ਫਿਰ ਪ੍ਰੈਸ ਲੱਗੀ ਹੋਈ ਜਾ ਉਹਨਾਂ ਕੋਲ ਅਰੂਹ ਕਿੱਡੀ ਕਿੱਡੀ ਹੁੰਦੀ ਆ ਖੜੀ ਹੋਈ ਪ੍ਰੈਸ ਕਰਕੇ ਉਹ ਬੰਦ ਕਰਦੇ ਨੇ ਗੱਠ ਜੀ ਦੋ ਕਮਰੇ ਜਿਹੜੀ ਆਉਂਦੀ ਜਿਹੜੀ ਇਕੱਠੇ ਜਾ ਜਾਂਦੀ ਹੈ ਪ੍ਰੈਸ ਕਰਕੇ ਗੱਠ ਜੀ ਬੰਦ ਕਰਿਓ ਉਹ ਮਾਰਦੇ ਨੇ ਪਰੇ ਉੱਥੇ ਕੀ ਲੱਗਦਾ ਪ੍ਰੈਸ ਕਰਨੋ ਮਸ਼ੀਨਾ ਲੱਗਿਆ ਹੋਈ ਹੈ ਅਡੰਡ ਹਰੀ ਅਡੰਡ ਹਰੀ ਖਰੀ ਨੂੰ ਡਲਣੇ ਦਿੱਤਾ ਜਾ ਸਕਦਾ ਨਾ ਨਾੜ ਤਾਂ دیਵਾ ਕਰਨ ਜਿਹੜਾ ਬੰਨਣ ਲੈ ਵਿੱਚ ਡਲਡ ਹੋਈ ਹੈ ਬੰਨਣ ਤੇ ਭਗਤਾ ਹਰੀ ਪਰਚੰਡ ਹਰੀ ਪਰਚੰਡ ਹਰੀ ਹਰੀ ਪ੍ਰਚੰਡ ਰੂਪ ਹੈ ਉਦੋਂ ਜਿਆਦਾ ਰੋਸ਼ਨੀ ਕਿਸੇ ਚੀਜ਼ ਪਰ ਚੰਡੋ ਹੁੰਦਾ ਜੀ ਜਿਆਦਾ ਰੋਸ਼ਨੀ ਕਿਸੇ ਚੀਜ਼ ਦੀ ਨਾ ਹੋਵੇ ਗਾਨ ਪਰ ਚੰਡ ਜਿਆਦਾ ਹੋ ਜਾਂਦਾ ਉਦੋਂ ਵੱਧ ਰੋਸ਼ਨੀ ਨਹੀਂ ਹੁੰਦੀ ਗਾਨ ਦੀ ਫਿਰ ਅਤੇਵ ਹਰੀ ਅਪੇਵ ਹਰੀ ਅਤੇਵ ਹਰੀ ਅਪੇਵ ਹਰੀ ਪੇਵ ਤੋਂ ਰਹਤ ਹੈ ਅਤੇਵ ਹਰੀ ਅਪੇਵ ਹਰੀ ਅਜੀਵ ਹਰੀ ਅਛੇਵ ਹਰੀ ਹਾਂ ਅਤੇਵ ਹਰੀ ਅਪੇਵ ਹਰੀ ਉਹ ਬਹੁਤ ਵੱਡਾ ਲਿਖਦਾ ਹੈ ਤੇਵ ਨੂੰ ਅਤੇਵ ਨਾ ਮਾਤਰਾ ਉਹ ਇੰਨਾ ਵੱਡਾ ਹੈ ਕਿ ਜਿਵੇਂ ਅਸੀਂ ਕੋਈ ਦੂਸਰੇ ਨਾਲ ਮੁਕਾਬਲਾ ਨਹੀਂ ਕਰਕੇ ਦੱਸਦੇ ਵੀ ਇੰਨਾ ਵੱਡਾ ਜਦੋਂ ਫਲ ਬਹੁਤ ਮੱਟਾ ਨਹੀਂ ਜੀ ਆਕਾਰ ਚ ਵੀ ਵੱਡਾ ਸਾਡੇ ਪਾਸੇ ਵੱਡਾ ਉਹਦੇ ਵੱਡੇ ਨੂੰ ਅਸੀਂ ਅੱਧਾ ਦਾ ਵੱਡਾ ਕਹਿ ਸਕਦੇ ਹਾਂ ਬਸ ਉਹ ਕਾ ਵੱਡੇ ਵੱਡੇ ਤੋਂ ਵੱਡਾ ਜੇ ਕੋਈ ਵੱਡਾ ਆਪਣੇ ਆਪ ਨੂੰ ਕਹਿਦਾ ਹੋਵੇ ਉਹ ਤੋਂ ਵੱਡਾ ਕੁਝ ਹੁੰਦਾ ਹੀ ਨਹੀਂ ਅਪੇਵ ਹਰੀ ਅਪੇਵ ਹਰੀ ਪੇਤ ਪਾਪ ਤੇ ਪਰਿਆ ਹੁ ਅਜੇਵ ਹਰੀ ਅਜੇਵ ਹਰੀ ਉਹ ਜਿੱਤਣ ਤੋਂ ਪਰਿਆ ਅਸ਼ੇਵ ਹਰੀ ਅਸ਼ੇਵ ਹਰੀ ਉਹ ਉਹਨੂੰ ਕਟਿਆ ਜਾ ਸਕਦਾ ਕਟਿਆ ਨਹੀਂ ਨਾਸ ਨਹੀਂ ਕੀਤਾ ਜਾ ਸਕਦਾ ਉਹਦਾ ਪਜੋ ਹਰੀ ਥਪੋ ਹਰੀ ਪਜੋ ਹਰੀ ਇਸ ਕਰਕੇ ਹਰੀ ਨਾਲ ਜੁੜੋ ਇਸ ਕਰਕੇ ਹਰੀ ਨਾਲ ਜੁੜੋ ਥਪੋ ਹਰੀ ਔਰ ਉਹਦੇ ਨਾਲ ਜੁੜ ਕੇ ਉਹਦੇ ਵਰਗਾ ਹੀ ਹੋ हो ਥਪਕੇ ਥਰ ਹੋ ਜਾਓ ਹਰੀ ਨਾਲ ਜੁੜ ਕੇ ਹਰੀ ਵਰਗ ਮੰਗੂ ਹੀ ਥਰ ਹੋ ਜਾਵੋ ਤਪੋ ਹਰੀ ਤਪੋ ਹਰੀ ਜੇ ਤਪ ਵੀ ਕਰਨਾ ਹੈ ਤੁਸੀਂ ਤਾਂ ਉਹਦੇ ਤਾਂ ਹਰੀ ਨਾਲ ਜੋੜ ਦੋ ਆਪੇ ਜਿਵੇਂ ਅਸੀਂ ਕਹਿੰਦੇ ਸੁਧੜਣਾ ਬੰਨ ਦੇ ਰੂ ਰਸੀਨਾ ਨਹੀਂ ਖੜਨਾ ਇਹਨੇ ਹਰੀ ਨਾਲ ਨੂੰ ਬੰਨ ਤਾਂ ਸਮਝ ਲਓ ਕਿਸੇ ਚੀਜ਼ ਨਾਲ ਖਰੀਦੇ ਨਾਲ ਜੋੜ ਹਰੀ ਨੂੰ ਬਾਹ ਫੜਾ ਦਈਏ ਜਪੋ ਹਰੀ ਸੂਰਦਾਸ ਮਨ ਪ੍ਰਭ ਹੱਥੀ ਨੂੰ ਪ੍ਰਲੋਕ ਬੰਨੋ ਹਰੀ ਦੇ ਹੱਥੇ ਫੜਾਤਾ ਵੀ ਦੀ ਬਾ ਤੂੰ ਫੜੀ ਬੁੱਧੀ ਦੇ ਮੈਂ ਬਾਹ ਬੜੇ ਤੂੰ ਮੈਂ ਜਰਾ ਹੋਰ ਉਹਨੂੰ ਇੱਕ ਵਾਰ ਬਾਹ ਫੜਾਤੇ ਮੜ ਕੇ ਕਹਤਾ ਵੀ ਤੂੰ ਹੀ ਰੱਖੇ ਦੀ ਬਾ ਇੰਨੇ ਜਿਹਾ ਗੋਮ ਇਹ ਹੀ ਗੱਲ ਇੱਥੇ ਕਹੀ ਹੋਈ ਜਪੋ ਹਰੀ ਜਪਣਾ ਵੀ ਹਰੀ ਨੂੰ ਜਨਣਾ ਵੀ ਹਰੀ ਨੂੰ ਸਬਣਾ ਵੀ ਹਰੀ ਨੂੰ ਜੋੜਨਾ ਵੀ ਉਹਦੇ ਨਾਲ ਹੈ ਜਨਣਾ ਵੀ ਉਹ ਹੈ ਜੋੜਨਾ ਵੀ ਉਹਦੇ ਨਾਲ ਹੈ ਜੇ ਤਪ ਕਰਨਾ ਤਾਂ ਵੀ ਉਹਦੇ ਨਾਲ ਉਹ ਆਪ ਵੀ ਤਪ ਕਰਦਾ ਬੈਠਣਾ ਤਪ ਕਰਨਾ ਹੀ ਉੱਤੇ ਜਿਹੜਾ ਥੇਰਿਆ ਉਹੀ ਤਾਂ ਤਪ ਹੈ ਫਿਰ ਹੋਣਾ ਹੀ ਤਪ ਕਰਨਾ ਫਿਰ ਹੋ ਕੇ ਬੈਠਣਾ ਮੰਨ ਥੇਰ ਹੋ ਗਿਆ ਆਪੇ ਤਾਂ ਤਪ ਹੋ ਕੇ ਬੈਠਣਾ ਬੜਾ ਔਖਾ ਹੈ ਤਪ ਹੈ ਮੰਨ ਨੂੰ ਰੋਕ ਲੈਣਾ ਤਪ ਹੈ ਕਿਵੇਂ ਰੋਕਣਾ ਇਹ ਇਹ ਹੈ ਮਨ ਨੂੰ ਰੋਕਣਾ ਕਿਵੇਂ ਹੈ ਇਹ ਜਾਪਾ ਰੋਕਣਾ ਤਾਂਪ ਜਲਸ ਤੂੰ ਹੀ ਥਲਸ ਤੂੰ ਹੀ ਜਲਸ ਤੂੰ ਹੀ ਥਲਸ ਤੂੰ ਹੀ ਜਲ ਦੇ ਵਿੱਚ ਤੂੰ ਥਲ ਵਿੱਚ ਤੂੰ ਨਾ ਦਿਸ ਤੂੰ ਹੀ ਨਾ ਦਿਸ ਤੂੰ ਜੀ ਨਾ ਦਿਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਤੂੰ ਦੀਦਾ ਨਹੀਂ ਹੈ ਪਾਵੇਂ ਜਾਲਾ ਥਲ ساری ਜਗ੍ਹਾ ਹੈ ਪਰ ਖਾਂਦ ਨੂੰ ਦੇਖ ਨਹੀਂ ਸਕਦੀ ਨਾ ਦਸ ਤੂੰ ਹੀ ਦਸਹਜ਼ਾਰੀ ਤੂੰ ਨਾ ਦਸ ਤੂੰ ਹੀ ਨਾ ਦਸ ਤੂੰ ਹੀ ਨਾ ਤੂੰ ਹੱਥ ਚਾਉਣਾ ਦਸ ਤੂੰ ਦਾ ਹੱਥ ਤੈਨੂੰ ਹੱਥ ਨਾਲ ਫੜ ਨਹੀਂ ਸਕਦੇ ਹੱਥ ਨਾਲ ਫੜਾਂਗੇ ਉਸ ਚੀਜ਼ ਨੂੰ ਜਿਹੜੀ ਜੀ ਸਾਨੂੰ ਦਿਖੂਗੀ ਕਈ ਚੀਜ਼ਾਂ ਹੁੰਦੀਆਂ ਨੇ ਪਰ ਉਹ ਮਤਲਬ ਹੱਥ ਦੂਰ ਟੋ ਕੇ ਪਤਾ ਲੱਗ ਜਾਂਦੇ ਜਿਵੇਂ ਹਵਾ ਹਵਾ ਨਾਲੋਂ ਅੱਖਾਂ ਨਾਲ ਹੱਥ ਨਾਲ ਲੱਗਦੀ ਪਤਾ ਤਾਂ ਲੱਗਦਾ ਨਾ ਕੋਈ ਫੂਕ ਮਾਰਦਾ ਹਵਾ ਚਲਦੀ ਹੈ ਜ਼ੋਰ ਨਾਲ ਚਲਦੀ ਹੈ ਪਤਾ ਤਾਂ ਲੱਗਦਾ ਆਵੇਂ ਹੱਥ ਚਾਉਦੀ ਨਹੀਂ ਫਟਫਟਾ ਤਾਂ ਲੱਗਦਾ ਵੀ ਹਵਾ ਹੁੰਦੀ ਹੈ ਤੋ ਬਰਛਸ ਤੁਹੀਂ ਆ ਬਰਛਸ ਦੋਈ ਜਿਹੜੇ ਨੇ ਵੱਡੇ ਪੇੜ ਉਹ ਵੀ ਤੂੰ ਐ ਪੱਤੇ ਵੀ ਤੂੰ ਫਾਤੀ ਤੋੜੇ ਮਾਨੀ ਫਾਤੀ ਪੱਤੇ ਜੀ ਹੋ ਪੱਤੇ ਦੇ ਵਿੱਚ ਵੀ ਤੂੰ ਕੰਪ ਕਰਦਾ ਜਿਹਨਾਂ ਚਰ ਬੇਸ਼ ਨੂੰ ਲੱਗਿਆ ਹੋਇਆ ਉਹਨਾਂ ਜੇ ਤੋੜ ਲਈਏ ਫੇਰ ਨਹੀਂ ਕਰਦਾ ਫੇਰ ਸੁੱਕ ਜਾਂਦਾ ਪੱਤਾ ਜਦ ਜਿਹਨਾਂ ਇਹ ਬੇਸ਼ ਨੂੰ ਲੱਗਿਆ ਹੈ ਉਹ ਕਹਿੰਦਾ ਉਗਲੀ ਕੱਟ ਕੇ ਰੱਖਦੀਏ ਬਾਹਰ ਜਿਹੜੀ ਉਗਲੀ ਨਾਲ ਹੈਲਦੀ ਹੈ ਫੇਰ ਹੀ ਹੈਲਦੀ ਪੱਤੇ ਵੀ ਤੂੰ ਛੇਤਸ ਤੂੰ ਚਿਤ ਅਸਤੁ ਹੀ ਜਿਹੜਾ ਪ੍ਰਾਣ ਆਪਣ ਪੈਦਾ ਨਾ ਪ੍ਰਾਣ ਆਪਣ ਕਾ ਰੂਪ ਤੂੰ ਤੈ ਕਹ ਲੋ ਤੂੰ ਕਾ ਰੂਪ ਚਿਤ ਵੈਸੇ ਧਰਤੀ ਨੂੰ ਕਹਿ ਜਿ ਰਿਓ ਸਿਧ ਡੈਡ ਆਫ ਦੀ ਇਹਨੇ ਧਰਤੀ ਦੀ ਜਾਨ ਦਿਨਾ ਹੈਗੀ ਚਿਤ ਅਸਤੁ ਹੀ ਉਰਦ ਅਸਤੁ ਹੀ ਹਾਂ ਹੀ ਉਰਦ ਅਸਤੁ ਹੀ ਉਰਦ ਅਸਾਕਾਸ਼ ਨੂੰ ਕਹਿ ਦੇਰੇ ਉਹ ਭਾਵੇਂ ਕਹਿੰਦੇ ਨੇ ਨਾ ਵੀ ਆਕਾਸ਼ ਜਿਹੜਾ ਹੈਗਾ ਉਹ ਕਈ ਵਾਰ ਆਇਆ ਲੱਗਦਾ ਵੀ ਜਿਵੇਂ ਧਰਤੀ ਘੁਬਦੀ ਹੈ ਸਾਡਾ ਸਿਰ ਭਾਵੇਂ ਥੱਲੇ ਰੂਪਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਆਕਾਸ਼ ਉਲਟਾ ਜਾਂਦੇ ਨੇ ਵੀ ਧਰਤੀ ਦੇ ਪੈਰ ਨੇ ਆਕਾਸ਼ ਨੂੰ ਸਿਰੇ ਉਲਟਾ ਹੈ ਉਰਦਤ ਧਰਤੀ ਦੇ ਜਿਹੜਾ ਹੁਣਾ ਉਰਦਤ ਇੱਕ ਵਾਰ ਤਾਂ ਹੋਣੀ ਹੀ ਹੋਣੀ ਹੈ ਅਧਿਤ ਧਰਤੀ ਦੇ ਡਾਉਲੇ ਥੱਲੇ ਹੋ ਜਾਣਾ ਸੀ ਪਰ ਸਾਨੂੰ ਹਰ ਵਕਤ ਐਂ ਲੱਗਦਾ ਵੇ ਅਸੀਂ ਧਰਤੀ ਦੇ ਉੱਤੇ ਆਕਾਸ਼ ਸਾਡੇ ਸਿਰ ਤੇ ਮਤਲਬ ਤੇਰੇ ਨਾਲ ਜੁੜ ਜਿਹੜਾ ਮੈਂ ਤੇਰੇ ਨਾਲ ਜੁੜਿਆ ਹੋਇਆ ਮੈਂ ਤੇਰੇ ਨਾਲ ਜੁੜਨਾ ਚਾਹੁੰਦਾ ਰਹ। ਰਟਸ ਰਟਸ ਤੂੰ ਜਿਹਨਾਂ ਤੈਨੂੰ ਰਟਿਆ ਹੈ ਜਿਹਨਾਂ ਨੇ ਤੈਨੂੰ ਰਟਿਆ ਜਿਹੜੇ ਤੇਰੇ ਨਾਲ ਜੁੜੇ ਨੇ ਐ ਤਰੀਕੇ ਨਾਲ ਔਰ ਜਿਹੜੇ ਤੇਰੇ ਨਾਲ ਜੁੜਦੇ ਨੇ ਉਹ ਹੋ ਸਕਦੇ ਹੂੰ ਜ਼ਮੀਨ ਤੂੰ ਹੀ ਜਮਾ ਤੂੰ ਹੀ ਸਾਰਾ ਜ਼ਬੀਤ ਤੂੰ ਹੀ ਹੈ ਜੋ ਜ਼ਬੀਤ ਤੇ ਬਸੜ ਵਾਲੇ ਲੋਕ ਨੇ ਕੋਈ ਦਵਾ ਨਹੀਂ ਉਹ ਵੀ ਤੇਰੀ ਮਕੀ ਤੂੰ ਹੀ ਮਕਾ ਤੂੰ ਹੀ ਮੁਕੀ ਤੂੰ ਹੀ ਬਕਾ ਤੂੰ ਹੀ ਤੁਰਨ ਵਾਲਾ ਵੀ ਤੂੰ ਆ ਬੰਦਲ ਵੀ ਤੂੰ ਪਕਾਮ ਹੁੰਦਾ ਬੰਦਲ ਮਕੀ ਤੂੰ ਹੀ ਮਾਰਗ ਮਾਰਗ ਕੀ ਹੁੰਦਾ ਮਾਰਗ ਹੋਰ ਮਾਰਗ ਹੈ ਲੈ ਕੇ ਕਿੱਥੇ ਜਾਂਦੀ ਹੈ ਤੇਰੇ ਕੋਲ ਤੂੰ ਹੀ ਇਹ ਤੇਰਾ ਹੀ ਦੱਸਿਆ ਮਾਰਗ ਹੈ ਤੇਰੇ ਕੋਲੇ ਲੈ ਜਾਂਦਾ ਰਸੀ ਹੈ ਹੁਣ ਇਹ ਤਾਂ ਡੋਰ ਆ ਆਪਣੇ ਹੱਥ 'ਚ ਪਤੰਗ ਹੈ। ਉਹ ਡੋਰ ਪਤੰਗ ਕੋਈ ਚੀਜ਼ ਹੈ। ਇਹ ਡੋਰ ਹੱਥ 'ਚ ਪਤੰਗ ਵੀ ਹੱਥ 'ਚ ਦਰਿਆ ਵਾਲੀ ਮੱਛੀ ਸਮੁੰਦਰ ਤੱਕ ਜਾ ਸਕਦੀ ਹੈ ਜੇ ਪਾਣੀ ਚੱਲਦਾ ਉਹ ਪਾਣੀ ਹੈਗਾ। ਸਮੁੰਦਰ ਵਾਲੀ ਮੱਛੀ ਦਰਿਆ, ਇਹ ਕੋਈ ਹੈ ਉਹ। ਕੋਈ ਕਿਹੜ ਮਕਾਂ ਇੱਕੋ ਯਜੇ ਰਸਤੇ ਪੈ ਗਿਆ ਸਮਝੋ ਪਹੁੰਚ ਗਿਆ। ਆਪਾਂ ਕਹਿਣਾ ਨਾ ਰਸਤਾ ਭੁੱਲ ਗਏ। ਕਹਿੰਦਾ ਵੀ ਆਹ ਰਸਤਾ ਸਦਾ ਜਲੇ ਹੈ। ਕਹਿੰਦਾ ਬਸ ਹੁਣ ਤਾਂ ਪਹੁੰਚ ਗਏ ਹੁਣ ਨਾ ਫਿਰ ਗਿਆ। ਰਸਤਾ ਮਿਲ ਗਿਆ ਪਹੁੰਚ ਗਏ। ਯਾਰ ਰਸਤਾ ਮਿਲ ਗਿਆ ਗੁਰੂ ਬਰਦਾਸਰੂ ਕਨਾਨ ਅਨੰਦ ਪਹਿਲੇ ਮੈਨੂੰ ਮਿਲਿਆ ਜਦ ਗੁਰੂ ਮੇ ਪਾਇਆ ਰਸਤਾ ਮਿਲਦੀ ਸਾਰ ਸਭ ਜੁਤੀ ਸਾਰੇ ਕਹਿਤਾ ਅਨੰਦ ਕਹਿਆ ਇਹ ਐ ਬੁਕੀਦੇ ਬੜਨਾ ਅਨੰਦ ਹੋ ਜਾਂਦਾ ਪਰ ਮੁਕਾਮ ਬੜਨਾ ਪਰਮਾਨੰਦ ਹੋ ਜਾਂਦਾ ਜਾਂ ਮੁਕਾਮ ਪਹੁੰਚ ਗਿਆ ਫੇ ਪਰਮਾਨੰਦ ਹੈ ਅਨੰਦ ਦਾ ਉਦੋਂ ਹੀ ਹੋ ਗਿਆ ਨਾ ਜਦ ਪਤਾ ਲੱਗਿਆ ਵੀ ਹਾਂ ਹੁਣ ਰਸ ਮਿਲ ਗਿਆ ਅਪੂ ਮੂੰ ਤੂੰ ਹੀ ਅਪਾਹ ਤੂੰ ਹੀ ਅਪੂ ਅਪੂ ਤੂੰ ਹੀ ਅਪੂ ਤੂੰ ਹੀ ਅਪਾਹ ਤੂੰ ਹੀ ਅਪੂ ਤੈ ਤੂੰ ਤੂੰ ਬਸੂ ਨਹੀਂ ਕੋਈ ਅਸਲ ਤੇ ਵਿੱਚ ਇਹ ਜੀ ਜਿਹੜਾ ਤੈਨੂੰ ਪੱਲੇਵੰਦ ਲਈ ਐ ਕੇ ਲੈ ਜਾਏ ਤਾਂ ਹੋ ਨਹੀਂ ਸਕਦਾ। ਇਹ ਜੀ ਵਸਤੂ ਦਾ ਦੁਹੇਦੀ। ਅਪੂ ਤੋ ਹੀ ਹੈ ਨਾ। ਇਸ ਕਰਕੇ ਇਸ ਕਰਕੇ ਇਹ ਤੂੰ ਤੇਰਾ ਖਤਰਾ ਨਹੀਂ ਕੋਈ ਜਿਹੜੀ ਚੀਜ਼ ਆਪਾ ਕੋ ਦੇਖੋ ਨਾ ਜਿਹੜੀ ਚੀਜ਼ ਨੂੰ ਕੋਈ ਲਾ ਜਾ ਸਕਦਾ ਚੱਕ ਕੇ ਉਹਦਾ ਹੀ ਪੈਸਾ ਹੁੰਦਾ ਕੋਈ ਖਤਰਾ ਹੀ ਕੋਈ ਨਹੀਂ ਅਛੂ ਤੂੰ ਕੋਈ ਛੂਪ ਨਹੀਂ ਅਛੂ ਹੈ ਅਛਾ ਹੈ ਤੇਰਾ ਕੋਈ ਨਾਸ ਹੋ ਨਹੀਂ ਕਰ ਸਕਦਾ ਅਛਾ ਹੈ ਕਰ ਸਕਦਾ ਨੁਕਸਾਨ ਦੇ ਪਾ ਸਕਦਾ ਤੈਨੂੰ ਕੋਈ ਜਤਸ ਤੂੰ ਹੀ ਰਾਜ ਜਾਤਾਂ ਇਹਨਾਂ ਜਾਤਾਂ ਨਹੀਂ ਯਤਨ ਕਰਨਾ ਕਹਿੰਦੇ ਯਤਨ ਇਹ ਯਤਨ ਕਰ ਸੁ ਜਾਤਸ ਤੂੰ ਹੀ ਸਾਡੇ ਵਾਸਤੇ ਯਤਨ ਤੁਰ ਉਹਨਾਂ ਨੇ ਜਿਆਦਾ ਧੋਰ ਬਣਾ ਲਿਆ ਜਾਤਸ ਤੂੰ ਹੀ ਬਰਤਸ ਤੂੰ ਹੀ ਜਿਹੜੇ ਦੇਖੋ ਉਹਨਾਂ ਦਾ ਬਾਤ ਹੈ ਜਦ ਵੀ ਤੂੰ ਮੇਰੇ ਵਾਸਤੇ ਬਰਤ ਵੀ ਤੂੰ ਹੀ ਇਹ ਤੇ ਜਾਤਾਂ ਕੀ ਯਤਨ ਯਤਨ ਜੋ ਤੈਂ ਦੱਸਿਆ ਹੋ ਕਰਦ ਬਰਤਨ ਤੁਹੀ ਬਰਤਲਾ ਕੀ ਹੈ ਬਰਤਨ ਨਾਮ ਗਤੋ ਜਨ ਬਰਤਨ ਦੇਖੋ ਉੱਤੇ ਬਰਾਦੀ ਅਰਥ ਹੈ ਛੱਡਣਾ ਖਾਣਾ ਦੀ ਇੱਥੇ ਬਰਤਾਲ ਬਰਤਲਾ ਆਪਣੇ ਫਕਤ ਜਨਾ ਕੋ ਬਰਤਨ ਨਾਮ ਨਾਮ ਹੈ ਨਾ ਸਾਡਾ ਜਸਲ ਵੀ ਨਾਮ ਹੈ ਨਾਮ ਗਿਆਨ ਤੇ ਬਰਤਨ ਵੀ ਨਾਮ ਹੈ ਵੀ ਨਾਮ ਨਾਲ ਜਿੱਤੇ ਖੜਾ ਹੈ ਜਿੱਤੇ ਖੜੀਏ ਬੰਦ ਗਿਆਨ ਹੋ ਗਾ ਜਸਲਪੂ ਗਤੀ ਉਹ ਗਤੀ ਗਾਨੜੇ ਬੋਲ ਗਾਨੇ ਗਤੀ ਹਿਲ ਕਰ ਰਹੇ ਬੁੱਧੀ ਰੂਹ ਤੋਰਦਾ ਤੇਰੇ ਨਾਲੇ ਗਤੀ ਹੈ ਤੂੰ ਹੀ ਮਾਰਦਾ ਤੂੰ ਹੀ ਬਾਤ ਤੂੰ ਪ੍ਰਸਾਦ ਕਵਿਤ ਖੂਕਮਲ ਹਾਰੀ ਗੱਜ ਗਧਾ ਵਿਭੂਤ ਧਾਰੀ ਜਦੋਂ ਆ ਮਸਾਨ ਬਾਸ ਕਰੇ ਉਹ ਹੀ ਕਰਤ ਹੈ ਹੁਣ ਇਹ ਉਹ ਲੈ ਲੈ ਸਾਰੇ ਇਹਦੇ ਸਾਰੇ ਇੱਕ ਤਾਂ ਵੱਡੇ ਨੇ ਪਹਿਲਾਂ ਵੱਡਿਆਂ ਜੋ ਛੋਟੀਆਂ ਕੈਟਾਗਰੀਆਂ ਆ ਜਾਂਦੀਆਂ ਨੇ ਖੂਕਮਲ ਹਾਰੀ ਜਿਹੜੇ ਇਹਨਾਂ ਇਹਨਾਂ ਦੇ ਉੱਤੇ ਸਰੇਵੜਿਆਂ ਦੇ ਜੈਦਿਲ ਦੇ ਇਹਨਾਂ ਦੇ ਵਿੱਚੋਂ ਇੱਕ ਹੋਰ ਸੰਤ ਹੋ ਜਾਂਦੇ ਨੇ ਉਹ ਆਪਣਾ ਮਤਲਬ ਹੈ ਜਿਹੜਾ ਹੈ ਮਲਬੂਤਰ ਖਾ ਜਾਂਦੇ ਸੀ ਖੂਬ ਕਮਲ ਕਹਿੰਦੇ ਉਹ ਤਾਂ ਫਿਰ ਐ ਸਮਝੋ ਸੂਰ ਵੀ ਖਾ ਜਾਂਦਾ ਸੂਰ ਧਨਵਰ ਹੋ ਜਾਂਦਾ ਇਹ ਖਾਣ ਵਾਲੇ ਬਹੁਤ ਧਨਵਰ ਹੁੰਦੇ ਨੇ ਸੂਰ ਦੀ ਜੂ ਨਹੀਂ ਸਮਝਣਾ ਨੂੰ ਵਲਹਾਰੀ ਹੈ ਜੇ ਖੂਕਾ ਉਹਦੀ ਬੁੱਧੀ ਦਾ ਸੂਰ ਵੜ ਗਈ ਆ ਫਿਰ ਚੰਗੇ ਬੰਦੇ ਨਹੀਂ ਬਣਣਗੇ ਇਹ ਦੇ ਨਾਲ ਕੋਈ ਗਿਆਨਵਾਨ ਨਹੀਂ ਬਣ ਜਾਂਦਾ ਖੂਕ ਪਾਲ ਹਰੀ ਧਾਰੀ ਹਾਤੀ ਯਾਰ ਗਧਾ ਇੱਕੀ ਕਰਦੇ ਜੇ ਨਵਾਦੀ ਆਦੀ ਨੂੰ ਤੇ ਘਟਾ ਪਾ ਲੈਂਦੇ ਮਿੱਟੀ ਪਾ ਲੈਂਦੇ ਗਦਾ ਜੇ ਤੁਸੀਂ ਨਾ ਭਜਵੇਂ ਗੱਦੇ ਨੂੰ ਢਣਾਉਂਦਾ ਤਾਂ ਕੋਈ ਹੈ ਨਹੀਂ ਢਣਾਉਂਦਾ ਤਾਂ ਗੱਦੇ ਕੋਈ ਹੈ ਨਹੀਂ ਤੁਸੀਂ ਜਰੂਰ ਆ ਜਾਂਦਾ ਉਹਨੂੰ ਵਿਚਾਰੇ ਨੂੰ ਜਿੱਡਾ ਤਾੜੋ ਇੱਥੇ ਜੱਲਦੇ ਹੁੰਦਾ ਤੇ ਬੋਝ ਫਿਰ ਉਹ ਕੀ ਕਰਦਾ ਫਿਰ ਲੇਟ ਲੈਂਦਾ ਗਦਾ ਲੇਟਦਾ ਤੁਸੀਂ ਕਰਕੇ ਪਸੀਨਾ ਸੁੱਕ ਜਾਂਦਾ ਲੇਟੇ ਤੇ ਇਹ ਦੋ ਚੀਜ਼ਾਂ ਦੇਖਣੇ ਬਪੂਤੀ ਬੜਦੇ ਨੇ ਉਹਨਾਂ ਬਾਤ ਤੇ ਤਾਂ ਹਾਥੀ ਨੇ ਹੋ ਕਾਰੀ ਨੇ ਯਾ ਖੋਤੇ ਨੇ ਅਕਲ ਦੇ ਖੋਤੇ ਨੇ ਉਹ ਹਾਥੀ ਨੇ ਉਹਨਾਂ ਕਹਤਾ ਦੋ ਯਾਨੀ ਟਿੱਪਣੀ ਜਦ ਸਭਜੋ ਦੋ ਉਹਦਾ ਆਰਡਰ ਲੋ ਮਸਾਲਾ ਕਹ ਲੋ ਦੋ ਡੰਗਰਾਂ ਨਾਲੋਂ ਪਸੂਕਾਂ ਨਾਲੋਂ ਉਹਦੀ ਤੁਲਨਾ ਕੀਤੀ ਯਾ ਖੋਤੇ ਨੇ ਹੋ ਅਕਲ ਦੇ ਖੋਤੇ ਨੇ ਕਾਰ ਕਰਕੇ ਹਾਥੀ ਨੇ ਅਕਲ ਦੇ ਖੋਤਿਆਂ ਨੂੰ ਓੰਕਾਰ ਜ਼ਿਆਦਾ ਹੁੰਦਾ ਜਿਨੀ ਅਕਲ ਘੱਟ ਉਹਨਾਂ ਨੂੰ ਓੰਕਾਰ ਜ਼ਿਆਦਾ ਹੁੰਦਾ ਸਮਝ ਜਾਈਂ ਓੰਕਾਰ ਦਾ ਸਿੱਖਾਂ ਚ ਹੋਣਾ ਅਕਲ ਦੇ ਘਾਟ ਹੈ ਅਕਲ ਦਾ ਮਣ ਸੀ ਗੁਰੂ ਤੋਂ ਅਕਲ ਹੀ ਸੇਵੀਏ ਅਕਲ ਇਹ ਨਾ ਅਖੀ ਅਕਲ ਗਵਾਇਏ ਬਾਦ ਬਾਦ-ਬਾਦ ਦੇ ਵਿੱਚ ਜਿਹੜੀ ਅਕਲ ਪਾਈ ਹੋਈ ਹੈ ਨਾ ਵਿਦਵਾਨਾਂ ਦੀ ਉਹ ਅਕਲ ਹੁੰਦੀ ਹੋਈ ਨਹੀਂ ਉਹਨੂੰ ਅਕਲ ਨਹੀਂ ਕਰਦੇ ਉਦੋਂ ਨਾ ਬੇਅਕਲ ਹੈ ਬੇਅਕਲ ਨਹੀਂ ਅਕਲ ਹੀ ਬਾਦਵਾਜ ਬੋਦੀ ਹੈ ਅਕਲ ਹੀ ਇਹ ਨਾ ਆਖੀਏ ਅਕਲ ਗਵਾਇਆ ਬਾਦ ਹ ਅਕਲਵਾਨ ਆਦਮੀ ਨਹੀਂ ਕਹਾਇ ਜਾ ਸਕਦੇ ਜਿਨ੍ਹਾਂ ਨੇ ਆਪਣੀ ਅਕਲ ਬਾਦਵਾਜ ਚ ਗਵਾ ਰਹੀ ਅਕਲ ਗਵਾਇਆ ਬਾਦ ਇਹ ਤਾਂ ਗੁਰਬਾਨੀ ਦੇ ਖਿਲਾਫ ਹੈ ਇਹ ਬਾਦਵਾਜ ਵਜੇ ਹਨ ਜਿਹੜੇ ਬਾਦਵਾਜ ਫਸੇ ਨੇ ਬੇਅਕਲ ਸਾਰੇ ਗੁਰਬਾਨੀ ਬੇਅਕਲ ਬੰਦੀ ਹੈ ਅਕਲ ਨਾਲ ਸਾਹਿਬ ਸੇਪਣਾ ਸੀ ਆਹ ਗੱਲਾਂ ਨਾਲ ਤਾਂ ਅਸੀਂ ਸ਼ਬਦ ਵਿਚਾਰ ਕਰਨਾ ਸੀ ਅਕਲ ਤੋਂ ਤਾਂ ਕੰਮ ਲੈਣਾ ਸੀ ਅਕਲੀ ਸਾਹਿਬ ਜੀ ਵੀ ਅਗਲੇ ਪਾਈਏ ਮਾਂ ਲਖਣੀ ਪੜਕੇ 부ਜੀ ਅਕਲੀ ਕੀਜੇ ਦਾਨ ਨਾਨਕ ਆਖੇ ਰਾਏ ਹੋ ਹੋਰ ਗੱਲਾਂ ਸ਼ੈਤਾਨ ਇਹ ਕਿਹੜੇ ਅਕਲ ਬਾਦੂ ਬਾਦ ਖਵਾਈ ਫਿਰਦੇ ਨੇ ਨਾ ਇਹ ਸਾਰੇ ਸ਼ੈਤਾਨ ਨੇ ਦਲੀਲਾਂ ਦਿੰਦੇ ਨੇ ਨਾ ਦਲੀਲਾਂ ਸ਼ੈਤਾਨ ਦੀ ਦਲੀਲਾਂ ਨੇ ਜਿਹੜੀਆਂ ਹਮਾਰੇ ਜੀ ਰੋਜ਼ ਪੜ੍ਹਦੇ ਆਪਾਂ ਉਹ ਜਿਉ ਤੇ ਰੱਖ ਕੇ ਆ ਗਿਆ ਜੀ ਉਹ ਪੇਸ਼ ਵੀ ਹੋ ਗਿਆ ਫਲਾਣਾ ਹੋ ਗਿਆ ਰੱਖ ਜਦ ਆਦਮੀ ਚਲਾਏਗਾ ਸਟੇਟਮੈਂਟ ਹੁੱਡੀ ਦੇ ਸਕਦਾ ਹੋ ਕਲੀਅਰ ਹੁੱਡੀ ਕਰ ਸਕਦਾ ਇਹ ਸਭ ਦਲੀਲਾਂ ਜਿਹੜੀਆਂ ਹੁੰਦੀਆਂ ਨੇ ਸ਼ੈਤਾਨ ਦੀਆਂ ਹੁੰਦੀਆਂ ਨੇ ਸੱਚ ਨੂੰ ਕਿਸੇ ਦਲੀਲ ਦੀ ਲੋੜ ਨਹੀਂ ਹੁੰਦੀ ਸੱਚ ਅਕੱਟ ਹੁੰਦਾ ਇਹਦਾ ਵਕੀਲ ਆਣਿਆ ਦਲੀਲਾਂ ਦਿੰਦੇ ਜਿਵੇਂ ਵਕੀਲ ਬੋਲਦੇ ਹੁੰਦੇ ਨੇ ਇਹ ਅਕਲ ਨਹੀਂ ਹੈ ਸ਼ੈਤਾਨ ਦੀਆਂ ਗੱਲਾਂ ਨੇ ਸ਼ਤਾਨ ਦੀਆਂ ਸ਼ੈਤਾਨੀਆਂ ਦਾ ਝਗੜਾ ਹੈ ਹੋਰ ਉਹ ਝਗੜਾ ਕਰਦਾ ਗਿੱਦੂਆ ਕਹਿੰਦੇ ਨੇ ਬਿੱਜੂ ਇੱਕ ਜਾਲਮ ਰਸਦਾ ਬਿੱਲੇ ਵਰਗਾ ਬਿੱਲੀ ਵਰਗਾ ਹੁੰਦਾ ਬਿੱਜੂ ਕਹਿੰਦੇ ਨੇ ਉਹ ਉਹ ਬੱਚਿਆਂ ਦੀਆਂ ਲਾਸ਼ਾਂ ਖਾ ਲਦਾ ਕੱਢ ਕੇ ਬੱਚਿਆਂ ਨੂੰ ਦੱਬਿਆ ਹੁੰਦਾ ਹੈ ਨਾ ਆਪੇ ਛੋਟਿਆਂ ਨੂੰ ਛੋਟੇ ਬੱਚਿਆਂ ਨੂੰ ਦੱਬ ਦਿੰਦੇ ਉਹ ਪੱਟ ਕੇ ਨਾ ਧਰਤੀ ਉਖਾਲ ਦ ਕਹਿੰਦੇ ਗਿੱਧੂ ਆ ਗਏ ਹੈ ਨਹੀਂ ਬਸਾਣਾ ਦੇ ਵਿੱਚ ਗਿੱਧੂ ਆ ਜਿਹੜੇ ਨੇ ਬਾਤ ਕਰਦੇ ਹੀ ਹੁੰਦੇ ਜਿਹੜੇ ਲੋਕ ਬਸਾਣਾ 'ਚ ਰਹਿੰਦੇ ਨੇ ਅਸਲ 'ਚ ਉਹਨਾਂ ਨੂੰ ਗਿੱਧੂ ਕਹੇ ਬਿਜੂ ਕਹੇ ਕਿ ਉਹ ਜਿਹੜੇ ਚਿੱਲੇ ਨੇ ਇਹ ਪਸ਼ਾਨਾ ਵੜੀਆਂ ਜਿਹੜੀਆਂ ਨੇ ਕਹਿੰਦੇ ਜਿਹੜੇ ਗਿੱਧੂ ਹੁੰਦਾ ਰਹਿਣਾ ਬਿੱਜੂ ਖਾਂਦਾ ਜਾਂ ਹੁੰਦੇ ਰਹੋ ਵਸਾਣੇ ਰਹਿੰਦੇ ਹੁੰਦੇ ਨੇ ਜਿਹੜੇ ਪਸ਼ਾਨਾ ਜਿਹੜਾ ਰਹਣੇ ਵਾਲੇ ਨੇ ਬਿੱਜੂ ਦੇ ਨੇ ਉਹਦੀ ਜੂਨੀ ਵਾਲੇ ਨੇ ਹੂੰ ਕੁਗੂ ਮੱਟਵਾਸੀ ਲੱਗੇ ਡੋਲ ਤੋਂ ਉਦਾਸੀ ਜਿਹੜੇ ਮੱਠੋ ਜਿਹੜੇ ਰਹਿੰਦੇ ਨੇ ਉਹ ਲੋਣਾ ਕੋ ਕੋ ਲੋਲ ਮੈਨ ਉਹ ਲੋ ਇਹ ਜੇ ਮਠਾਂ ਜੇ ਰਹਿੰਦੇ ਹੁੰਦੇ ਨੇ ਜਿੱਥੇ ਕੋਈ ਬੰਦਾ ਨਾ ਰਹੇ ਮਠ ਹੁੰਦੇ ਨੇ ਦੂਰ ਰਹਿੰਦੇ ਜੰਗਲ ਚ ਬਣਾਏ ਹੋਏ ਇਹ ਜਿਹੜੇ ਸਿੱਧ ਸੀਨਾ ਨੇ ਮਠ ਬਣਾਏ ਹੁੰਦੇ ਸੀ ਕੋਈ 4 4.5 ਫੁੱਟ ਚੌੜਸ ਜੀ ਕਿ ਆਦਮੀ ਲੱਤਾਂ ਦਸਾਲ ਕੇ ਨਾ ਬਹਿ ਸਕੇ ਬਸ ਪੂਰਾ ਖੜਾ ਬਣਾ ਹੋ ਸਕੇ ਇਹ ਜੇ ਮਠ ਬਣਾਏ ਹੁੰਦੇ ਸੀ ਉਹਨੋਂ ਵਿਲੇ ਪਏ ਉਦਨੇ ਉਹਨਾਂ ਦੇ ਵਿਚੂਲੂ ਬਸਦੇ ਹੁੰਦੇ ਨੇ। ਉਹ ਕਹਿੰਦੇ ਜਿਹੜੇ ਮੱਠਵਾਸੀ ਨੇ ਉਹਨਾਂ ਉਲੂ ਬੈਠਣ ਵਾਲੇ ਉਲੂ ਨੇ। ਕੋ ਕੋ ਮੱਠਵਾਸੀ ਲੱਗੇ ਡੋਲ ਤੋ ਫਿਰਦੇ ਨੇ ਉਹੀ ਜਿਗਨਾਹ ਤਰੇ ਫਿਰਦੇ ਨੇ ਉਦਾਸੀ। ਉਦਾਸੀ। ਮਿਰਗ ਤਰਵੜ ਸਦੀਪ ਮੋਨ ਸਾਦੇ ਹੀ ਮੈਂ ਰੋਜ ਨੇ ਬਿਰਕ ਕਦੇ ਇਹਨੂੰ ਪਛਲੇ ਕਦੇ ਉਹਨੂੰ ਪਛਲੇ ਉਦਾਸੀ ਆਕੂਬ ਕਰਦੇ ਨੇ। ਜਾਨਵਰ ਆਣੇ ਕਬਰੇ ਸਾਰੇ ਇਹ ਤਾਂ ਜਾਨਵਰ ਕਰਦੇ ਸੀ ਆਦਮੀ ਵਾਲਾ ਕੰਮ ਕੋਈ ਨਹੀਂ ਨਾਲ ਲੱਗੇ ਡੋੜ ਤ ਉਹਦਾ ਸੀ ਮਿਰਗ ਹਾਂ ਜਿਹੜੇ ਆ ਉਦਾਸੀ ਨਾਲ ਡੋਲਦੇ ਫਿਰਦੇ ਮੈਨੂੰ ਤਾਂ ਵਰਗ ਵਰਗੇ ਨੇ ਉਹ ਵੀ ਕਹਦੇ ਦੱਸ ਕੋ ਇਧਰੋਂ ਚਲੇਗਾ ਦੱਸ ਕੋ ਇਧਰੋਂ ਚਲੇਗਾ ਐ ਇਧਰੋਂ ਕੁੱਤੇ ਪੈ ਗਏ ਉਧਰੋਂ ਚਲੇਗਾ ਉਧਰੋਂ ਕੁੱਤੇ ਪੈ ਗਏ ਉਧਰੋਂ ਚਲੇਗਾ ਤਰ੍ਹਾਂ ਕਬਰੇ ਕਰਵਰ ਸੰਦੀਪ ਮੋਹਨ ਸਾਦੇ ਹੀ ਮਰਦਾ ਹੈ ਆ ਜਿਹੜੇ ਕਰਵਲ ਨੇ ਜਿਹੜੇ ਬੋਲ ਸਾਧਨਾਂ ਵਾਲੇ ਬੋਲਣਾ ਹੀ ਨਹੀਂ ਕਿਹੜਾ ਕਹਿੰਦੇ ਬੋਲਦੇ ਨੇ ਬੋੜੀਆਂ ਦਾ ਇਹ ਹਾਲ ਆ ਉਹ ਫੱਡੀ ਪੋਚੀ ਆ ਕਿੱਥੇ ਗੱਲਾਂ ਕਈਆਂ ਹੋਈਆਂ ਨੇ ਉਹ ਲੋਗ ਪੜਦੇ ਸਾਰੇ ਫਾਬੜਦਾ ਜਾਲਦਾ ਉਹਦਾ ਪਟ્રોલ ਝੜਕੇ ਅੱਗ ਤੀਲੀ ਦਿਖਾਤੀ ਤੀਲੀ ਦਿਖਾਤੀ ਅੱਗ ਜਲਪੀ ਉਹ ਰਿਜਲ ਜ਼ੀਰੋ ਉੱਪਰ ਜਾ ਵੀ ਹੋਇਆ ਆ ਕੁਛ ਦਾ ਸੰਗਰੰਥ ਕਰਤਾ ਆਦਰੇ ਨੇ ਕੁਛ ਕੀਤਾ ਇਹਨੇ ਐਸਾ ਪਾਬੜ ਜਾੜਿਆ ਜਿੰਨਾ ਸੱਚ ਤਿੱਖਾ ਬੋਲਾਂ ਉਹਨਾ ਪਾਬੜ ਜਾਦਾ ਮਚੂਗਾ ਇਹ ਤਿੱਖਾ ਸੱਚ ਬੋਲਦਾ ਤਿੱਖਾ ਸਟੇਰਾ ਦਾ ਪਾਪੜ ਜੂਲ ਮਾjda ਉਹ ਗਿਲੀਆਂ ਲੱਕੜਾਂ ਦੇ ਭਾਂਬੜ ਜਣਦਾ ਇੱਕ ਸੁੱਕੀਆਂ ਤੇ ਪਟੋਲ ਪਾਕੇ ਜਣਦਾ ਦੋਹਾਂ ਦਾ ਫਰਕ ਤਾਂ ਹੈ ਨਾ ਇੱਕ ਤਾਂ ਲੱਕੜ ਜੀਲਦੀ ਸੀ ਇੱਕ ਪਾਤਾ ਤੇਲ ਫਟਾਲ ਭਾਂਬੜ ਦਾ ਤਾਂ ਜਲਣਾ ਹੀ ਸੀ ਨਾ ਤਾਂ ਤਕਲੀਫ ਹੋਈ ਹੈ ਤਕਲੀਫ ਹੋ ਦੱਸ ਬਤੂ ਜਿਹੜਾ ਦੇ ਖਿਲਾਫ ਨੇ ਓ ਮੇਰਾ ਖੈਲਾ ਉਹਨਾਂ ਦੇ ਬੰਦੇ ਇਹ ਆਪ ਵੀ ਮੱਡ ਪਾਸੀ ਇਹ ਗੁਗੂਲ ਨੂੰ ਇਹਦੇ ਇਹਨਾਂ ਨੂੰ ਦਾੰਦ ਤਕਲੀਫ ਆਪ ਵੀ ਐਸੇ ਗੁਗੂਨੇ ਆਉਲੂਨੇ ਇਹ ਕਹਨੇ ਸੀ ਕੋਈ ਨਾ ਕੋਈ ਇਹਨਾਂ ਨੂੰ ਇਹ ਤਕਲੀਫ ਤਾਂ ਹੈ ਇਹਨਾਂ ਨੂੰ 6 ਵਜਦੀ ਹੈ ਤਾਖਲਾਫ ਨੇ ਇਹਦੀ ਕਥਨ ਵੀ ਬਖਦਾ ਤਕੜੀ 6 ਬਹੁਤੀ ਬੈਦਦੀ ਹੈ ਹਾਂ ਬਿੰਦ ਕੇ ਸਦਾ ਯਾ ਤਾਏ ਹੀਜ ਕੀ ਬੜਈਆ ਦੇਤ ਅਜਿਹੇ ਬਿੰਦ ਕੇ ਸਦਾ ਯਾ ਨੇ ਜਤ ਰਖਦੇ ਨੇ ਲੋਕ ਜੱਤੀ ਰਹਿੰਦੇ ਨੇ ਕਦੋਂ ਹੀ ਜੜੇ ਹੈਗੇ ਨੇ ਖੁਸਰੇ ਸਾਰੇ ਲੋਕ ਖੁਸਰੇ ਨੇ ਹੋ ਹੀਜ ਕੀ ਬੜਈਆ ਦੇਤ ਹੀ ਜਿਹੜੇ ਹੈ ਜਿਹੜੇ ਨੇ ਹੀਜ ਖੁਸਰੇ ਨੂੰ ਕਹਿੰਦਾ ਬਰੋਂ ਖੁਸਰੇ ਨੇ ਉਹ ਰੱਬ ਨੇ ਤੁਹਾਨੂੰ ਖੁਦਰੇ ਦਾ ਬਣਾਇਆ ਨਹੀਂ ਉਹਨਾਂ ਨੂੰ ਖੁਦਰੇ ਬਣਾਤਾ ਅਗਲੇ ਜਨਮ ਵਿੱਚ ਖੁਸਰੇ ਬਣਾ ਤੂੰ ਤੁਹਾਨੂੰ ਵੜਈ ਕੀ ਬੜਈਆ ਦੇ ਤੇ ਬੜਈਆ ਜੀ ਬੜਈਆ ਬੜਈਆ ਦੇ ਆਵਣਾ ਬੜਈਆ ਦੇ ਦਿੱਤੀ ਵੀ ਖੁਸ਼ ਹੈ ਭਾਈ ਤੁਸੀਂ ਬੜਈਆ ਦੇ ਬੰਦਰਾ ਸਦੀਪ ਪਾਏ ਨੰਗੇ ਹੀ ਫਿਰਤਾ ਹੈ ਕਹਿੰਦੇ ਜੇ ਹੁਣ ਫਿਰਦੇ ਹੋ ਜਾਂਦੇ ਪੈਰ ਫਿਰਦੇ ਵਿਚਾਰ ਬੋਲੂ ਬਰੇਡ ਕਾਉਣ ਨੰਗੇ ਪੈਰ ਫਿਰਦੇ ਹੀ ਨੇ ਹੁਣ ਇਹਨਾਂ ਦੇ ਤਾਂ ਹਰੁਗਾਨ ਪੂਜਦੀ ਕਿਤੇ ਉਹਨਾਂ ਨੂੰ ਜੱਪਲਾ ਜੱਪਲਾ ਲੈ ਦਿਆ ਕਰੋ ਮੂੜ ਰਿਆਣੇ ਦੇ ਕਸਦੇ ਉਹਨਾਂ ਦੇ ਨਹੀਂ ਕਸਦੇ ਉਹ ਨੰਗੇ ਪੈਰ ਫਿਰਦੇ ਇਹ ਇਹਦਾ ਸਾਰੀਆਂ ਜੂਨਾ ਆਪਾਂ ਨੇ ਭੁਗਤ ਲੀਆਂ ਹੁਣ ਆਦਮੀ ਜੀ ਜੂਨਾ ਕੁਛ ਅਕਲ ਕਰੋ ਅਕਲ ਦੇ ਕੰਮ ਕਰੋ ਕਰੋ ਕੱਲ ਇਹ ਕਹੀ ਹੈ ਹੁਣ ਤੁਸੀਂ ਜਾਨਵਰਾਂ ਵਾਲੇ ਕੰਮ ਹੂੜ ਕਰਨ ਲੱਗੇ ਆਦਮੀ ਦੇ ਵਿੱਚ ਪੈਦਲ ਯਾਤਰਾ ਨੰਗੇ ਪੈਰੀ ਆਹੋ ਪੈਦਲ ਯਾਤਰਾ ਵਾਲੇ ਨੰਗੇ ਪੈਰੀ ਫਿਰ ਵੰਦਨ ਹੋਰ ਡੰਗਰ ਪਸੂਰੀ ਨੰਗੇ ਪੈਰੀ ਫਿਰਦੇ ਉੜਨੇ ਬੋਰ ਪਾਏ ਹੁੰਦੇ ਨੇ ਫੜਦਾਂ ਨੇ ਬੰਦਰਾਂ ਸਦੀਪ ਪਾਏ ਨੰਗੇ ਹੀ ਫਿਰਦਾ ਹੈ ਬੰਦਰ ਦੇ ਆਦਮੀ ਵਰਗੇ ਹੁੰਦੇ ਨੇ ਨਾ ਪੈਰ ਤਾਂ ਕਿ ਹੈ ਉਹਦੀ ਉਂਗਲੀਆਂ ਪੈਰ ਆਦਮੀ ਵਰਗੇ ਫੜ ਲੈਂਦਾ ਪਸ਼ੂਆਂ ਦੇ ਪੈਰ ਆਦਮੀ ਵਰਗੇ ਹੁੰਦੇ ਨਹੀਂ ਹੱਥ ਪੈਰ ਅੰਗਣਾ ਅਧੀਨ ਕੰਮ ਕਰੋ ਮੈਂ ਪਰਵੀਨ ਅੰਦਰ ਆ ਦੇਨ ਦੇਖੋ ਅਕਰਾ ਔਰਤ ਇਸੀ ਕਨਾਂ ਤਾਂ ਕਹਿੰਦੇ ਉਹ ਆਪਣੇ ਚਾਰਦਵਾਰੀ ਵਿਹੜੇ ਦੇ ਵਿੱਚ ਰਹਿਣ ਵਾਲੀ ਹੈ। ਆਂਗਣ ਚ ਬਾਹਰ ਜਾਣ ਦਾ ਕੋਈ ਕਬੂਲ ਨਹੀਂ। ਅੰਦਰ ਤੇ ਅੰਗਣਾ ਬਣੇ। ਅੰਗਣਾ ਅਧੀਨ ਪਰਾਲ ਦੇ ਜਿਹੜੇ ਅੰਗਣਾ ਦੇ ਅਧੀਨ ਨੇ ਉਹ ਆਪਣੀ ਚਾਰਦਵਾਰੀ ਦੇ ਵਿਹੜੇ ਦੇ ਅਧੀਨ ਨੇ ਬਾਹਰ ਉਹਨਾਂ ਨੂੰ। काम क्रोध ना दुनिया दा ज्ञान नहीं बस काम क्रोध में प्रवीण तेरे हो काम क्रोध में प्रवीण बाहदुरी दा ज्ञान नहीं दुनिया की हो रही है तिन लोग दा ज्ञान वाला गाना देर कैसे ਕਬੜੇ ਜਵਾਂ ਤੋਂ ਹੋ ਕੇ ਰਹਿ ਗਏ ਤਰਦਾਂ ਮ ਜਾਓਗੇ ਪਪਾ ਸਾਦਰ ਕਿਉਂ ਤਰਦਾਂਗੇ ਪਪਾ ਸਾਦਰ ਭੂਤ ਬਣ ਚਾਰੀ ਛਿੱਤ ਛਾਉਣਾ ਜੰਗਲ ਚ ਫਿਰਦੇ ਨੇ ਆ ਜਿਹੜੇ ਭੂਤ ਆਪੇ ਜੀਵਾਂ ਦੀ ਗੱਲ ਕਰਦੇ ਉਹ ਜੀਵ ਤੁਰੇ ਫਿਰਦੇ ਨੇ ਬੇਰ ਪੱਕਦੇ ਨੇ ਬੇਰਾਂ ਦੇ ਵਿੱਚੋਂ ਇਹਨਾਂ ਨੇ ਪਹਿਲਾਂ ਹੀ ਪਰਵੇਸ਼ ਕਰਨਾ ਹੁੰਦਾ ਆ ਤੁਮਾ ਮੋਦ ਦੇ ਵਿੱਚ ਪਰਵੇਸ਼ ਕਰਕੇ ਤਾਂ ਗਾ ਹਮਣਦੇ ਨੇ ਜੀਵ ਪੂਤ ਬਣਚਾਰੀ ਇਹ ਬਣਚਾਰੀ ਫਿਰਦੇ ਨੇ ਸਾਰੇ ਆਦਮਾ ਵਾਹਰ ਪੂਤਾਂ ਨੂੰ ਛਿੱਤ ਸ਼ੌਨਾ ਸਭੇ ਦੁੱਧਾ ਧਾਰੀ ਛਿੱਤ ਸ਼ੌਨਾ ਛੋਟੇ ਬੱਚੇ ਨੇ ਜਿੰਨੇ ਹੁੰਦੇ ਸਭੇ ਦੁੱਧਾ ਜਿਹੜੇ ਦੁੱਧਾ ਧਾਰੀ ਨੇ ਛੋਟੇ ਬੱਚੇ ਨੇ ਜੋ ਦੰਦ ਨਹੀਂ ਨਿਕਲੇ ਵਿਚਾਰਿਆਂ ਦੇ ਤੇ ਉਹਨਾਂ ਨੂੰ ਅਗਲ ਕਿੱਥੋਂ ਆ ਗਈ ਛੋਟੇ ਬੱਚੇ ਨੂੰ ਅਗਲ ਵੀ ਨਹੀਂ ਹੁੰਦੀ ਛੋਟਾ ਬੱਚਾ ਜੇ ਦੁੱਧੇ ਪੀਂਦਾ ਤੋਂ ਨੂੰ ਅਗਲ ਤਾਂ ਹੁੰਦੀ ਨਹੀਂ ਉਹ ਤੁਹਾਨੂੰ ਦੰਦ ਆ ਗਏ ਉਹ ਦੇਰ ਤੱਕ ਤੁਸੀਂ ਹੁਣ ਵੀ ਦੁੱਧੇ ਪੀ ਜਾਂਦੇ ਵੱਡਾ ਸਰੀਰ ਹੁੰਦਾ ਫਿਰ ਕੱਲਾ ਦੁੱਧ ਨਹੀਂ ਖਰਾ ਖੜਾ ਜਾਂਦੀ ਫਿਰ ਉਹਦੀ ਖਰਾਖ ਵਧਣ ਚਾਹੀਦੀ ਹੈ ਉਹਨੂੰ ਹੋਰ ਹੋਰ ਮੋਦਕੋ ਚਾਹੀਦਾ ਤੁਸੀਂ ਹੁਣ ਬਣੇ ਬੈਠਿਆ ਜਦ ਬਣੋ ਤੇ ਦੁੱਧਾ ਸਮਝ ਆ ਰਹੀ ਪੌਣ ਗੇ ਆਹਾਰੀ ਆਪਣੇ ਆਪ ਨੂੰ ਬਣਨਾ ਚਾਹੁੰਦੇ ਨੇ ਸਮਝੋ ਵਿਚਾਰੇ ਸੱਪ ਦੇ ਲੋ ਸੱਪ ਦੀ ਜੂਰ ਭੁਜੰਗ ਜਾਣੀ ਤਹਾਂ ਕੁੰਜਾਂ ਦੇ ਸੱਪ ਨੂੰ ਕਹਿੰਦੇ ਗਹਿਰ ਵੜੀ ਹੁੰਦੀ ਆ ਉਹਨਾਂ ਚ ਤਰੇਣ ਕੇ ਪਛਈਆ ਤਨ ਲੋਭ ਕੇ ਤਜਈਆ ਜਿਹੜੇ ਹੁਣ ਕਾ ਖਾਣੇ ਵਾਲੇ ਨੇ ਤਣ ਓਹਨਾ ਮਾਸ ਦੀ ਖਾਂਦੇ ਜਿਹੜੇ ਉਹਨਾਂ ਦੀ ਗੱਲ ਆ ਮੇਰੇ ਕਹਿੰਦੇ ਮਾਸ ਦੀ ਖਾਣ ਤਰੇਣ ਕੇ ਪਛਈਆ ਜਿਹੜਾ ਵਾਲੇ ਨੂੰ ਕਹਿੰਦੇ ਨੇ ਤਨ ਲੋਭ ਕੇ ਹੋਇਆ ਸਮਝ ਲਓ ਲੋਭ ਤੋਂ ਪਰੇ ਰਹਿਣ ਤਜੇ ਰੱਖਦੇ ਨੇ ਤੇ ਤੋ ਗਊਣ ਕਹਿ ਜਈਆ ਉਹਦਾ ਗਊ ਦੇ ਜਾਏ ਨਾ ਗੋਵਾਨਾ ਕਹਿ ਜਈਆ ਕਹਿ ਕੀ ਮੇਰੇ ਖਪਖਿਆ ਮਾਨੀਆ ਤੈ ਮੇਰੇ ਖਪਖਿਆ ਮਾਨੀਆ ਤੈ ਮੇਰੇ ਖਪਖਿਆ ਹੁੰਦਾ ਬੋਲਦ ਬੋਲ ਖਪਖਿਆ ਮਾਨੀਆ ਤੈ ਛੋਟੇ ਨਹੀਂ ਆਣ ਵੱਡੇ ਕਿਉਂ ਹੋ ਤਾਂ ਹੁਣ ਉਹ ਕਾ ਫੋਦ ਨਹੀਂ ਨਾ ਕੱਲਾ ਖਾਦ ਹੁਣ ਉਹਨਾਂ ਨੂੰ ਰੈਸ਼ਨ ਵੀ ਬਣਦਾ ਵੜਦੇ ਪਰੋ ਦਾਣਾ ਖਾਣ ਲੱਗ ਜਾਂਦੇ ਨੇ ਖੜ ਵਗੈਰਾ ਹੋਰ ਪਾਉਂਦੇ ਨੇ ਨਾ ਬੜੇਵੇਂ ਵੀ ਪਾਉਂਦੇ ਜਾਂ ਕੱਬ ਲੈਂਦੇ ਨੇ ਪਾਉਂਦੇ ਨੇ ਬਰੇਕ ਭਖਿਆ ਮਾਨੀਆ ਤਹਾਂ ਨੇ ਵੜਦੇ ਮਾ ਚਲਦੇ ਨੇ ਕਮੂਦੇ ਨੇ ਵਿਚਾਰੇ ਚਲਦੇ ਤਾਂ ਵੜਦਾ ਕੱਬ ਕਰਦੇ ਨੇ ਕਾਫੂਸ ਖਾਲਦੇ ਨੇ ਰਿਕ ਭੱਖਾਂ ਵਾਲੀਆਂ ਤੇ ਨੰਬਕੇ ਉਡਈਆ ਤਾਂਹੇ ਪੰਛੀ ਕੀ ਬਢਈਆ ਦੇਤ ਜਿਹੜੇ ਕਹਿੰਦੇ ਨੇ ਆਕਾਸ਼ ਦੇ ਵਿੱਚ ਉੜਦੇ ਨੇ ਇਹ ਨੇ ਲਿਖਿਆ ਹੋਇਆ ਇਹ ਆ ਮਾਰਦੇ ਨੇ ਆਕਾਸ਼ ਚ ਕੱਲ ਪੰਛੀ ਸਾਰੇ ਉੜਦੇ ਹੀ ਰਹਿੰਦੇ ਬੰਗਲਾ ਬੜਾਲ ਬਿਕ ਧਿਆਨੀ ਠਾਣੀ ਆ ਬੰਗਲਾ ਬੜਾਲ ਇੱਕ ਬੜਾਲ ਬਿੱਲਾ ਬ੍ਰਿਕ ਇੱਕ ਬ੍ਰੇਗ ਹੁੰਦਾ ਹੈ ਬੰਘਿਆੜ ਇਹ ਤਿੰਨੇ ਹੀ ਬਹੁਤ ਆਪਣੇ ਜਿਹੜੇ ਸ਼ਿਕਾਰ ਦੇ ਉੱਤੇ ਇਤਨੀ ਧਿਆਨ ਲਾ ਕੇ ਬਹਿੰਦੇ ਨੇ ਜਾਂ ਆ ਜੇ ਇਹਨਾਂ ਦੇ ਘੇੜ ਚ ਫਿਰ ਜਿਹਦੇ ਚੱਪੜ ਜਾਂਦੇ ਨੇ ਇਹ ਧਿਆਨ ਲਾਉਣੇ ਵਾਲੇ ਹੋਰ ਨੇ ਜਿਹੜੇ ਜਿਹੜੇ ਵੱਡੇ ਧਿਆਨ ਨੇ ਨਾ ਧਿਆਨ ਲਾਉਂਦੇ ਨੇ ਇਹ ਤਿੰਨੇ ਸ਼ਿਕਾਰੀ ਨੇ ਬਗਲੇ ਵਰਗੇ ਬਿੱਲੇ ਵਰਗੇ ਇਹ ਆ ਵਰਗੇ ਜਿਹੜਾ ਨਾਲ ਨੇੜੇ ਜਾਂਦਾ ਉਸੇ ਨੂੰ ਨੇ ਦੂਰਲੇ ਨੂੰ ਪਛਾਹ ਨਹੀਂ ਸਕਦੇ ਇਹ ਦੇਖਦੇ ਰਹਿੰਦੇ ਕੋ ਨੇੜੇ ਆਵੇ ਸ਼ਗਾਰ ਜਿੱਤੇ ਵੱਡੇ ਗਿਆਨੀ ਤੈਨੂੰ ਜਾਣੀ ਪੈ ਬਖਾਨੀ ਨਾ ਹੈ ਜਿੱਤੇ ਵੱਡੇ ਗਿਆਨੀ ਜਿੱਦੇ ਵੱਡੇ ਵੱਡੇ ਤੈਨੂੰ ਜਾਣੀ ਪੈ ਬਖਾਨੀ ਨਾ ਪੈ ਬਖਾਨੀ ਨਾ ਉਹ ਕਹਿੰਦੇ ਨੇ ਅਸੀਂ ਜਾਣ ਲਿਆ ਜੀ ਜਾਣ ਲਿਆ ਰੌਲਾ ਪਾ ਦੇਣ ਬਖਾਨੀ ਨਾ ਹੈ ਬਖਰਦੀ ਨਾ ਹੈ ਦਸੀ ਨਹੀਂ ਹੈ ਸੱਚ ਕਹਿੰਦੇ ਨੇ ਜਾਣਨੇ ਸੱਚ ਦੱਸਿਆ ਦੀ ਜਿਉਂ ਨਾ ਐਸੇ ਨਾ ਪਰਪੰਚ ਮਨ ਭੂਲੇ ਆ ਨੀ ਤਹ ਉਹ ਪਰਪੰਚੀ ਨਾ ਬਹੁਤ ਵੱਡੇ ਤੂੰ ਐਸਾ ਪਰਪੰਚ ਨਹੀਂ ਕਰਨਾ ਤੈਂ ਸਭ ਨੂੰ ਕਹਿ ਦੇਣੇ ਚਾਹੇ ਜਿਹੜੇ ਵੱਡੇ ਵੱਡੇ ਗਿਆਦੀ ਹੋਏ ਨੇ ਦੱਸਿਆ ਰੀਆਂ ਉਹਨਾਂ ਨੇ ਕੁਝ ਅਸਲ ਨਹੀਂ ਗਿਆਦੀ ਹੋਈ ਪਰ ਪਰਚੀ ਸੀ ਹੋ ਉਹ ਇਸ਼ਾਰਾ ਹੁੰਦੇ ਜਿਹੜੇ ਸਾਡੇ ਸੰਤ ਬਾਹਪੁਰਸ਼ ਨਾਲ ਉਹਨਾਂ 'ਵਾਲ ਜਿਹਨਾਂ ਨੂੰ ਵਾਹ ਪਰ ਕਹਿਣ ਐਦ ਰੇਨ ਕਾਰੇ ਮਾਰੇਗੇ ਸਾਰੇ ਸਖਾਂ ਦੇ ਜਿੱਤੇ ਵੱਡੇ ਗਿਆਨੀ ਉਹ ਪਹਿਲੇ ਸੀ ਇਹ ਹੁਣ ਸਾਡੇ ਨੇ ਜਿੰਨੇ ਵੱਡੇ ਵੱਡੇ ਗਿਆਨੀ ਹੋਏ ਨੇ ਉਹਨਾਂ ਨੇ ਗਲਤ ਦੱਸੀ ਹੋ ਜੇ ਜੇ ਨਹੀਂ ਕਹੀ ਤਾਂ ਪਰਪਤੀ ਸੀ ਕਿਉਰੀ ਕਿਉਰੀ ਕਹੀ ਜੇ ਸਾਚ ਜ ਨਹੀਂ ਜਾਣਿਆ ਚੂੜਤਾ ਜਾਣ ਲਿਆ ਸੀ ਚਲੋ ਸਾਚ ਨਾ ਜਾਣਿਆ ਚੂੜਤਾ ਜਾਣਿਆ ਸੀ ਝੂਠ ਨੂੰ ਝੂਠ ਕਉਂ ਨਹੀਂ ਕਹਾ ਜਿਹੜੇ ਹੁਣ ਸੰਤ ਨੇ ਉਹ ਝੂਠ ਨੂੰ ਝੂਠ ਕਉਂ ਨਹੀਂ ਕਹਦੇ ਇਹ ਝੂਠ ਨੂੰ ਝੂਠ ਨਹੀਂ ਕਹਦੇ ਉਹ ਧੋਖਾ ਕਰ ਰਹੇ ਨੇ ਸੰਤ ਨਾਲ ਕਿਉਂ ਕਰ ਰਹੇ ਨੇ ਧੋਖਾ ਉਹ ਕਬੀਰ ਦਾ ਸ਼ਬਦ ਹੈ ਗੁੱਗੜਾ ਉਹ ਨਾਲ ਗੁੱਡ ਕੱਢ ਲਿਆ ਬਰਾਜਾ ਤੋਂ ਵੀ ਆਪਾਂ ਨੇ ਕੀ ਲੜ ਇੱਕ ਤਾਂ ਇਹ ਸੱਚ ਕਾ ਕਹਾਂਦੇ ਪਾਪੜ ਬੜ ਬਚੂਆ ਇਹ ਤਾਂ ਪਾਪੜ ਤੋਂ ਡਰ ਕੇ 12 ਮਿੰਟ ਬੁਰਲੇ ਮੰਗੂ ਇਹ ਤਾਂ ਸੱਚ ਕਹਿੰਦੇ ਤੋਂ ਡਰ ਕੇ ਪਾਪੜ ਤੋਂ ਜਿਹੜਾ ਡਰ ਗਿਆ ਉਹ ਸਿੱਖ ਕਾ ਦਾ ਰਹਿ ਗਿਆ ਜਿਹਦੇ ਅੰਦਰ ਭਾਇਆ ਉਹ ਸਿੱਖ ਨਹੀਂ ਹੈ ਜਿਹਦੇ ਅੰਦਰ ਭਾਇਆ ਹੈ ਉਹਨਾਂ ਨੇ ਤਾਂ ਮਰ ਕਬੂਲ ਨਹੀਂ ਕੀਤਾ ਕਹਿੰਦੇ ਸੀ ਮਹਾਪੁਰਸ਼ਾ ਮਰਨ ਤੁਸੀਂ ਕਬੂਲ ਨਹੀਂ ਕੀਤਾ ਤੁਸੀਂ ਪਰਪੰਚੀ ਨੇ ਕੀ ਸੀ ਜਿਹੜਾ ਅੱਜ ਫਿਰ ਮੇਰੇ ਮੂਹਤੇ ਨਿਕਲਦਾ ਰਿਹਾ ਕੁਦਰਤੀ ਉਹ ਲੋਦੇ ਪੱਠੇ ਸੀਗੇ ਮੈਂ ਨਹੀਂ ਕਹਿਆ ਨਿਕਲ ਜਾਂਦਾ ਉਹ ਤਾਂ ਕੀ ਕਰੀਏ ਉਹਨਾਂ ਨੂੰ ਨੁਕਸਾਨ ਬੜਾ ਕੀਤਾ ਸੀ ਗੁਰੂ ਸਾਹਿਬ ਕਰੇ ਇਹਨਾਂ ਸਾਰੇ ਪਰਪੰਚੀ ਸੀਗੇ ਇਹਨਾਂ ਦੇ ਖੇਲੇ ਨੂੰ ਦੇਖੋ ਜਾਕੀ ਕੀ ਕਰਦੇ ਨੇ ਉਹੀ ਦੱਸਿਆ ਸੀ ਇਹਨਾਂ ਨੇ ਉਹ ਜਿਹੜੇ ਗਿਆਨੀ ਹੋਣਗੇ ਨਾ ਡੇਰੇ ਬੜੇ ਬੈਠੇ ਸੀ ਨਾ ਨੌ ਤੇ ਹੁਣ ਜਿਹਨੂੰ ਬ੍ਰह्म ਗਿਆਨੀ ਲਿਖਦੇ ਨੇ ਉਹਨਾਂ ਦੇ ਚੇਲੇ ਕਰਦੇ ਕੀ ਨੇ ਕੀ ਔਖਾ ਸੀ ਜੇ ਨਹੀਂ ਦੱਸਿਆ ਤਾਂ ਜੜਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਜੁੜੀਆਂ ਹੋਈਆਂ ਸੀ ਹੋਰ ਕਿਤੇ ਕੀ ਸੀ ਆਪਣੇ ਪੱਲੇ ਕੁਝ ਨਹੀਂ ਸੀ ਉਹਨਾਂ ਨੇ ਕਹੇ ਜਿਵੇਂ ਕਿਸੇ ਨੂੰ ਕਹਤਾ ਸਾਡੀ ਪੱਟੀ ਬੋਲ ਦੇਣੇ ਕੋਕੜ ਕੜੜੇ ਕੀ ਇਹੇ ਵਡਾਈ ਨੇ ਨਾ 10 ਦਿਨ ਪੰਜ ਬਹੂ ਬਲੀ ਗਈ 10 ਦਿਨ ਚਾਰ ਬਹੂ ਬਲੀ ਗਈ ਦਿਨ ਪੰਜ ਗੇਰ ਜਰਦਾਨਾਂ ਨੇ ਘਟਣਾ ਨੇ ਜ਼ਿੰਦਗੀ ਤੇ ਉਹਨਾਂ ਨੂੰ ਲੋਕ ਭਲਾ ਭਲਾ ਕਹਿੜੇ ਸਾਰੇ ਬੜਾ ਮਹਾਪੁਰਸ਼ਾ ਜੀ ਬੜੇ ਸੰਤ ਚੰਗੇ ਸੀ ਆਪਣੀ ਵੜਿਆਈ ਵਾਸਤੇ ਉਹਨਾਂ ਨੇ ਇਹ ਗੱਲ ਨਹੀਂ ਕਹੀਓ ਆਪਣੀ ਸੋਭਾ ਘਟਣ ਖਦਰ ਝੂਠੀ ਇਹ ਗੱਲਾਂ ਕਿਸੇ ਨੂੰ ਨਹੀਂ ਕਿ ਜਦੋਂ ਆਪਾਂ ਨੇ ਕੀ ਲੈਣਾ ਕੋਈ ਕੁਝ ਕਰੇ ਇਹਨਾਂ ਗੱਲਾਂ ਦੇ ਪਰਤਾ ਪਾਤਾ ਇਹਨਾਂ ਗੱਲਾਂ ਦੇ ਬੰਦਾ ਪਾ ਲਿਆ ਆਪਣੇ ਵੱਲੇ ਕੀ ਹੈ ਉਹ ਕਹਿੰਦਾ ਜੇ ਸਾ ਤੂੰ ਜਾਇਆਗਾ ਨਾ ਫਿਰ ਏ ਪਰਦਾ ਤੇਰੇ ਆ ਸੱਚ ਦੇ ਵਿਚਾਲੇ ਆ ਗਿਆ ਹੁਣ ਤਾਂ ਸੱਚ ਨਹੀਂ ਬੋਲਿਆ ਜੇ ਅਪਰਾਧੀ ਹੋ ਗਿਆ ਅਪਰਾਧ ਹੈ ਸੰਤ ਕੌਣ ਹੁੰਦਾ ਹੈ ਕਬੀਰ ਕਹਿੰਦਾ ਕਬੀਰ ਕਹਿੰਦਾ ਸਦਾ ਮਨ ਨੂੰ ਦੂਤਾਂ ਨਾਲੋਂ ਇਹ ਘਟਵਾਰੀ ਮੇਰੀ ਸੰਤ ਤੇ ਹਰੇਕ ਸੱਦ ਤੇ ਲਾਗੂ ਹੈ ਗੱਲ ਜਿਹੜਾ ਆਪਣੇ ਆਪ ਨੂੰ ਸਿੱਖਬਰ ਗਿਆਨੀ ਕਹਾਉਂਦਾ ਤੇ ਸਾਰਿਆਂ ਤੇ ਲਾਗੂ ਹੈ ਗੱਲ ਸੰਤਾ ਮਾਨ ਨੂੰ ਦੁੱਤਾਂ ਨਾਲੋਂ ਇਹ ਕੁਟਵਾਰੀ ਮੇਰੀ ਮੇਰੀ ਡਿਊਟੀ ਹੈ ਭਾਈ ਕੁਤਵਾਲ ਤਨਖਾਹ ਲੈਂਦਾ ਡਿਊਟੀ ਉਹਦੀੁੱਦੀ ਹੋਵੇ ਚੋਰੀ ਉਹ ਪਿੱਠ ਕਰਕੇ ਲੱਗੇ ਜਵੇ ਇਹ ਦਸੇ ਨਾ ਜਾ ਕੇ ਉਬਰਾਦੀ ਦਾ ਫਟਨਦਾਰ ਦਿਖਾਈ ਹੁੰਦੀ ਹੋਵੇ ਉਹ ਪਰ ਉਹ ਕਿੰਜ ਮੈਂ ਦਕੈਤਾ ਨਾ ਪਤਾ ਹੋਵੇ ਫੜੂ ਕਾਣਾ ਡਕੈਤਲੂ ਤੂੰ ਨਹੀਂ ਭੜੇਗਾ ਖੌਲ ਫੜੂ ਤੇਰੀ ਡਿਊਟੀ ਹੈ ਜੇ ਉਹਨਾਂ ਨੇ ਡਿਊਟੀ ਨਹੀਂ ਕੀਤੀ ਉਬਰਾਦੀ ਦੇ ਫਿਰ ਇਆ ਆਬੜ ਘਰ ਤੇ ਟਕਾਇ ਤਾਂ ਨਾ ਡੜਲੇ ਹੋਏ ਸੀ ਆਬੜ ਘਰ ਉਹ ਨਹੀਂ ਸੀ ਸੰਤ ਟਕਾਇ ਸੀ ਉਹ ਚੋਰ ਸੀ ਸਾਰੇ ਜੇ ਉਹਨਾਂ ਨੇ ਕਾ ਅਸੀਂ ਚੋਰੀ ਕੀਤੀ ਉਹਨਾਂ ਦੀਆਂ ਜੋਰੀਆਂ ਨੂੰ ਹੋ ਜਾਂਦੀਆਂ ਚੋਰ-ਚੋਰ ਬਸੇਰੇ ਭਾਈ ਹੁੰਦੇ ਨੇ ਇਹ ਉਹਦੀ ਗੱਲ ਹੈ ਜਿਹੜੇ ਲੋਕ ਚੋਰੀ ਕਰਦੇ ਨੇ ਕਦੂਏ ਦੀ ਚੋਰੀ ਨਹੀਂ ਦੱਸਦੇ ਹੁੰਦੇ ਪਤਾ ਉਹਨਾਂ ਨੂੰ ਹੁੰਦਾ ਉਹਨੇ ਕਾ ਮੈਂ ਕੀਤੀਆਂ ਮੇਰੀਆਂ ਦਾ ਇਹ ਸਭ ਚੋਰ ਸੀ ਤਾਂ ਜੋਰੀਆਂ ਇਹਨਾਂ ਨੇ ਵੀ ਦਸੀਆਂ ਤਾਂ ਚੋਰਾਂ ਦੀ ਲਿਆਜ ਕੀਤੀ ਹੈ ਤਾਂ ਸਭ ਪਾਸ਼ਾ ਕਹਿੰਦੇ ਨੇ ਵੀ ਤੂੰ ਸੀ ਪਰਪੰਚ ਸਿੱਖੋ ਨਾ ਕਰਿਓ ਇਹ ਮਨਪੂਰ ਆਨੀਤ ਹੈ ਇਹ ਭੁੱਲ ਕੇ ਵੀ ਨਾ ਕਿਹੋ ਜੀ ਚੋਰੀ ਆ ਸਪਸ਼ਟ ਕਹਿ ਦਿਓ ਜਿਹੜਾ ਹਕੂਕੂ ਹੈ ਉਹਨੂੰ ਹਕੂਕੂ ਕਹਿ ਦਿਓ ਜਿਹੜਾ ਗਦਾ ਉਹਨੂੰ ਗਦਾ ਕਹਿ ਦਿਓ ਬੁੱਪੂ ਉਤਾਰੀ ਰੂ ਐ ਬਾਣੀ ਨੂੰ ਬੈਣੀ ਨੂੰ ਆਨ ਹੋ ਕੇ ਪੜੇ ਉੱਚੀ ਆਵਾਜ਼ ਨਾਲ ਪੜਿਓ ਇਹ ਉੱਚੀ ਉੱਚੀ ਬੜੋ ਗੇਰੂ ਪੜ ਰਹੇ ਤੇ ਭਾਂਬੜੇ ਨੇ ਬਚਾਇਆ ਖਾਲਸਾ ਪੜਦਾ ਹੁੰਦਾ ਸੀ ਗੁੱਗੂ ਬੋਲ ਹਾਰੀ ਗੱਜ ਗਦਾ ਕਦਾ ਕਹਿ ਤਾਂ ਉਹਦਾ ਮੱਚ ਜੂ ਇੱਕਦਾਂ ਪਬਲਿਕ ਨੂੰ ਪਤਾ ਲੱਗਦਾ ਕਦ ਜਗਾਦਾ ਬਬੂਤ ਤਾਰੀ ਕਹਿੰਦਾ ਬਬੂਤ ਤਾਰੀ ਮੱਚ ਜਾਣਗੇ ਐ ਵੰਦ ਕਰੋ ਇਹਨਾਂ ਨੂੰ ਬਬੂਤ ਥੀਲ ਬੁੜਤੇ ਏ ਬਹੁਤ ਜਦ ਪ੍ਰਚਾਰ ਹੋਇਆ ਸਾਰੇ ਪਾਪੜ ਬਚ ਗਿਆ ਇਹ ਪਾਪੜ ਦਾ ਕਾਰਨ ਸੀ ਦੱਸਾ ਪਹਿਲੇ ਨੌਂ ਗੁਰੂਆਂ ਵੇਲੇ ਨਹੀਂ ਪਾਪੜ ਬਚਿਆ ਇਹ ਦਸਮ ਨੇ ਪਾਪੜ ਇਹਨੂੰ ਕਹਿੰਦਾ ਨਹੀਂ ਬਾੜੀ ਵਾਲੀ ਕਿ ਨੇ ਰਾਜ ਲੈਣੇ ਵਾਦੇ ਬਣਦੇ ਉਹਨਾਂ ਨੂੰ ਸਿੱਖੀ ਛੱਡਣੀ ਮਨਜ਼ੂਰ ਹੈ ਉਹਨਾਂ ਨੂੰ ਪਾਪੜ ਬਚਾਉਣਾ ਮਨਜ਼ੂਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਇਹ ਤਾਂ ਰਣਜੀਤ ਸਿੰਘ ਵੇਲੇ ਹੀ ਹੋਲੀ ਸੀ ਗੱਲ ਇਹਨੂੰ ਬੰਦ ਕਰੋ ਇਹਦਾ ਨਾ ਪ੍ਰਚਾਰ ਕਰੋ ਉਹ ਦੂਏ ਤਾਂ ਹੀ ਖਲਾਫ ਸੀ ਸਾਰੇ ਉਹ ਜਿਹੜੇ ਰਣਜੀਤ ਸਿੰਘ ਵੇਲੇ ਦੇ ਖਲਾਫ ਤੋਂ ਉਹ ਹੁਣ ਥੇ ਹੀ ਸੁਣਦੇ ਉਹਨਾਂ ਦੇ ਏਜੰਟ ਨੇ ਹੋਰ ਪੈਦਾ ਹੋ ਜਾਂਦੇ ਨੇ ਕੁਦਰਤ ਨੇ ਪੈਦਾ ਕੁਝ ਬੂਰਖ ਨੇ ਵਿੱਚ ਕੁਛ ਅਖਬਾਰ ਚਲਾਉਣ ਵਾਲੇ ਨੇ ਵੀ ਸਾਡਾ ਕੋਈ ਨਾ ਕੋਈ ਕੰਟਰੋਵਰਸੀ ਚਲਦੀ ਰਹੇ ਅਖਬਾਰ ਚਲਦਾ ਰਹੇ ਉਹਨਾਂ ਦਾ ਇਦਾਂ ਹੀ ਮਤਲਬ ਆ ਹੋਰ ਜ਼ਿਆਦਾ ਨਹੀਂ ਹੋਊਗਾ ਉਹਨਾਂ ਦਾ ਵੀ ਕੋਈ ਨਾ ਕੋਈ ਇਹੋ ਜਿਹੀ ਗੱਲ ਛਿੜਦੀ ਰਹੇ ਛਿੜਦਾ ਰਹੇ ਉਹ ਕੰਟਰੋਵਰਸੀ ਅਖਬਾਰ ਬਿਖਦਾ ਰਹੇ ਹੋਰ ਜ਼ਿਆਦਾ ਕੁਝ ਨਹੀਂ ਉਹਨਾਂ ਦਾ ਉਹਨਾਂ ਨੇ ਕੀ ਲੈਣਾ ਸਿੱਖੀ ਤੇ ਸਿੱਖੀ ਨਹੀਂ ਉਹਨਾਂ ਦਾ ਪਰ ਰੋਦ ਤਾਂ ਇਹੇ ਲੋਕਾਂ ਦਾ ਉਹਨਾਂ ਨੇ ਸਿੱਖੀ ਤੇ ਲੈਣਾ ਕੀ ਹੈ ਸਿੱਕੀ ਦਾ ਨਾ ਦੇ ਸਕੋ ਡੇੜੇ ਨਹੀਂ ਹੈ ਨਾ ਰਹੇ ਸਿੱਕ ਕੋਈ ਹੈ ਵੀ ਉਹਦੇ ਨਾਲ ਹਰੇਕ ਵਜਦਾ ਉਹ ਸਿੱਖਾ ਇਹੋ ਹਾਂ ਉਹਦੇ ਨਰੇ ਨੂੰ ਆਊਗਾ ਜਿਹੜਾ ਖਰੀਦਿਆ ਗਿਆ ਕੋਈ ਕਿਸੇ ਕਿਸੇ ਦੀ ਝਾਂਟੀ ਜੀ ਨੇ ਕਬੂਲ ਕਰ ਲਈ ਇਹਨਾਂ ਸਾਰੇ ਆ ਲੁਕੇ ਵੀ ਤੁਸੀਂ ਨਾ ਬੋਲੋ ਜੀ ਫਲਾਣਾ ਨਾਮ ਬੋਲੇ ਸਲਾ ਨਾਮ ਬੋਲੇ ਸਲਾ ਵੀ ਪੇਸ਼ ਹੋ ਗਿਆ ਜਾ ਕੇ ਸਾਰੇ ਪੇਸ਼ ਹੋ ਜਾਂਦੇ ਨੇ ਅਗਲ ਦਾ ਹਿੱਤੇ ਇਹਦੇ ਕੈਸੇ ਕੋਣ ਮੰਨ ਲੂਗਾ ਮੂਰਖ ਇਹਦਾ ਮੂਰਖ ਉੜ ਕਨਾ ਮ ਕੱਲਾ ਰਹੇਗਾ ਤੂੰ ਕੱਲਾ ਨਹੀਂ ਰਹੇਂ ਆਦਾ ਕੱਲੇ ਨਹੀਂ ਰਹਿਣਾ ਕੱਲੇ ਨਹੀਂ ਬਣੀ ਰਹਿਣਾ ਦੇਖਦਾ ਸਹੀ ਆਗੇ ਆਗੇ ਦੇਖੀ ਹੁੰਦਾ ਹੈ ਕਿਆ ਇਹ ਸਭ ਕੁਝ ਜਿਹੜਾ ਸੱਚ ਹੈ ਇਹ ਸੱਚ ਤੇ ਜਾਣ ਬੁੱਝ ਕੇ ਪੜਦਾ ਪਾਇਆ ਗਿਆ ਇਹ ਸਿੱਧਾ ਸੱਚ ਹੈ ਸਿੱਧਾ ਆਦਗੁਰੂ ਘਰ ਸਾਹਿਬ ਦੀ ਬਣੀ ਜਿ ਸੱਚਤਾ ਉਹ ਹੈ ਉਹ ਬਹੁਤ ਸਿੱਧੇ ਤੌਰ ਤੇ ਕੀਆ ਹੋਇਆ ਹੈ ਉਹ ਬਹੁਤ ਹੋਰ ਤਰੀਕੇ ਨਾਲ ਕੀਆ ਹੋਇਆ ਹੈ ਪ੍ਰਾਈਡ ਤਰੀਕੇ ਨਾਲ ਕੀਆ ਹੋਇਆ ਹੈ ਗੱਲ ਇਸ ਵੇਲੇ ਇਹਨਾਂ ਨੇ ਸਿੱਧਾ ਤਰੀਕਾ ਨਹੀਂ ਕੀਤੀ ਹੋਈ ਤਾਂ ਕੀਤੀ ਗੱਲ ਨਵੇਂ ਬਾਦਸ਼ਾਹ ਨੂੰ ਸੀਧੀ ਦਾ ਬਾਦਸ਼ਾਹ ਨੂੰ ਸੀਧਾ ਕਰਵਾਤਾ ਇਹ ਕਹਿ ਕੇ ਵੀ ਅਸੀਂ ਸਾਰੇ ਹਿੰਦੂ ਹੁਣ ਨਹੀਂ ਰਹੇ ਸਿੱਖ ਹੋਗੇ ਤਾਂ ਅਟੇ ਤੁਸੀਂ ਜਾ ਕੇ ਦਿੱਲੀ ਸਰਕਾਰ ਨੂੰ ਇਹ ਕਹੋ ਵੀ ਸਾਡੀ ਰੱਖਿਆ ਕਰੋ ਤੇ ਰੱਬ ਬਚਾਓ ਸਾਡਾ ਉਹਨਾਂ ਨੇ ਕਹਿੰਦਾ ਠੀਕ ਹੈ ਤੁਸੀਂ ਜਾ ਕੇ ਕਹਿ ਦਿਓ ਵੀ ਸਾਡਾ ਗੁਰੂ ਹੈ ਉਹਨੂੰ ਤੁਸੀਂ ਮੁਸਲਮਾਨ ਬਣਾ ਲਓ ਸਾਰੇ ਬਣ ਜਾਂਦੇ ਉਹਨਾਂ ਨੇ ਇਹ ਸਾਰੇ ਜਿਹੜੇ ਇਖਲਾਬ ਨੇ ਸਾਰੇ ਇਕੱਠੇ ਹੋ ਕੇ ਵੀ ਆਪਾਂ ਨੇ ਕੀ ਲੈਣਾ ਸਰਕਾਰ ਨੇ ਕਹਿਤਾ ਤੁਹਾਨੂੰ ਅਸੀਂ ਕੁਝ ਨਹੀਂ ਕਰਦੇ ਪਰ ਤੁਸੀਂ ਸਖਣ ਬਣੋ ਕਿਰਪਾ ਰਾਮ ਤੋਂ ਬਿਨਾ ਸਾਰੇ ਵਿਛੜ ਗਏ ਕਾਲੇ ਫਿਰ ਉਹਨੂੰ ਦੂਰੇ ਲੋੜੇ ਧੜਕੇ ਧੜਕੇ ਲੈ ਫਿਰ ਫਿਰ ਦੱਦਾ ਉਹਨਾਂ ਨੂੰ ਦੱਦਾ ਚੱਲਣ ਦੋ ਛੱਦੀ ਫੇਰ ਕਹਣਾ ਹੁਣ ਇਹਨਾਂ ਨਾਲ ਅੱਲੇ ਆਈ ਹਲੇ ਆ ਜੀ ਕਿਤੇ ਗੇ ਸਰੋ ਐਸੇ ਨਾ ਪਰਪੰਚ ਮੰਨ ਭੂਲ ਆਣੀਆਂ ਤਹ ਐਸੇ ਪਰਪੰਚ ਹੈ ਬਨ ਮੇਰੇ ਐਸਾ ਪਰਪੰਚ ਭੁਲ ਗਏ ਵੀ ਤੇਰੀ ਜੀ ਹੋਣਾ ਚਾਹੀਦਾ ਜੋ ਪਾਪੜ ਜੋ ਮਾਈ ਬੱਚੀ ਜਾਣ ਦੇ ਜਿਹੜਾ ਪਾਪੜ ਆਈ ਦਾ ਨੂੰ ਲੈਣ ਦੇ ਜੇ ਕੋਈ ਕਹੇ ਸਾਡੇ ਸੀਗੇ ਜਿਹੜੇ ਅਪਿਛੇ ਰੋਲਾ ਪਾਉਂਦੇ ਸੀ ਨਾ ਅਸੀਂ ਸਾਬਤ ਕਰ ਦਾਂਗੇ ਸਾਬਤ ਕਰਨ ਦੀ ਗੁਜ਼ਾਇਤ ਆ ਸਾਡੇ ਕੋਲ ਗੁਰਬਾਣੀ ਸਾਡੇ ਕੋਲ ਪਈ ਹੈ ਐਨੀ ਬੁੱਧੀ ਵੀ ਹੈਗੀ ਉਹਦੀ ਦਿੱਤੀ ਹੋਈ ਇਹਦੀ ਸਾਬਤ ਕਰਦਾਂਗੇ ਕਿਉਂ ਤੁਸੀਂ ਮਾਹਪੁਰ ਕਹਿੰਦੇ ਹੋ ਉਹ ਮਾਹਪੁਰ ਤੁਸੀਂ ਕਿੱਸ ਕਰ ਤੇ ਕਹਿੰਦੇ ਦੱਸੋ ਮਾਹਪੁਰ ਗਰਾਊਂਡ ਦੱਸੋ ਤੁਹਾਡੇ ਕੋ ਕੀ ਹੈ ਲਿਆਓ ਤੁਹਾਡੇ ਕੋ ਜਿਹੜਾ ਖਿਆਲ ਦਿੱਤਾ ਉਹ ਦੱਸੋ ਕੀ ਸੀ ਉਹਨੂੰ ਕਿਤੇ বুঝੋ ਉੱਪਰ ਤੁਸੀਂ ਹੌਣ ਬਣਾਏ ਬੈਠੇ ਹੋ ਹੁਣ ਵੀ ਤਾਂ ਤੁਹਾਡੇ ਕੋ ਪਰਪੰਚ ਹੈ ਕੀ ਹੈ ਇਹ ਪਰਪੰਚ ਉੱਥੋਂ ਹੀ ਆਇਆ ਹੋਇਆ ਜਿਹੜਾ ਪ੍ਰਬੰਧ ਤੁਹਾਡੇ ਕੋਲ ਹੈ ਉੱਥੋਂ ਹੀ ਆਇਆ ਹੋਇਆ ਹੈ ਨਹੀਂ ਤਾਂ ਉਹ ਸਿੱਖਿਆ ਤੁਹਾਡੇ ਕੋਲ ਦੱਸੋ ਜਿਹੜੀ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਤੁਹਾਨੂੰ ਦਿੱਤਾ ਕੀ ਉਹਨਾਂ ਨੂੰ ਦੱਸੋ ਕੀ ਦਿੱਤਾ ਜੋ ਤੁਹਾਨੂੰ ਦਿੱਤਾ ਗੁਰਮਤਿ ਨਾਲ ਮੇਲ ਨਹੀਂ ਖਾਂਦਾ ਤੁਹਾਨੂੰ ਦਿੱਤਾ ਗੁਰਮਤਿ ਨਾਲ ਖਾਂਦਾ